ਆਰ ਪੀ ਆ ਰੇਡੀਓ 1550 ਏ ਐਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ 11:00 ਵਜੇ 12 ਮਿੰਟ ਹੋ ਗਏ 25 ਜਨਵਰੀ ਦਾ ਦਿਨ ਹੈ ਭਰਾ 2017 ਦਾ ਬੁੱਧਵਾਰ ਹੈ 12 ਮਾਰਗ ਨਾਨਕ ਸੇ ਸੰਮਤ 548 ਨਿਗਾ ਹਾਰਦਿਕ ਸਵਾਗਤ ਹੈ ਜੀ ਆਜੋ ਅੱਜ ਦੀ ਲੋਕ ਸਭਾ ਦੇ ਵਿੱਚ ਆਮ ਕਰਾਂਗੇ ਗੱਲਾਂ ਬਾਤਾਂ ਗੀਤ ਸੰਗੀਤ ਸਖਰ ਦੇ ਮਸਲਿਆਂ ਤੇ ਗੱਲਬਾਤ ਹੋਏਗੀ ਪਹਿਲੇ ਹਿੱਸੇ ਦੇ ਤੁਹਾਨੂੰ ਖਬਰਾਂ ਸੁਣਾਉਣਾ ਹੈ ਦਰਮੀਆ ਦਰਮੀਆ ਉੱਪਰ ਲੀਆਂ ਜਿਵੇਂ ਮੱਖਣੀ ਆਈ ਹੁੰਦੀ ਆ ਸੁਨੇਹਾ ਅੱਧ ਰੜਕ ਜੀ ਨਹੀਂ ਪੀਤਾ ਉਹ ਤਾਂ ਆਇਆ ਹੀ ਨਹੀਂ ਇਸ ਦੁਨੀਆ ਤੇ ਬੱਲੇ ਬੱਲੇ ਬੱਲੇ ਜਸ ਸੁਨੇਹਾ ਖੜਕਣੀ ਤੇ ਜੀਵਾ ਠੰਡ ਚੌਖਾ ਵੀ ਹੋਣਾਵੇ ਹੁਣ ਸਵੇਰੇ ਅੱਧ ਰੜਕਾ ਬੇਬੇ ਕਿੱਥੇ ਚਾਹ ਚੁੰਦਾ ਹੀਲਾ ਕਰ ਪਹਿਲਾਂ ਇੱਥੇ ਬੈਠ ਆ ਚੱਕ ਇੱਕ ਗਲਾਸ ਪਹਿਲਾਂ ਫੇਰ ਰੱਖਣਾ ਅੱਧ ਰੜਕਾ ਪੀ ਕੇ ਕਈ ਤਾਂ ਮੇਰੇ ਅਗੇ ਅਦਈ ਦੁਆਰਾ ਫੇਰ ਦੱਬ ਲੈਂਦੇ ਸੀ ਕਈ ਫਿਰ ਖੱਪਿਆਂ ਨੂੰ ਜਾਂਦੇ ਤੇ ਡਲਿਆਂ ਨੂੰ ਮਿੱਧਦੇ ਫਿਰਦੇ ਪੈਰ ਕਾਦੇ ਸੀ ਕਿਰਾਹੀ ਸੀ ਡਲੇ ਤੇ ਜਦ ਪੈਰ ਰੱਖਦਾ ਜੱਟ ਡਲਾ ਕਹਦਾ ਬਖਸ਼ ਦੇ ਹੁਣ ਗਾਂ ਵੀ ਚੱਕ ਲੈ ਇੱਥੇ ਹੀ ਰੱਖਣਾ ਜਗੜ ਜਗੜ ਜਗੜ ਜਗੜ ਵੱਡਦਾ ਜਾਂਦਾ ਕਈ ਤਾਂ ਪੈਰ ਇੰਨੇ ਚੌਖ ਜੇ ਹੋ ਜਾਂਦੇ ਉਹ ਜੁੱਤੀ ਦੇ ਵਿੱਚ ਨਾ ਫਿੱਟ ਆਉਂਦੇ ਪਿੰਡ ਵਾਲੇ ਵਿਚਾਰੇ ਜੁੱਤੀਆਂ ਸਿਉਣ ਵਾਲੇ ਜਦ ਕੱਟਾ ਕੋਈ ਘਰੋਂ ਕੂਚ ਕਰਦਾ ਕੱਟਾ ਕੂਚ ਕਰਦਾ ਵਿਚਾਰੇ ਨੂੰ ਦੁੱਧ ਨਾ ਦਿੰਦੇ ਬੁੱਥੀ ਮੋੜ ਕੇ ਜਦ ਇਹ ਲਾਉਂਦਾ ਜ਼ੁਲਮ ਹੈ ਮਾਂ ਨੇ ਉਹਦੀ ਨੇ ਦੁੱਧ ਲਾਇਆ ਲਾਇਆ ਆਪਣੇ ਬੱਚੇ ਲਈ ਪਰ ਬੁੱਥੀ ਜਦ ਮੋੜ ਕੇ ਦੇਖ ਕੇ ਨਾਲ ਬੰਦ ਹੁੰਦਾ ਕੱਟੀ ਨੂੰ ਦਾ ਥੋੜਾ ਬਥਾ ਛੜ ਦਿੰਦਾ ਹੈ ਤਾਂ ਹੀ ਕੱਟੇ ਨੂੰ 1.5 ਮਣ ਦੁੱਧ ਦਾ ਕੋਈ ਭਾਅ ਨਾ ਫਿਰ ਜਦ ਕੱਟਾ ਚੁਕਾਉਂਦੇ ਪਿੱਛੇ ਆਪ ਜਾਂਦਾ ਆ ਮੇਰੀ ਮੇਰਾ ਜੋੜਾ ਵੀ ਤਿਆਰ ਕਰਦੇ ਫਿਰ ਉਹ ਪੱਥਰ ਤੇ ਪੈਰ ਲਖਾ ਕੇ ਜਦ ਅੜੜੇ ਪੈਨਸਲ ਦੇ ਨਾਲ ਲਾਈਨ ਲਾਉਦਾ ਕਹਿੰਦਾ ਪੈਰ ਦੇ ਦਿੱਤਾ ਪੂਰਾ ਕੱਟੇ ਦਾ ਹੀ ਲੱਗੂ ਹੁਣ ਮਾਲ ਫੇਰ ਉਹਨਾਂ ਦੇ ਵਿੱਚ ਮਸਾ ਫਿੱਟ ਆਉਂਦੇ ਸਰ ਉਹਨਾਂ ਤੇਲ ਤੂ ਲਾ ਕੇ ਬਾਹਰ ਦੀਆਂ ਚੀਚੀਆਂ ਤਰਸੂਲ ਵਾਂਗੂ ਉੱਪਰੋਂ ਖੜੀਆਂ ਹੁੰਦੀਆਂ ਉਹਨੂੰ ਦੱਪ ਤੁਬ ਕੇ ਵਿੱਚ ਨੂੰ ਪਾਉਂਦਾ ਫੇਰ ਜਦ ਬੇਤੋਂ ਹੀ ਵੱਧ ਜਾਂਦੀ ਗੱਲ ਪੰਜ ਚਾਰ ਮਹੀਨੇ ਉਹ ਜੋੜਾ ਚੱਲਦਾ ਜਿੱਥੇ ਚੀਚੀ ਜਿਹੜੀ ਚੀਚੀ ਤੇ ਚੜੀ ਹੁੰਦੀ ਬਾਹਰਲੀ ਉੱਥੋਂ ਫੇਰ ਜੁੱਤੀ ਬਾਹਰ ਤੋਂ ਗਲੀ ਨਿਕਲ ਜਾਂਦੀ ਗਲੀ ਦੇ ਵਿੱਚ ਦੀ ਚੀਚੀ ਬਾਹਰ ਝਾਤ ਕਹਿੰਦੀ ਝਾਤ ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਕਰਨਾ ਗੱਲਾਂ ਬਾਤਾਂ ਕੀ ਸੰਗੀਤ ਸਲਕ ਦੇ ਮਸਲੇ ਤੇ ਗੱਲਬਾਤ ਹੋਣੀ ਹੈ ਖਬਰਾਂ ਦੇ ਨਾਲ ਨਾਲ ਇਹੋ ਜਿਹੀਆਂ ਗੱਲਾਂ ਚੱਲਦੀਆਂ ਤੇ 12 ਤੋਂ 1 ਵਜੇ ਤੱਕ ਖਬਰਾਂ ਤੇ ਨਾਲ ਲਿਵਨ ਕੇਅਰ ਗਿਵਰ ਦੀ ਅੱਜ ਗੱਲ ਕਰਨੀ ਹੈ ਕਈ ਦਿਨ ਹੋ ਗਏ ਫੇਰ ਫੋਨ ਆਉਣ ਲੱਗੇ ਕਹਿੰਦੇ ਗੱਲ ਠੰਡੀ ਹੋ ਗਈ ਫੇਰ ਕਰਿਓ ਮਾਰੀ ਜੀ ਗਰਮ ਕਰ ਦੇਗੇ ਕਿਹੜਾ ਕਿਤੋਂ ਲੈਣ ਜਾਣਾ ਕੁਛ ਇੱਕ ਤੋਂ 2 ਵਜੇ ਤੱਕ ਕਹਾਣੀ ਅੱਜ ਹਰਦੇਵ ਦਲਗੀਰ ਦੇਵ ਥਰੀਕਿਆਂ ਵਾਲੇ ਦੀ ਸੁਣਾਉਣੀ ਆ ਦੋ ਕਹਾਣੀਆਂ ਦਾ ਨਾਮ ਲਿਖਿਆ ਫੇਸਬੁੱਕ ਤੇ ਵੋਟਾਂ ਪਾ ਦਿਓ ਜਿਹੜੀ ਕਹੋ ਉਹੀ ਸੁਣਾ ਦਾਂ ਫੇਰ ਕਪਤ ਨਾ ਕਰਿਓ ਬਾਅਦ ਚ 18432471550 18442471550 on air ਨੰਬਰ ਹੈ krpradio.com ਸਿੱਧੇ ਪ੍ਰਸਾਰਣ ਦੇ ਲਈ ਤੇ ਐਪ ਡਾਊਨਲੋਡ ਕਰ ਲਿਓ ਜੇ ਮੂਲੋਈ ਗੱਲ ਨਿਕਲ ਜਵੇ ਫਿਰ ਲੋਕ ਸਾਥ ਹੈ ਲੋਕ K S A T T H ਇਹਦੇ ਵਿੱਚ ਵੀ ਥੋੜੀ ਜੀ ਹੁਣ ਮੈਨੂੰ ਲੱਗਦਾ ਰਕਾਵਟਾਊ ਰਕਾਵਟ ਲਈ ਖੇਤ ਦਾ ਮੈਸੇਜ ਪਾਉਣਾ ਪੈਣਾ ਇੰਜੀਨੀਅਰ ਸਾਡਾ ਚਲਿਆ ਦੇਸ਼ ਨੂੰ ਹੋ ਸਕਦਾ ਨੇ ਜਾਣੀਆਂ ਕੁਝ ਕੁ ਦਿਨ ਇਹ ਤੋਂ ਬਿਨਾ ਸਾਰਨਾ ਪਵੇ ਨਹੀਂ ਕੋਈ ਹੋਰ ਟੂਲ ਤਿਆਰ ਕਰੋ 1843 247 1550 ਆਉਨੇ ਨੰਬਰ ਹੈ krpi radio.com ਨਿਮੀ ਡਾਲਜੀ ਦਾ ਨੰਬਰ 604 440 642 604 440 6462 ਤੇ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਸੀਂ ਕੋਈ ਸੁਖ ਸੁਨੇਹਾ ਕੱਲਦੇ ਹੋ ਤੇ ਨਾਲ ਨਾਲ ਰਹਿੰਦੇ ਹੋ ਧੰਨਵਾਦ ਹੈ ਕੋਈ ਨਾ ਕੋਈ ਖਬਰ ਇਹ ਦੇਦੇ ਨੇ ਉਹ harjit.gjrperadio.com ਇਹ ਈਮੇਲ ਜੋ ਰੇਤ ਤੇ ਚਰਚ ਗਏ ਨੇ ਹੱਡਾਂ ਦੇ ਟੁਕੜੇ ਜੋ ਬਣ ਗਏ ਬਰੋਲੇ ਗੁਲਾਬੀ ਜੇ ਮੁਖੜੇ ਉਹ ਨਵਿਆਂ ਆਕਾਰਾਂ ਚ ਘੜਦੇ ਹੀ ਰਹਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਮੈਂ ਗੱਦੀਆਂ ਤੇ ਬਿਸਤਰ ਪਸ਼ਾਕਾਂ ਤੋਂ ਪੁੱਛਿਆ ਮੈਂ ਹੀਰਾ ਤੋਂ ਪੁੱਛਿਆ ਮੈਂ ਚਾਕਾਂ ਤੋਂ ਪੁੱਛਿਆ ਉਹ ਕਹਿੰਦੇ ਕਿ ਬੂਟੇ ਤਾਂ ਫਲਦੇ ਹੀ ਰਹਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਇਹ ਗੁੰਦੀਆਂ ਜੋ ਗੁੱਤਾਂ ਐ ਲਮਕਣ ਪਰਾਂਦੇ ਕਿੱਥੋਂ ਸੀ ਆਏ ਤੇ ਕਿੱਧਰ ਨੂੰ ਜਾਂਦੇ ਇਹ ਮੌਸਮ ਨੇ ਮੌਸਮ ਤੱਕਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣ ਸਿਲਾਈ ਜਵਾਨੀ ਜਿਨ੍ਹਾਂ ਦੇ ਮੈਂ ਲੇਖਿਓ ਉਹ ਚਾਦਰ ਦੇ ਤੋਤੇ ਉਡਾ ਕੇ ਨਹੀਂ ਵੇਖੇ ਸੰਦੂਕਾਂ ਚ ਪਏ ਐ ਮੈਂ ਗੱਲ ਰਹਿਣੇ ਇਹ ਚੱਕਰ ਅਨੋਖੇ ਨੇ ਚਲਦੇ ਹੀ ਰਹਿਣੇ ਜਿਨ੍ਹਾਂ ਸਿਰ ਤੇ ਛੱਤ ਨਾ ਪੈਰਾਂ ਚ ਜੋੜੇ ਜੋ ਫਿਰ ਵੀ ਭੁਜਾਉਂਦੇ ਨੇ ਉਮਰਾਂ ਦੇ ਘੋੜੇ ਉ ਭੁੱਖਾਂ ਤੇ ਤੇਹਾਂ ਚ ਬਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚਲਦੇ ਹੀ ਰਹਿਣ ਮੈਨੂੰ ਕੇ ਮੈਨੂੰ ਆ ਕੇ ਸੀ ਮਜ਼ਹਬ ਦੀ ਟੋਲੀ ਤੂੰ ਲਿਖਣਾ ਚਾਹੁੰਦਾ ਦਰਖਤਾਂ ਦੀ ਬੋਲੀ ਇਹ ਕਾਸ਼ੀ ਬਨਾਰਸ ਤੇ ਬਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚਲਦੇ ਹੀ ਰਹਿਣੇ ਇਹ ਚੱਕਰ ਨੇ ਬਾਈ ਚਲਦੇ ਹੀ ਰਹਿਣੇ ਹਰਮਨਜੀਤ ਹੂੰ ਹਰਮਨਜੀਤ ਨੇ ਜ਼ਿੰਦਗੀ ਦੇ ਚੱਕਰਾਂ ਦਾ ਲਿਖਿਆ ਕਹਾਣੀ ਮੁੰਡਾ ਵਧੀਆ ਲਿਖਦਾ ਹੈ ਇਹ ਵੀ ਸੱਚ ਹੈ ਮਿੱਤਰਾ ਇਹ ਚੱਕਰ ਤਾਂ ਚੱਲਦੇ ਹੀ ਰਹਿਣ ਨੇ ਇਹਦਾ ਚੱਕਰਾ ਬਾਪ ਰੋਲਿਆਂ ਦੇ ਵਿੱਚ ਕਿਤੇ ਮਾੜ ਜਾਂ ਕੰਧ ਦੇ ਓਲੇ ਬਹਿ ਕੇ ਵਾਹਿਗੁਰੂ ਕਹਿ ਕੇ ਕਹਿੰਦਾ ਹੁਣ ਮਸਾ ਸੂਤ ਆਇਆ ਇਉਂ ਕਹਿਣਾ ਪੈਣਾ ਨਹੀਂ ਸੂਤ ਆਉਣਾ ਇੱਕ ਮਿਲਿਨਰ ਜਿਹਦੀਆਂ ਬਹੁਤ ਜ਼ੀਰੋਆਂ ਸੀ ਮੇਰੇ ਮੂਹਰੇ ਬੈਠਾ ਮੈਂ ਕਿਹਾ ਸੁਣਾ ਕਿਵੇਂ ਹੈ ਕਿੰਨੀਆਂ ਕਿ ਜ਼ੀਰੋਆਂ ਕਿੰਨਾ ਕਿ ਨਿਗ ਹੈ ਕਹਿੰਦਾ 20 ਸਾਲ ਲੱਗੇ ਨਾ ਜ਼ੀਰੋਆਂ ਨੂੰ ਬਣਾਉਣ ਲਈ ਕੱਢ ਤਾਂ ਮੈਂ ਕਿਹਾ ਵਾਲਟ ਕਿੰਨੇ ਕ ਪੈਸੇ ਨੇ ਬਟੂਆ ਖੋਲਿਆ ਉਹਦੇ ਕੋਲ 300 ਸੀ ਮੇਰੇ ਕੋਲ 30 ਸੀ ਫਰਕ ਇੰਨਾ ਹੀ ਸੀ ਮੈਂ ਕਿਹਾ ਬਾਕੀਆਂ ਦਾ ਕੀ ਫਾਇਦਾ ਜਿਹੜਾ 10 ਲੱਖ ਜੇਬ 'ਚ ਪਿਆ ਬੈਂਕ 'ਚ ਬੈਂਕ 'ਚ ਪਿਆ ਬਜ਼ੁਰਗਾਂ ਦੇ ਸਾਡੇ ਨੇ ਕਹਿਣ ਉਹਨੇ ਕੀ ਦੇਣਾ ਕਹਿੰਦਾ ਨਗਾਸ ਹੀ ਦੇਣਾ ਕਹਿਣਾ ਕਰਨਾ ਕੁਛ ਨਹੀਂ ਮੈਂ ਕਿਹਾ ਉਹਦੇ ਜੋ ਕਢਾ ਕੇ ਕਦੇ ਲਾਏ ਨੇ ਕਹਿੰਦਾ ਨਾ ਹਲੇ ਵੀ ਤੋਰੀ ਫੁਲਕੇ ਲਈ ਆਪਣਾ ਕੰਮ ਕਰੀਦਾ ਖਰਚਾ ਉਹ ਕਿਹਦੇ ਲਈ ਰੱਖੇ ਨੇ ਉਹ ਕਹਿੰਦਾ ਬਸ ਰੱਖੇ ਹੀ ਹੋਏ ਨੇ ਰੱਖੇ ਹੀ ਹੋਏ ਨੇ ਪਤਾ ਨੀ ਕੀ ਦੇ ਨੇ ਰੱਖੇ ਕਹਿੰਦਾ ਕੀ ਕਰੀਏ ਮੈਂ ਕਿਹਾ ਸਿਰ 2.5 ਲੱਖ ਤਾਂ ਇਹ ਚੋਂ ਖਰਚ 25% ਦਾ ਤੇਰੇ ਬਣਦੇ ਆ ਇੱਕ ਕੋਈ ਵਧੀਆ ਕਾਰ ਲੈ ਲੈ ਕਾਰ ਨਹੀਂ ਲੈਣੀ ਦੁਨੀਆ ਘੁੰਮਣ ਚਲੇ ਜਾ ਕੋਈ ਵਧੀਆ ਕਿਸ਼ਤੀ ਲੈ ਲੈ ਕੋਈ ਟੈਂਪਰ ਲੈ ਲੈ ਜਾ ਕੇ ਹੋਪ ਜੰਗਲਾਂ ਚ ਕਿਤੇ ਸੋਨਾ ਪੰਜਰਦੇ ਨਾ ਫੋਨ ਕਰ ਲੈ ਬੰਦ ਥੋੜਾ ਜਿਹਾ ਮੱਥੇ ਦੀਆਂ ਜਿਹੜੀਆਂ ਪੈ ਰੀਆਂ ਠੀਕ ਹੋ ਜਾਣਗੀਆਂ ডিটاکسیفیکیشن ਤੇ ਚਲੇ ਜਾ ਮੈਂ ਕਿਹਾ ਕਲਿੰਜ਼ਿੰਗ ਕਰ ਲੈ ਪਾਣੀ ਲੈ ਜਾ ਨਾਲ ਵਿੱਚ ਲੀਮਬੂ ਲਚੋੜ ਲਈ ਲੀਮਬੂ ਲਚੋੜੇ ਹੋਏ ਪਾਣੀ ਪੀ ਕੇ ਸੂਤ ਰਹੇਗਾ ਪਿੱਛੇ ਨੂੰ ਨਾ ਚਾਕੀ ਲੋਟਾਂ ਡਿਵੈਲਪ ਹੁੰਦੀਆਂ ਰਹਿਣੀਆਂ ਨੇ ਜਿੱਦਾਂ ਤੂੰ ਨਹੀਂ ਸੀ ਉਦੋਂ ਵੀ ਡਿਵੈਲਪ ਹੋਈਆਂ ਜਦ ਤੈਂ ਤੁਰ ਜਾਣਾ ਫੇਰ ਵੀ ਡਿਵੈਲਪ ਹੋਣੀਆਂ ਮੁਰਕੇ ਕੌਫੀ ਵੀ ਗਲ ਦੇ ਵਿੱਚ ਡਿੰਗ ਰਹੀ ਡੈਂਪ ਰਿਆ ਝਾਕਦਾ ਸੀ ਮੇਰੇ ਬਾਦ ਵਪਾਰਕ ਸੰਦੇਸ਼ 11:24 ਹੋ ਗਏ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਂਦੇ ਨੇ ਫਾਈਵ ਰਿਵਰ ਐਕਸਕੇਵੇਟਿੰਗ ਹਰਪੀ ਸਿੰਘ ਕੰਗ 604 727 0424 ਗੁਰਪੀ ਸਿੰਘ ਗਰੇਵਲ 778 846 9942 ਲੋਟ ਕੋਈ ਪਟਾਉਣੀਆਂ ਕੋਈ ਘਟਣਾ ਹੈ ਤੇ ਕੋਈ ਡਰੇਨ ਥਾਈਲ ਦਾ ਕੰਮ ਹੈ ਸਾਰਾ ਕੁਝ ਇੱਕ ਜਗ੍ਹਾ ਤੇ ਇੱਕ ਰੇਤਾ ਵਜ਼ਰੀ ਚਾਹੀਦੀ ਹੈ ਪੱਕਾ ਦਾ ਕੰਮ ਹੈ ਦਾ ਕੰਮ ਹੈ ਤਾਂ ਫਾਈਵ ਰਿਵਰ ਐਕਸਕੇਵੇਟਿੰਗ ਕਵੇਟਿੰਗ ਹਲਪੀਪ ਕੰਗ 6427 0424 ਉਹਨਾਂ ਨਾਲ ਗੱਲ ਕਰਿਓ ਲੋਕ ਸਭਾ ਦੇ ਹਵਾਲੇ 10% ਘੱਟੋ ਘਾਟ ਡਿਸਕਾਊਂਟ ਪੱਕਾ ਗ੍ਰੀਨ ਇੰਡੀਅਨ ਕੁਜ਼ੀਨ 6453 3535 ਜਿਹੜਾ 112 125 65 88 ਐਵੈਨਿਊ ਤੇ ਜਿੱਥੇ ਤੁਸੀਂ ਭਾਰਤੀ ਖਾਣੇ ਖਾ ਸਕਦੇ ਹੋ ਆਰਡਰ ਕਰ ਸਕਦੇ ਨੇ ਇਟਾਲੀਅਨ ਪੀਜ਼ਾ ਵੀ ਬਣਾਉਂਦੇ ਆ ਦੇਸੀ ਸਟਾਈਲ 'ਚ ਤੇ ਨਾਲ ਇਹ ਵੇਖ ਲਓ ਇਟਾਲੀਅਨ ਕੁਜ਼ੀਨ ਦਾ ਅਸੀਂ ਕੀ ਬਣਾਇਆ ਪੀਜ਼ਾ ਉਹ ਬਣਾਉਂਦੇ ਸੀ ਬ੍ਰਿਕ ਓਵਨ ਆ ਵਿਚਾਰਿਆਂ ਨੇ ਲੱਕੜਾਂ ਲੁੱਕੜਾਂ ਬਾਲ ਕੇ ਫੁੱਲਿਆ ਹੋਇਆ ਬਹੁਤ ਹਲਕਾ ਜਿਹੜਾ ਟਸਕਨੀ ਏਰੀਆ ਉਹਨਾਂ ਦਾ 올ਿਵ ਔਇਲ ਪਾ ਕੇ ਕਦੇ ਜਾਓ ਫਲੋਰੈਂਸ ਸ਼ਹਿਰ ਜਿਹੜਾ ਟਸਕਨ ਦੇ ਏਰੀਆ ਦੇ ਵਿੱਚ ਕੀ ਬਾਤ ਹੈ ਬਹਿ ਜਾ ਬਹਿ ਹੋਈ ਪਈ ਹੈ ਫੁੱਲੀਆਂ ਹੋਈਆਂ ਬ੍ਰੈਡ ਬਹੁਤ ਵਧੀਆ ਤੇ ਬਹੁਤ ਹੈਲਦੀ ਪੀਜ਼ਾ ਥੋੜਾ ਜਿਹਾ ਉੱਪਰ ਪਾਲਕ ਹੈ ਥੋੜਾ ਜਿਹਾ ਚੀਜ਼ ਹੈ ਤੇ 올ਿਵ ਔਇਲ ਹੈ ਬਸ ਬਾਲਾ ਕੁਝ ਨਹੀਂ ਹੈ ਇੱਧਰ ਤੱਕ ਇੰਚਾਂ ਨਾਲ ਬਣਾਉਂਦੇ ਆ ਫਿਰ ਤੈ ਲਾਲ ਆਖੇ ਸਾਰੇ ਕਿਸਮ ਦੇ ਪਾਦੇ ਬਾਈਸੇ ਮੀਟ ਰਾਤ ਨੂੰ ਘੁੱਟ ਪੀ ਕੇ ਨਾ ਫਿਰ ਪੀਜ਼ਾ ਖਾਂਦੇ ਆ ਫਿਰ ਡਿੱਕੀ ਲੱਗੀ ਰਹਿੰਦੀ ਆ ਸਾਰੀ ਰਾਤ ਰਾਤ ਨੂੰ ਸੌਣ ਵੇਲੇ ਪਹਿਲਾਂ ਰੱਜ ਰੁੱਜ ਲੈਂਦੇ ਆ ਤੇ ਸਾਢੇ 1:00 ਵਜੇ ਕਹਿੰਦੇ ਪੀਜ਼ਾ ਦਾ ਆਰਡਰ ਕਰੋ ਫਿਰ ਹੁਣ ਗਰਾਜ 'ਚ ਬੈਠੇ ਫਿਰ ਅਖੀਰ 'ਚ ਪੀਜ਼ਾ ਬੱਕਰਾ ਬੁੱਕਰਾ ਚੂਣ ਕੇ ਵਿੱਚ ਸ਼ਰਾਬ ਤੇ ਅਖੀਰ ਦੇ ਵਿੱਚ ਕਹਿੰਦੇ ਵੀ ਪੀਜ਼ਾ ਕਰਵਾਓ ਹੁਣ ਮੂੰਹ ਮਿੱਠਾਈ ਕਰਨਾ ਕਹਿੰਦਾ ਉੱਪਰੋਂ ਰਸ ਮਲਾਈ ਇਹ ਬਲੱਡ ਵਰਕ ਹੋ ਰਿਹਾ ਹੈ ਇੱਕ ਬਹੁਤ ਵੱਧ ਗਿਆ ਫੈਟੀ ਲੀਵਰ ਵੀ ਹੋ ਗਿਆ ਜੋੜਾਂ ਚ ਦਰਦ ਹੋ ਗਏ ਹੁਣ ਹੁਣ ਸਾਰਾ ਕੁਝ ਛੱਡ ਦੇਣਾ ਬਸ ਹੁਣ ਸਕਿਪ ਮਿਲਕ ਪੀਣਾ ਸਪਰੇਟਾ ਦੁੱਧ ਸੇਧਾ ਖਿਆਲ ਰੱਖਿਆ ਕਰੋ ਇਨਟੇਕ ਗੱਡੀ ਦੇ ਵਿੱਚ ਤਾਂ ਸਿੰਥੈਟਿਕ ਔਇਲ ਪਾਉਂਦੇ ਹੋ ਆਪਣੇ ਢਿੱਡ ਚ ਪਾਉਣ ਵੇਲੇ ਚੀਜ਼ ਨੂੰ ਵੇਖਿਆ ਕਰੋ ਵਧੀਆ ਜਗ੍ਹਾ ਤੋਂ ਆਰਡਰ ਕਰਿਆ ਕਰੋ ਗ੍ਰੀਨ ਇੰਡੀਆ ਨੂੰ ਕਜ਼ੀਨ ਤੋਂ ਪੀਜ਼ਾ ਮਠਿਆਈ ਤੇ ਭਾਰਤੀ ਖਾਣੇ 650 335 35 604503 353 fuck ਸਾਰਥੀ ਦਾ ਇੱਕ ਨਵਾਂ ਗੀਤ ਆਇਆ ਘਰ ਵਾਲੀ ਦੁਸਕੇ ਚਲੇ ਗਈ ਮਨਾਉਣ ਗਿਆ ਹੈ ਪਿੱਛੇ ਸੌਰੀ ਆ ਸੁਣਿਓ ਕੀ ਕੁਛ ਹੁੰਦਾ ਜਦੋਂ ਵੱਜ ਕੇ 30 ਮਿੰਟ ਹੋ ਗਿਆ ਜੀ 605 475 6853 ਨੰਬਰ ਹੈ ਜਿਹੜਾ ਅਮਰੀਕਾ ਵਾਲੇ ਪਾਸੇ ਇਹੇ ਚੱਲਦਾ ਤਾਂ ਹੈ ਜੇ ਮੂਵਿੰਗ ਗੱਲ ਨਾ ਬਣੇ ਤਾਂ ਇਸ ਤੇ ਤੁਸੀਂ ਸੁਣ ਸਕਦੇ ਹੋ ਹੁਣ ਅਮਨ ਖੈਰਾ ਜੀ ਮੇਰੇ ਨਾਲ CWCC ਤੋਂ ਗੱਲਬਾਤ ਕੰਮ ਦੇ ਲਈ ਨਾਲ ਨੇ ਹਮਨ ਖਰਜ ਜੀ ਤੁਹਾਡਾ ਸਵਾਗਤ ਹੈ ਸਭ। ਅ थैंक यू so ਬਾਈ ਜੀ ਤੁਹਾਡੀ ਸਾਰੀ ਲਿਸਨਿੰਗ ਨੂੰ ਮੇਰੇ ਵੱਲੋਂ ਪਿਆਰ ਤਰੀਫ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਹੋ시। ਅੱਛਾ ਜੀ ਅੱਜ ਜਿਹੜਾ ਵਿਸ਼ਾ ਆਪਾਂ ਸ਼ੋਣਾ ਉਹ ਸੰਵੇਦਨਸ਼ੀਲ ਥੋੜਾ ਜਿਹਾ ਮਸਲਾ ਹੈ ਜਦ ਵਿਆਹ ਤੋਂ ਬਾਅਦ ਅਪਲਾਈ ਕਰਨਾ ਸਪਾਊਸ ਨੂੰ ਇਹਦੇ ਚ ਝਗੜੇ ਇਹਦੀਆਂ ਮੁਸ਼ਕਲਾਂ ਤੇ ਉਹਦੇ ਇੱਥੇ ਪਹੁੰਚਣ ਤੇ ਪਹੁੰਚਣ ਤੋਂ ਬਾਅਦ ਦਾ ਅੱਜ ਗੱਲਬਾਤ ਆਪਾਂ ਕਰਨੀ ਹੈ ਪਹਿਲਾਂ ਤਾਂ ਇਹ ਦੱਸਿਓ ਕਿ ਜਦ ਕੋਈ ਵਿਆਹ ਕਰਾ ਕੇ ਵਾਪਸ ਆ ਜਾਂਦਾ ਉਹਨੇ ਆਪਣੇ ਜੀਵਨ ਸਾਥੀ ਨੂੰ ਜਾਂ ਸਾਥਣ ਨੂੰ ਅਪਲਾਈ ਕਰਨਾ ਉਹਦੀਆਂ ਰਿਕੁਆਇਰਮੈਂਟਸ ਕੀ ਨੇ ਇਮੀਗ੍ਰੇਸ਼ਨ ਦੇ ਸਬੰਧਤ ਜੀ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਬੜੀਆਂ ਬੇਸਿਕ ਨੇ ਜਿਹੜਾ ਸਪான்ਸਰ ਹੈ ਉਹਨਾਂ ਦੀ ਜਿਹੜੀ ਸਪான்ਸਰਸ਼ਿਪ ਦੀ ਏਜ ਹੈ ਉਹ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ ਔਰ ਉਹਨਾਂ ਨੂੰ ਕਿਸੇ ਵੀ ਕ੍ਰਿਮੀਨਲ ਇਸ਼ੂ ਚ ਇਨਵੋਲ ਨਹੀਂ ਹੋਣਾ ਚਾਹੀਦੇ ਖਾਸ ਕਰਕੇ ਜੇ ਉਹ ਫੈਮਲੀ ਅਸਾਲਟ ਦਾ ਮਾਮਲਾ ਜਾਂ ਉਹਨਾਂ ਨੇ ਆਪਣੇ ਵਾਈਫ ਦੇ ਆ ਵਾਈਫ ਦੇ ਜਿਹੜੇ ਫੈਮਲੀ ਮੈਂਬਰਸ ਜੇ ਉਹ ਡਿਵੋਰਸ ਵਾਲਾ ਕੇਸ ਹੈ ਤਾਂ ਉਹਨਾਂ ਦੇ ਖਿਲਾਫ ਕੋਈ ਇਹਜਾ ਅਸਾਲਟ ਦਾ ਜਿਹੜਾ ਕੇਸ ਹੈ ਆ ਯਾ ਕਨਵਿਕਸ਼ਨ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਇਸ ਤੋਂ ਇਲਾਵਾ ਜਿਹੜੀ ਇਨਕਮ ਦੀ ਰਿਕੁਆਇਰਮੈਂਟ ਹੈ ਉਹ ਤੋਂ ਬਿਲਕੁਲ ਐਗਜ਼ੈਂਪਸ਼ਨ ਹੈ ਸਪਾਊਸ ਨੂੰ ਇਨਕਮ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਹਾਊਏਵਰ ਕਈ ਇੰਡੀਵਿਜੂਅਲ ਇਹ ਵੀ ਪੁੱਛਦੇ ਵੀ ਸਾਨੂੰ ਲੈਟਰ ਆ ਜਾਂਦਾ ਜਿਹਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਵੀ ਸੈਕਸ਼ਨ 39 ਦੇ ਅਧੀਨ ਤੁਸੀਂ ਸਪਾਊਸ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦੇ ਤੁਹਾਡਾ ਸੀ ਕੇਸ ਜਿਹੜਾ ਰਿਫਿਊਜ਼ ਕਰਨ ਲੱਗਿਆ ਨਾਓ ਇਹ ਕੰਡੀਸ਼ਨ ਐਪਲੀਕੇਬਲ ਹੁੰਦੀ ਹੈ ਉਹਨਾਂ ਇੰਡੀਵਿਜੂਅਲਸ ਤੇ ਜਿਹੜੇ ਪਿੱਛੇ ਕੋਈ ਬੈਨੇਫਿਟਸ ਲੈ ਰਹੇ ਨੇ ਜਾਂ ਵੈਲਫੇਅਰ ਲੈ ਰਹੇ ਨੇ ਯਾ ਕੋਈ ਐਕਸਪੈਕਟੇਸ਼ਨ ਨਹੀਂ ਹੈ ਆਫੀਸਰ ਨੂੰ ਯਾ ਉਹ ਕੰਟਰੀ ਤੋਂ ਬਾਹਰ ਜ਼ਿਆਦਾ ਦੇਰ ਰਹਿ ਰਹੇ ਨੇ ਔਰ ਆਫੀਸਰ ਨੂੰ ਐਕਸਪੈਕਟੇਸ਼ਨ ਨਹੀਂ ਹੈ ਵੀ ਉਹ ਕੰਟਰੀ ਦੇ ਵਿੱਚ ਆ ਕੇ ਰਹਿਣਗੇ ਯਾ ਇੱਥੇ ਸੈਟਲ ਹੋ ਸਕਣਗੇ ਉਹਨਾਂ ਕੰਡੀਸ਼ਨ ਚ ਹੀ ਉਹ ਐਪਲੀਕੇਸ਼ਨ ਰਿਫਿਊਜ਼ ਕੀਤੀ ਜਾਂਦੀ ਹੈ ਜਿਹੜਾ ਫਾਈਨੈਂਸ਼ੀਅਲ ਟੈਸਟ ਹੈ ਅੰਦਰ ਸੈਕਸ਼ਨ 133 ਉਹਦੇ ਤੋਂ ਤੁਹਾਨੂੰ ਲਈ ਐਗਜ਼ੈਂਪਸ਼ਨ ਹੈ आ, कई व्यक्ति वेट ਵੇਟ ਕਰਦੇ ਰਹਿੰਦੇ ਆ ਵੀ ਸਾਨੂੰ ਜੌਬ ਲੈਟਰ ਚਾਹੀਦਾ ਸਪੈਰੀ ਸਪான்ਸਰ ਕਰਾਂਗੇ ਉਹਦੀ ਰਿਕੁਆਇਰਮੈਂਟ ਜਿਹੜੀ ਆ ਉਹ ਨਹੀਂ ਲੱਗਦੀ ਅ ਜਿਹੜਾ ਵਿਅਕਤੀ ਆ ਰਿਹਾ ਕੈਨੇਡਾ ਦੇ ਵਿੱਚ ਸਪான்ਸਰਡ ਸਪਾਊਸ ਉਹਨਾਂ ਦੀ ਉਮਰ ਜਿਹੜੀ ਉਹ ਘੱਟੋ ਘੱਟ 16 ਸਾਲ ਹੋਣੀ ਚਾਹੀਦੀ ਹੈ ਅ ਕਈ ਕੰਟਰੀਸ ਤੇ ਏਜ ਰੈਸਟ੍ਰਿਕਸ਼ਨ ਨਹੀਂ ਹੈ ਇਹ ਬੜਾ ਇੰਟਰਸਟਿੰਗ ਸਵਾਲ ਹੁੰਦਾ ਜਦੋਂ ਪੁੱਛਿਆ ਜੇ ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਤਾਂ ਵਿਆਹ ਰਜਿਸਟਰ ਨਹੀਂ ਹੁੰਦਾ ਆ ਦੈਟ ਇਜ਼ ਐਬਸੋਲੂਟਲੀ ਕਰੈਕਟ ਪਰ ਸਪਾਂਸਰਸ਼ਿਪ ਤੋਂ ਤੁਹਾਨੂੰ ਬਾਰ ਨਹੀਂ ਕੀਤਾ ਜਾ ਸਕਦਾ ਤੁਸੀਂ ਫਿਰ ਵੀ ਸਪਾਂਸਰਸ਼ਿਪ ਜਿਹੜੀ ਹੈ ਕਰਾ ਸਕਦੇ ਹੋ ਇਹਦੇ ਤੋਂ ਬੜਾ ਇੱਕ ਇੰਟਰਸਟਿੰਗ ਕੁਐਸਚਨ ਹੈ ਪੈਦਾ ਹੁੰਦਾ ਗਿਲ ਸਾਹਿਬ ਬਹੁਤ ਰੇਅਰ ਕੇਸਿਸ ਹੁੰਦੇ ਨੇ ਪਰ ਇਹ ਜਿਹੇ ਕੇਸ ਹੁੰਦੇ ਨੇ ਜਿੱਥੇ ਵਿਅਕਤੀ ਵਿਆਹ ਕਰਾ ਲੈਂਦਾ ਕਿਸੇ ਕੰਟਰੀ ਦੇ ਵਿੱਚ ਜਿੱਥੇ ਉਹਨਾਂ ਤੇ ਏਜ ਰੈਸਟ੍ਰਿਕਸ਼ਨ ਜਿਵੇਂ ਹਿੰਦੁਸਤਾਨ ਦੀ ਐਗਜ਼ਾਮਪਲ ਲੈ ਲਈਏ ਜੋ ਨਾ ਤੇ 19 18 ਸਾਲ ਤੋਂ ਘੱਟ ਜਿਹੜੀ ਲੜਕੀ ਹੈ ਜਾਂ 21 ਸਾਲ ਤੋਂ ਘੱਟ ਜਿਹੜਾ ਲੜਕਾ ਉਹਦਾ ਵਿਆਹ ਰਜਿਸਟਰ ਨਹੀਂ ਕਰਦੇ। that is absolutely fine ਪਰ ਤੁਹਾਨੂੰ ਕੋਰਟ ਤੇ ਥਰੂ ਐਪਲੀਕੇਸ਼ਨ ਫਾਈਲ ਕਰਨੀ ਪੈਂਦੀ ਆ ਜਿਹਦੇ ਰਾਹੀਂ ਕਿਉਂਕਿ ਕਾਨੂੰਨ ਇਹ ਕਹਿੰਦਾ ਕੈਨੇਡਾ ਦਾ ਜਿਸ ਕੰਟਰੀ 'ਚ ਵਿਆਹ ਇਹ ਹੋਇਆ ਜਿਉ ਲੀਗਲੀ ਅਕਨੋਲਡਜ ਕਰ ਲਿਆ ਜਾਂਦਾ ਇਵਨ ਫਰੋਮ ਲਾਫ ਆਫ ਲੈਂਡ ਜਾਂ ਕੋਰਟ ਦੇ ਵੱਲੋਂ ਤਾਂ ਉਹਨੂੰ ਵੀ ਐਕਸੈਪਟ ਕੀਤਾ ਜਾਏਗਾ ਔਰ ਅਪਲੀਕੇਸ਼ਨ ਥੋੜੀ ਐਕਸੈਪਟ ਹੋ ਸਕਦੀ ਹੈ ਇਹੋ ਜਿਹਾ ਕੁਝ ਗਲਤੀ ਨਾ ਕਰੋ ਜਿੱਥੇ ਤੁਸੀਂ ਕੋਈ ਗਲਤ ਤਰ੍ਹਾਂ ਦਾ ਕੋਈ ਸਰਟੀਫਿਕੇਟ ਜਾਂ ਮੈਰਿਜ ਰਜਿਸਟਰ ਕਰਾ ਲਿਓ ਕਿਸੇ ਹੋਰ ਸੂਬੇ ਦੇ ਵਿੱਚ ਜਾ ਕੇ ਉਹੋ ਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਕਾਨੂੰਨ ਦੀ ਜਾਣਕਾਰੀ ਲੋਕਲ ਵੀਜ਼ਾ ਆਫਿਸ ਨੂੰ ਹੁੰਦੀ ਹੈ ਜੇ ਤੁਸੀਂ ਇਹੋ ਜਿਹਾ ਕੋਈ ਡਾਕੂਮੈਂਟ ਲੈ ਵੀ ਲੈਨੇ ਹੋ ਤਾਂ ਉਹ ਤੁਹਾਡਾ ਚੈਲੰਜ ਹੋ ਜਾਂਦਾ ਔਰ ਤੁਹਾਡੀ ਅਪਲੀਕੇਸ਼ਨ ਜਿਹੜੀ ਅੰਡਰ ਮਿਸ ਰਿਪਰੈਜ਼ੈਂਟੇਸ਼ਨ ਆ ਜਾਂਦੀ ਹੈ ਜਿਹੜਾ ਕਿ ਤੁਹਾਨੂੰ ਕੈਨੇਡਾ ਆਉਣ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦੀ ਹੈ। ਅੱਛਾ ਜੀ ਇਹ ਦੱਸਿਓ ਕਿ ਜਿਹੜਾ ਸੱਜਰਾ ਵਿਆਹ ਪਹਿਲੀ ਵਾਰ ਤੇ ਉਹਦੇ ਤੋਂ ਤੇ ਦੂਜਾ ਕੋਈ ਤਲਾਕशुदा ਹੈ ਉਹਨੂੰ ਫੇਰ ਘੋਖਦੇ ਆਂ ਰਸਵਾਰ ਕੇ ਜਾਂ ਫਿਰ ਉਸ ਤਰ੍ਹਾਂ ਹੀ ਫਾਈਲਾਂ ਦੇ ਵਿੱਚੇ ਉਸ ਤਰ੍ਹਾਂ ਹੀ ਉਹ ਨਿਕਲ ਜਾਂਦੀ ਹੈ ਕਿ ਉਹਦੀ ਫਾਈਲ ਅਲੱਗ ਕਰ ਉਹਨਾਂ ਦੀ ਫਾਈਲ ਬਿਲਕੁਲ ਅਲੱਗ ਹੁੰਦੀ ਹੈ ਜਿਹੜੀ ਅਸੈਸਮੈਂਟ ਹੈ ਇਸ ਆਫਿਸ ਵੱਲੋਂ ਜਦੋਂ ਕੀਤੀ ਜਾਂਦੀ ਹੈ ਕਈ ਜਿਹੜੀਆਂ ਵੀਜ਼ਾ ਪੋਸਟ ਨੇ ਗਿਲਸਾ ਬੜੀਆਂ ਸੰਵੇਦਨਸ਼ੀਲ ਕਹਿ ਸਕਦੇ ਆਪਾਂ ਆ ਖਾਸ ਕਰਕੇ ਜਿਹੜੀਆਂ ਚਾਈਨਾ ਦੀ ਵੀਜ਼ਾ ਪੋਸਟ ਨੇ ਜਾਂ ਇੰਡੀਆ ਦੀ ਵੀਜ਼ਾ ਪੋਸਟ ਦਾ ਖਾਸ ਕਰਕੇ ਨਿਊ ਡੈਲੀ ਦੀ ਜਿਹੜੀ ਵੀਜ਼ਾ ਪੋਸਟ ਹੈ ਉਹ ਬੜੀਆਂ ਸੈਂਸਿਟਿਵ ਹੁੰਦੀਆਂ ਨੇ ਵਿਆਹ ਦੇ ਕੇਸ ਨੂੰ ਲੈ ਕੇ ਕਿਉਂਕਿ ਕਾਫੀ ਸਾਲਾਂ ਦੇ ਲਈ ਇਹ ਚੀਜ਼ ਔਨ ਰੈਕਟ ਵੀ ਰਹੀ ਹੈ ਵੀ ਵਿਆਹ ਦੇ ਜਿਹੜਾ ਪ੍ਰੋਸੈਸ ਹੈ ਮਿਸਯੂਜ਼ ਕੀਤਾ ਜਾਂਦਾ ਗਵਰਨਮੈਂਟ ਨੇ ਆਪਣੀ ਵੈਬਸਾਈਟ ਤੇ ਵੀ ਸਪੈਸ਼ਲੀ ਪਾਇਆ ਹੋਇਆ ਮੈਰਿਜ ਆਫ ਕਨਿਵੀਐਂਸ ਕੀਤਾ ਹੈ ਤੇ ਇਹਦੇ ਕਨਸੀਕਵੈਂਸਸ ਕੀ ਹੋ ਸਕਦੇ ਨੇ ਔਰ ਸਖਤੀ ਨਾਲ ਜਦੋਂ ਕੋਈ ਸਿੰਗਲ ਮੈਰਿਜ ਕਰਾਉਣ ਨੇ ਜਾਂ ਹਰਡਲਸ ਨੇ ਉਹ ਇੰਨੀਆਂ ਬੜੀਆਂ ਨਹੀਂ ਹੈ ਜਿਹੜਾ ਇੰਡੀਵਿਜੂਅਲ ਸਪੌਂਸਰ ਕਰਨ ਜਾ ਰਿਹਾ ਉਹ ਕੈਨੇਡਾ ਕਿਸ ਤਰ੍ਹਾਂ ਆਇਆ ਸੀ ਜਦੋਂ ਕੋਈ ਐਪਲੀਕੇਸ਼ਨ ਤੁਸੀਂ ਫਾਈਲ ਕਰਦੇ ਹੋ ਤਾਂ ਤੁਹਾਨੂੰ ਇਹ ਕੁਐਸਚਨ ਪੁੱਛੇ ਜਾਂਦੇ ਨੇ ਵੀ ਤੁਸੀਂ ਕੈਨੇਡਾ ਕਦੋਂ ਆਏ ਸੀ ਕਿਸ ਕੈਟਾਗਰੀ ਚ ਆਏ ਸੀ ਕਿੱਥੇ ਤੁਸੀਂ ਰਹਿ ਰਹੇ ਹੋ ਜਦੋਂ ਤੋਂ ਕੈਨੇਡਾ ਆਇਓ ਆ ਯਾ ਆਪਣਾ ਹਿਸਟਰੀ ਦੋ ਜਿਸ ਐਡਰੈਸ ਤੇ ਤੁਸੀਂ ਰਹਿ ਰਹੇ ਹੋ ਸੋ ਇਹ ਸਾਰੇ ਕੁਐਸਚਨ ਪੁੱਛਣ ਦਾ ਬੇਸਿਕ ਮੋਟਿਵ ਇਹੀ ਹੈ ਵੀ ਜਿਹੜੀ ਵੀਜ਼ਾ ਆਫੀਸਰ ਹੈ ਜੇ ਉਹ ਤੁਹਾਡਾ ਅਪਲੀਕੇਸ਼ਨ ਅੰਡਰ ਇਨਵੈਸਟੀਗੇਸ਼ਨ ਚੱਲਾ ਜਾਂਦਾ ਤਾਂ ਉਹ ਦੇਖ ਸਕਦੇ ਨੇ ਵੀ ਤੁਹਾਡੀ ਇਨਫੋਰਮੇਸ਼ਨ ਕੀ ਪ੍ਰੋਵਾਈਡ ਹੋਈ ਔਰ ਰੀਜ਼ਨ ਕੀ ਹੈ ਤੁਹਾਡੇ ਕੇਸ ਨੂੰ ਇਨਵੈਸਟੀਗੇਟ ਕਰਨ ਦਾ a single ਇਸ ਤੇ ਇਹ ਪ੍ਰੋਬਲਮ ਨਹੀਂ ਆਉਂਦੀ ਕਿ ਜਿਹੜੇ ਲੋਕ ਪੀਐਮਪੀ ਦੇ ਥਰੂ ਇਮੀਗ੍ਰੇਸ਼ਨ ਹਾਸਲ ਕਰਦੇ ਨੇ ਉਹਨਾਂ ਨੂੰ ਜ਼ਰੂਰ ਇਹ ਪੁੱਛਿਆ ਜਾਂਦਾ ਖਾਸ ਕਰਕੇ ਜਿਹੜੇ ਕਿ ਬੈਕ ਦੇ ਵਿੱਚ ਜਾਂ ਮੈਨੀਟੋਬਾ ਇਹੋ ਜਿਹੇ ਪ੍ਰੋਵਿੰਸਸ ਦੇ ਵਿੱਚ ਆਉਂਦੇ ਨੇ ਇਮੀਗ੍ਰੇਸ਼ਨ ਹਾਸਲ ਕਰਦੇ ਨੇ ਔਰ 2 ਸਾਲ ਕਈ ਜਿਵੇਂ ਮੈਨੀਟੋਬਾ ਦੀ ਮੈਂ ਐਗਜ਼ਾਮਪਲ ਦੇ ਦਿੰਨਾ ਵੀ 2 ਸਾਲ ਤੁਹਾਡੇ ਤੇ ਕੰਡੀਸ਼ਨ ਹੈ ਵੀ ਤੁਸੀਂ ਉੱਥੇ ਰਹਦੇ ਹੋਣੇ ਚਾਹੀਦੇ ਹੋ ਨਾਓ ਇਹਦੇ ਲਈ ਵੀਜ਼ਾ ਆਫੀਸਰ ਨੂੰ ਇੱਕ ਬੜਾ ਇੰਪੋਰਟੈਂਟ ਟੂਲ ਦਿੱਤਾ ਪਿਛਲੀ ਸਰਕਾਰ ਨੇ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਉਹਨਾਂ ਦੇ ਜਿਹੜਾ ਇੰਡੀਵਿਜੂਅਲ ਉਹਦੇ ਖਿਲਾਫ ਜਿਵੇਂ ਇੰਡੀਆ ਦੇ ਵਿੱਚ ਐਫ ਆਈ ਆਰ ਲਿਖੀ ਜਾਂਦੀ ਆ ਤਾਂ ਇਹ ਰਿਪੋਰਟੇਬਲ ਆਫੈਂਸ ਹੈ ਆਫੀਸਰ ਥੋੜੇ ਖਿਲਾਫ ਐਫ ਆਈ ਆਰ ਮੰਗੂ ਸੈਕਸ਼ਨ 44 ਦੇ ਅੰਦਰ ਰਿਪੋਰਟ ਲਿਖ ਸਕਦਾ ਥੋ ਇਨਵੈਸਟੀਗੇਸ਼ਨ ਦਾ ਇੱਕ ਪ੍ਰੋਸੈਸ ਹੈ ਜਿਹੜਾ ਕਿ ਇੱਕ ਵੱਖਰਾ ਹੀ ਟੌਪਿਕ ਹੈ ਜਿਹਦੇ ਬਾਰੇ ਅਗਲੇ ਹਫਤੇ ਮੈਂ ਜ਼ਰੂਰ ਗੱਲ ਕਰੂੰਗਾ ਨਾਓ ਜਿਹੜੀ ਇਨਵੈਸਟੀਗੇਸ਼ਨ ਹੈ ਉਹਦਾ ਰੀਜ਼ਨ ਹੋਣਾ ਚਾਹੀਦਾ ਆਫੀਸਰ ਕੋਲ ਕਿਉਂਕਿ ਇਹ ਇਮੀਗ੍ਰੇਸ਼ਨ ਡਿਵੀਜ਼ਨ ਜਿਹੜੀ ਆ ਟ੍ਰਿਬਿਊਨਲ ਆ ਉਹ ਸੁਪਰਵਾਈਜ਼ ਕਰਦਾ ਹੈ ਰਿਪੋਰਟਸ ਨੂੰ ਇਦਾਂ ਨਹੀਂ ਹੈ ਵੀ ਆਫੀਸਰ ਆਪਣੀ ਮਰਜ਼ੀ ਨਾਲ ਤੁਹਾਡੇ ਖਿਲਾਫ ਰਿਪੋਰਟ ਲਿਖ ਸਕਦਾ ਆਈ.ਡੀ ਜਿਹੜਾ ਇੱਕ ਟ੍ਰਿਬਿਊਨਲ ਦਾ ਜੱਜ ਹੈ ਜਿਹੜਾ ਇਹਦਾ ਫੈਸਲਾ ਕਰਦਾ ਵੀ ਜਿਹੜਾ ਅਫੈਂਸ ਸੀ ਰਿਪੋਰਟ ਕੀਤਾ ਗਿਆ ਉਹ ਜਸਟੀਫਾਈਡ ਆ ਜਾਂ ਨਹੀਂ ਜਸਟੀਫਾਈਡ ਪਰ ਇਹ ਹਾਸਲ ਚ ਪੈਣਾ ਨਹੀਂ ਚਾਹੀਦਾ ਯੂ نو ਤੁਹਾਨੂੰ ਇੱਕ ਸਾਉਂਡ ਐਡਵਾਈਸ ਦੀ ਜ਼ਰੂਰਤ ਹੁੰਦੀ ਹੈ ਜਦੋਂ ਤੁਸੀਂ ਵਿਆਦਾ ਕੇਸ ਅਪਲਾਈ ਕਰਦੇ ਹੋ ਇਹ ਤੁਹਾਨੂੰ ਲੱਗਦਾ ਵੀ ਕੈਨੇਡਾ ਦੇ ਵਿੱਚ ਤੁਸੀਂ ਕੋਈ ਕੋਈ ਹਜ਼ਰ ਰੀਜ਼ਨ ਬਣਦਾ ਤੁਹਾਡਾ ਜਿਹੜਾ ਕਿ ਇੱਕ ਇਸ਼ੂ ਅਰਾਈਜ਼ ਹੋ ਸਕਦਾ ਤਾਂ ਉਹਦੀ ਲੀਗਲ ਐਡਵਾਈਸ ਜਰੂਰੀ ਹੁੰਦੀ ਹੈ ਐਂਡ ਇਸ ਤੋਂ ਇਲਾਵਾ ਜਿਹੜੇ ਸੈਕੰਡ ਮੈਰਿਜ ਦੇ ਕੇਸ ਨੇ ਯੈਸ ਇਹਨਾਂ ਲਈ ਕਾਫੀ ਜ਼ਿਆਦਾ ਇਹ ਪ੍ਰੋਬਲਮ ਹੈਗੀ ਹੈ ਔਰ ਕਾਫੀ ਵੱਡੀ ਗਿਣਤੀ ਹੈ ਜਿਹੜੀ ਹਾਲੇ ਵੀ ਕੇਸਸ ਯੂ نو ਦੇ ਵਿੱਚ ਪਏ ਨੇ ਇਨਵੈਸਟੀਗੇਸ਼ਨ ਚ ਪਏ ਨੇ ਕਈ ਇਹ ਜਿਹੇ ਵੀ ਇੰਡੀਵਿਜੂਅਲ ਹੋਣਗੇ ਜਿਹੜੇ ਜਦੋਂ ਆਪਣੀ ਸਿਚੁਏਸ਼ਨ ਦੱਸਦੇ ਨੇ ਵੀ ਆਮ ਕਰਕੇ ਇਮੀਗ੍ਰੇਸ਼ਨ ਕਹਿੰਦੀ ਆ ਵੀ ਸੀ 1.5 ਸਾਲ ਚ ਕੇਸ ਜਿਹੜਾ ਉਹ ਸਿਰੇ ਫਾਈਨਲ 스테जेस ਤੇ ਲੈ ਜਾਂਦੇ ਆ ਪਰ ਉਹਨਾਂ ਦੇ ਕੇਸ 3-3 ਸਾਲ, 3.5-3 ਸਾਲ ਲੱਗ ਜਾਂਦੇ ਆ ਤੇ ਉਹਨਾਂ ਨੂੰ ਐਪਲੀਕੇਸ਼ਨ ਦਾ ਕੋਈ ਪਤਾ ਨਹੀਂ ਲੱਗਦਾ ਐਮਪੀ ਆਫਿਸਿਸ ਦੇ ਵਿੱਚ ਵੀ ਲੋਕ ਲਾਈਨ ਅਪ ਕਰਦੇ ਨੇ ਇਹ ਚੀਜ਼ ਇਸ਼ੂ ਰੇਜ਼ ਕਰਦੇ ਨੇ ਵੀ ਸਾਡੇ ਜਿਹੜੀ ਐਪਲੀਕੇਸ਼ਨ ਉਨ ਡਿਲੇ ਆਇਆ ਡਿਲੇ ਦਾ ਕਾਰਨ ਹੁੰਦਾ ਉਹ ਇਨਵੈਸਟੀਗੇਸ਼ਨ ਕਰਕੇ ਹੀ ਤੁਹਾਡਾ ਕੇਸ ਜਿਹੜਾ ਰੋਕਿਆ ਜਾ ਸਕਦਾ ਔਰ ਉਹਦੀ ਤੁਸੀਂ ਜਾਣਕਾਰੀ ਜਿਹੜੀ ਆ ਵੀਜਾ ਆਫਿਸ ਤੋਂ ਲੈ ਸਕਦੇ ਹੋ ਉਂਿ ਤੁਹਾਨੂੰ ਰਾਈਟਿੰਗ ਦੱਸ ਸਕਦੇ ਨੇ ਕਿ ਕਿਸ ਵਜ੍ਹਾ ਕਰਕੇ ਤੁਹਾਡਾ ਜਿਹੜਾ ਕੇਸ ਹੈ ਸੀ ਰੋਕਿਆ ਹੋਇਆ। 11:40 ਮਿੰਟ ਹੋਏ ਵਾਪਸ ਆ ਕੇ ਫੇਰ ਅਮਨ ਖੈਰਾ ਜੀ ਨਾਲ ਗੱਲਬਾਤ ਕਰਦੇ। ਅਮਨ ਖੈਰਾ ਜੀ ਗੱਲਬਾਤ ਕਰ ਰਹੇ ਨੇ। ਅੱਛਾ ਜੀ ਅਪਲਾਈ ਕਰਤਾ ਤੇ ਅਪਲਾਈ ਕਰਨ ਦੇ ਉਸ 'ਚ ਇੱਥੇ ਆਉਣ ਤੱਕ ਵਿਗੜੋ ਪੈ ਗਈ ਕਿਸੇ ਗੱਲ ਤੇ? ਉਸ ਸਮੇਂ ਕੀ ਹੋ ਸਕਦਾ ਦੋਨਾਂ ਦੇ ਹੱਕ ਕੀ ਨੇ ਜਿਹਦੇ ਲਈ ਅਪਲਾਈ ਕੀਤਾ ਤੇ ਜਿਹਨੇ ਅਪਲਾਈ ਕੀਤਾ ਉਹ ਕੀ ਕਰ ਸਕਦੇ ਫਿਰ ਜੀ ਜਿਹੜੀ ਕਾਨੂੰਨ ਦੇ ਹਿਸਾਬ ਨਾਲ ਜੇ ਤੁਹਾਡਾ ਰਿਲੇਸ਼ਨਸ਼ਿਪ ਜਿਹੜਾ ਹੈਗਾ ਜੈਨੂਇਨ ਨਹੀਂ ਦਿਹਾ ਜਾਂ ਤੁਸੀਂ ਡਿਸਕੰਟੀਨਿਊ ਕਰ ਰਹੇ ਹੋ ਜਿਹੜਾ ਆਪਣਾ ਰਿਲੇਸ਼ਨਸ਼ਿਪ ਹੈ ਤਾਂ ਤੁਹਾਨੂੰ ਇਮੀਡੀਏਟਲੀ ਇਮੀਗ੍ਰੇਸ਼ਨ ਨੂੰ ਇਨਫੋਰਮ ਕਰਨਾ ਪੈਂਦਾ ਨਾਓ ਜਿਹੜਾ ਕਾਨੂੰਨ ਹੈ ਉਹ ਦੋਨਾਂ ਵੱਲ ਬਰਾਬਰ ਨਿਵਾ ਰੱਖਦਾ ਆ ਜਿਹੜੀ ਸਪਾਂਸਰਸ਼ਿਪ ਹੈ ਜੋ ਤੁਸੀਂ ਵਿਦਡਰਾ ਕਰਦੇ ਹੋ ਐਜ਼ ਅ ਸਪਾਂਸਰ ਤਾਂ ਤੁਹਾਡੇ ਕੋਲ ਤੁਸੀਂ ਆਪਣਾ ਰਾਈਟ ਵਿਦਡਰਾ ਕਰ ਰਹੇ ਹੋ ਜਿਵੇਂ ਤੁਹਾਡੇ ਕੋਲ ਰਾਈਟ ਆਫ ਸਪਾਂਸਰਸ਼ਿਪ ਹੁੰਦਾ ਹੈ ਕਾਨੂੰਨ ਦੇ ਹਿਸਾਬ ਨਾਲ ਸੈਕਸ਼ਨ 130 ਦੇ ਅੰਦਰ ਨਾਓ ਜਦੋਂ ਤੁਸੀਂ ਵਿਦਡਰਾਲ ਫਾਈਲ ਕਰਦੇ ਹੋ ਤਾਂ ਤੁਹਾਨੂੰ ਕੋਈ ਸਪੈਸੀਫਿਕ ਰੀਜ਼ਨਿੰਗ ਦੀ ਜ਼ਰੂਰਤ ਨਹੀਂ ਹੁੰਦੀ ਕੋਈ ਸਪੈਸੀਫਿਕ ਜਿਹੜੀ ਯੂ نو ਰੀਜ਼ਨਲੀ ਜ਼ਰੂਰਤ ਨਹੀਂ ਹੁੰਦੀ ਜੇ ਤੁਸੀਂ ਡਿਸਕੰਟੀਨਿਊ ਕਰਦੇ ਹੋ ਤਾਂ ਤੁਸੀਂ ਇਮੀਡੀਟਲੀ ਇਨਫਾਰਮ ਕਰਨਾ ਐਟ ਦ ਸੇਮ ਟਾਈਮ ਜਿਹੜੇ ਐਪਲੀਕੈਂਟ ਆ ਉਹਨਾਂ ਕੋਲ ਕੋਈ ਇਹੋ ਜਿਹਾ ਪ੍ਰੋਸੈਸ ਨਹੀਂ ਹੈ ਵੀ ਤੁਹਾਨੂੰ ਰੋਕਿਆ ਜਾ ਸਕੇ ਜਾਂ ਸਪਾਂਸਰਸ਼ਿਪ ਵਿਡਰੋ ਕਰਨ ਤੋਂ ਕਿਸੇ ਕਿਸਮ ਦੀ ਜਿਹੜੀ ਰੋਕਥਾਮ ਹੈ ਜਾਂ ਇਹ ਕਿਹਾ ਜਾ ਸਕੇ ਵੀ ਜਿਹੜੀ ਇਸ ਕਾਰਨ ਕਰਕੇ ਸਪਾਂਸਰਸ਼ਿਪ ਵਿਡਰੋ ਹੋਈ ਹੈ ਜਾਂ ਤਰਸ ਦੇ ਆਧਾਰ ਤੇ ਉਹਨਾਂ ਦੀ ਐਪਲੀਕੇਸ਼ਨ ਨੂੰ ਕੰਟੀਨਿਊ ਕੀਤਾ ਜਾ ਸਕੇ ਇਹ ਕਿਉਂਕਿ ਰਾਈਟ ਐਕਸਕਲੂਸਿਵਲੀ ਸਪਾਂਸਰ ਕੋਲ ਹੁੰਦਾ ਹੈ ਸਪਾਂਸਰਸ਼ਿਪ ਜੇ ਵਿਡਰੋਲ ਹੋ ਜਾਂਦੀ ਹੈ ਤਾਂ ਜਿਹੜਾ ਸਪਾਂਸਰਡ ਸਪਾਊਸ ਉਹ ਕੁਝ ਨਹੀਂ ਕਰ ਸਕਦਾ ਉਹ ਐਪਲੀਕੇਸ਼ਨ ਜਿਹੜੀ ਹੈ ਡਿਸਕੰਟੀਨਿਊ ਹੋ ਗਈ ਅੱਛਾ ਜੀ ਇੱਕ ਹੋਰ ਦੱਸਿਓ ਇਮੀਗ੍ਰੇਸ਼ਨ ਹੋ ਗਈ 에어ਪੋਰਟ ਤੇ ਦੂਜਾ ਸਾਥੀ ਲੈਣ ਲਈ ਖੜਾ ਹੈ ਚਾਹੇ ਮਰਦਾ ਚਾਹੇ ਇਸਤਰੀ ਤੇ ਜਹਾਜ਼ ਇੱਥੇ ਨਹੀਂ ਉਤਰਿਆ ਜਹਾਜ਼ ਟ੍ਰਾਂਟੋ ਉਤਰ ਗਿਆ ਟ੍ਰਾਂਟੋ ਵਾਲਾ ਇੱਥੇ ਉਤਰ ਗਿਆ ਫੇਰ ਉਹ ਕੀ ਕਰ ਸਕਦਾ ਜੇ ਬੰਦਾ ਹੀ ਨਹੀਂ ਆਇਆ ਕੋਲ ਹੁਣ ਉਹ ਪਰਵੀਜ਼ਨ 5 ਸਾਲ ਵਾਲੀ ਹਲੇ ਹੈ ਵੀ ਨਰੜ ਰਹਿਣਾ ਤੇ ਉਹਦੇ ਬਾਅਦ ਹੁਣ ਪਰਵੀਜ਼ਨ ਜਾਂ 2 ਸਾਲ ਦੀ ਜਿਹੜੀ ਸੀ ਉਹਦੇ ਬਾਅਦ ਇਮੀਗ੍ਰੇਸ਼ਨ ਹੋਣੀ ਹੈ ਪੀਆਰ ਹੁਣ ਹਾਲੇ ਵੀ ਹੈ ਜੀ ਕੰਡੀਸ਼ਨ ਹਾਲੇ ਵੀ ਐਗਜ਼ਿਸਟ ਕਰਦੀ ਹੈ ਦੋ ਸਰਕਾਰ ਨੇ ਜਿਹੜੀ ਪ੍ਰੈਜ਼ੈਂਟ ਸਰਕਾਰ ਇਹਨਾਂ ਨੇ ਅਨਾਉਂਸ ਕੀਤਾ ਵੀ ਅਸੀਂ ਜਿਹੜੀ ਕੰਡੀਸ਼ਨਲ ਪਰਮਨੈਂਟ ਰੈਜ਼ਿਡੈਂਸੀ ਹੈ ਉਹ ਹਟਾਵਾਂਗੇ ਕਾਨੂੰਨ ਨੇ ਬਣਿਆ ਹੋਇਆ ਵੀ ਜੇ 2 ਸਾਲ ਤੁਸੀਂ ਨਹੀਂ ਰਹਿੰਦੇ ਤਾਂ ਤੁਹਾਡੇ ਖਿਲਾਫ ਜਿਹੜਾ ਐਕਸ਼ਨ ਲਿਆ ਜਾ ਸਕਦਾ ਇਹਨੂੰ ਕੰਡੀਸ਼ਨਲ ਜਿਹੜੀ ਪਰਮਨੈਂਟ ਰੈਜ਼ਿਡੈਂਸੀ ਉਹਦਾ ਮਤਲਬ ਹੈ ਤੁਹਾਡੇ ਤੇ ਕੰਡੀਸ਼ਨ ਐਪਲੀਕੇਬਲ ਹੁੰਦੀ ਹੈ ਔਰ 2 ਸਾਲ ਦੇ ਪੀਰੀਅਡ ਬਾਅਦ ਜਿਹੜੀ ਉਹ ਕੰਡੀਸ਼ਨ ਹਟ ਜਾਂਦੀ ਹੈ ਜਾਂ ਫਿਰ ਤੁਹਾਡੇ ਰਿਲੇਸ਼ਨਸ਼ਿਪ ਚ ਤੁਹਾਡੇ ਬੇਬੀ ਹੋ ਜਾਂਦਾ ਜਾਂ ਫਿਰ ਜਿਹੜਾ ਸਪான்ਸਰ ਹੈ ਉਹਦੀ ਮੌਤ ਹੋ ਜਾਂਦੀ ਹੈ ਕਿਸੇ وجہ ਕਰਕੇ ਤਾਂ ਫੇਰ ਇਹੋ ਕੰਡੀਸ਼ਨ ਜਿਹੜੀ ਆਟੋਮੈਟਿਕਲੀ ਬਾਈ ਡਿਫਾਲਟ ਹਟਦੀ ਹੈ ਅਦਰਵਾਈਜ਼ 2 ਸਾਲ ਤੁਸੀਂ ਰਹਿਣਾ ਹੈ ਨਾਓ ਜਿਹੜੀ ਇਹ ਤੇ ਸਭ ਤੋਂ ਇੰਪੋਰਟੈਂਟ ਇਹ ਚੀਜ਼ ਹੈ ਗਿਲ ਸਾਹਿਬ ਜਿਹੜਾ ਰੂਲ ਬਣਿਆ ਵੀ ਸੀ ਉਹ ਕੋਈ ਖਾਸ ਯੂ ਨੋ ਸਖਤ ਕਾਨੂੰਨ ਨਹੀਂ ਸੀਗਾ ਉਹ ਇੱਕ ਕਹਿ ਸਕਦੇ ਆ ਬਿਟ ਪੁੱਥਲੈਸ ਸੀਗਾ ਜਿਹੜਾ ਜਿਹੜਾ ਕਾਨੂੰਨ ਸੀਗਾ ਉਹ ਕੋਈ ਸਾ ਖਾਸ ਜਿਵੇਂ ਉਹਦੇ ਚ ਕਿਉਂਕਿ ਹੋਇਆ ਕੀ ਸੀ ਜਦੋਂ ਇਹ ਕਾਨੂੰਨ ਲਿਆਂਦਾ ਗਿਆ ਸੀ ਉਹ ਇਸ ਵਜ੍ਹਾ ਕਰਕੇ ਲਿਆਂਦਾ ਗਿਆ ਸੀ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਸਪਾਊਸ ਇੱਥੇ ਐਜ਼ ਅ ਪਰਮਨੈਂਟ ਰੈਜ਼ੀਡੈਂਟ ਲੈਂਡ ਕਰਦਾ ਤੇ ਉਹ ਤੋਂ ਬਾਅਦ ਉਹਨਾਂ ਦੇ ਕੁਝ ਅਧਿਕਾਰ ਬਣ ਜਾਂਦੇ ਨੇ ਕੈਨੇਡਾ ਦੇ ਵਿੱਚ ਅਪੀਲ ਪ੍ਰੋਸੈਸ ਹੈ ਉਹਨਾਂ ਨੂੰ ਕੈਨੇਡਾ ਚੋਂ ਕੱਢਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਕੱਢੇ ਜਾਂਦੇ ਨੇ ਪਰ ਮੁਸ਼ਕਲ ਹੋ ਜਾਂਦਾ ਹੈ ਇਹਦੀ ਇੱਕ ਇਹ ਵੀ ਪ੍ਰੋਬਲਮ ਸੀ ਕਿ ਜਿਹੜੀ ਲੈਕ ਆਫ ਰਿਸੋਰਸਸ ਨੇ ਗਵਰਨਮੈਂਟ ਕੋਲ ਸਿਰਫ 6 ਆਫੀਸਰਸ ਸੀ ਕੈਨੇਡਾ ਭਰ ਦੇ ਵਿੱਚ ਜਿਹੜੇ ਕਿ ਤਕਰੀਬਨ 300 ਕੇਸਸ ਨੂੰ ਹੈਂਡਲ ਕਰ ਰਹੇ ਸੀ ਸੋ ਇਸ ਵਜ੍ਹਾ ਕਰਕੇ ਕਿਉਂਕਿ ਇਹਨਾਂ ਚ ਡਿਲੇ ਆਉਂਦਾ ਸੀ ਰਿਮੂਵ ਕਰਨ ਕਰਕੇ ਸੋ ਪਿਛਲੀ ਸਰਕਾਰ ਨੇ ਇਹ ਕੰਡੀਸ਼ਨਲ ਪਰਮਨੈਂਟ ਰੈ ਵਾਲਾ ਜਿਹੜਾ ਕਾਨੂੰਨ ਆ ਉਹ ਲੈ ਆਂਦਾ ਪਰ ਐਟ ਦ ਸੇਮ ਟਾਈਮ ਐਕਸਪਲੋਇਟੇਸ਼ਨ ਇੱਕ ਬਹੁਤ ਇੰਪੋਰਟੈਂਟ ਇਸ਼ੂ ਸੀਗਾ ਉਹਨੂੰ ਬੈਲੈਂਸ ਆਊਟ ਕਰਨ ਦੇ ਲਈ ਵੀ ਕੋਈ ਜਿਹੜੀ ਸਪੌਂਸਰਡ ਸਪਾਊਸ ਨੂੰ ਐਕਸਪਲੋਇਟ ਨਾ ਕੀਤਾ ਜਾ ਸਕੇ ਉਹਨੂੰ ਬੈਲੈਂਸ ਕਰਨ ਦੇ ਲਈ ਉਹਨਾਂ ਦੇ ਕੁਝ ਅਧਿਕਾਰ ਰੱਖੇ ਗਏ। ਨਾ ਉਹਦੇ ਵਿੱਚ ਉਹ ਅਧਿਕਾਰ ਇੰਨੇ ਬੜੇ ਹੋ ਗਏ ਵੀ ਕਿਸੇ ਨੂੰ ਟੈਕਨੀਕਲੀ ਕੈਨੇਡਾ ਦੇ ਵਿੱਚੋਂ ਰਿਮੂਵ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਨਾ ਜੇ ਵੈਬਸਾਈਟ ਤੇ ਜਾਓ ਵੈਬਸਾਈਟ ਤੇ ਸਰਕਾਰ ਨੇ ਕਿਹਾ ਵੀ ਜੇ ਤੁਸੀਂ ਵਿਕਟਮ ਆਫ ਨੈਗਲੈਕਟ ਜਾਂ ਵਿਕਟਮ ਆਫ ਫਾਈਨੈਂਸ਼ੀਅਲ ਨੈਗਲੈਕਟ, ਇਮੋਸ਼ਨਲ ਨੈਗਲੈਕਟ ਈਵਨ ਡਾਇਰੈਕਟਲੀ ਫਰੋਮ ਯੂਰ ਸਪਾਊਸ ਯਾਉ ਦੇ ਕਿਸੇ ਵੀ ਰਿਸ਼ਤੇਦਾਰ ਤੋਂ ਜੇ ਤੁਹਾਨੂੰ ਕਿਸੇ ਕਿਸਮ ਦੀ ਨੈਗਲੈਕਟ ਯਾ ਐਕਸਪਲੋਇਟੇਸ਼ਨ ਹੋ ਰਹੀ ਹੈ ਤਾਂ ਪਲੀਜ਼ ਇਹ ਫੋਨ ਨੰਬਰ ਤੇ ਸਾਨੂੰ ਡਾਇਲ ਕਰੋ ਤਾਂ ਇਮੀਡੀਏਟਲੀ ਸਾਨੂੰ ਜਿਹੜਾ ਹੈਗਾ ਇਨਫੋਰਮ ਕਰੋ ਨਾਉ ਜਦੋਂ ਤੁਸੀਂ ਇਨਫੋਰਮ ਕਰਦੇ ਹੋ ਤਾਂ ਤੁਹਾਨੂੰ ਲੋਕਲ ਆਫਿਸ ਜਿਹੜਾ ਅਪਾਇੰਟਮੈਂਟ ਦੇ ਕੇ ਬੁਲਾਇਆ ਜਾਂਦਾ ਤੁਹਾਡੀ ਸਾਰੀ ਸਟੋਰੀ ਹੈ ਜਿਹੜੀ ਉਹ ਲੈ ਲਈ ਜਾਂਦੀ ਹੈ ਆ ਤੇ ਤੁਹਾਡਾ ਜਿਹੜਾ ਕੇਸ ਉਹ ਇਨਵੈਸਟੀਗੇਟ ਹੁੰਦਾ ਨਾਉ ਟੈਕਨੀਕਲੀ ਆਮ ਕੇਸਿਸ ਜੇ ਦੇਖਿਆ ਗਿਆ ਸਾਡੇ ਪਰਸਨਲ ਐਕਸਪੀਰੀਅੰਸ ਦੇ ਨਾਲ ਅ ਵੀ ਜਿਹੜਾ ਸਪੌਂਸਰਡ ਸਪਾਊਸ ਹੈ ਕਿਉਂਕਿ ਉਹਨਾਂ ਦੇ ਅਧਿਕਾਰ ਬਹੁਤ ਹੁੰਦੇ ਨੇ ਜਦੋਂ ਰਿਪੋਰਟ ਕਰ ਦਿੰਦੇ ਨੇ ਤਾਂ ਜਿਹੜਾ ਜਿਹਨੇ ਸਪੌਂਸਰ ਕੀਤਾ ਉਹ ਉਹਨੂੰ ਕਾਫੀ ਯੂ ਨੋ ਕਾਂਕ੍ਰੀਟ ਐਵਿਡੈਂਸ ਸਾਹਮਣੇ ਰੱਖਣਾ ਪੈਂਦਾ ਜਿਹਦੇ ਕਰਕੇ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹਨੂੰ ਛੁਟਾਰਿਆ ਜਾ ਸਕੇ ਸੋ ਜੇ ਤੁਸੀਂ ਇਨਡਾਇਰੈਕਟਲੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਤੁਹਾਡੇ ਜਿਵੇਂ ਮਦਰ ਇਨ ਲਾ ਫਾਰ ਘਰ ਦੇ ਵਿੱਚ ਰਹਿੰਦੇ ਆ ਜਾਂ ਤੁਹਾਡੇ ਫਾਦਰ ਘਰੇ ਘਰ ਦੇ ਵਿੱਚ ਰਹਿੰਦੇ ਆ ਜਾਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਹੋਰ ਕੋਈ ਰਿਸ਼ਤੇਦਾਰ ਵਿਜ਼ਿਟ ਕਰਦੇ ਆ ਜਿਹਨੂੰ ਤੁਹਾਡੇ ਸਪਾਊਸ ਜਿਹੜਾ ਲਾਈਕ ਨਹੀਂ ਕਰਦੇ ਉਹ ਵੀ ਇੱਕ ਕਾਰਨ ਬਣ ਸਕਦਾ ਹੈ ਝਗੜੇ ਦਾ ਜਾਂ ਉਹ ਵੀ ਇੱਕ ਕਾਰਨ ਵੈਲਿਡ ਬਣ ਸਕਦਾ ਰੀਜ਼ਨ ਸਪਾਊਸ ਨੂੰ ਇੱਕ ਐਕਸਕਿਊਜ਼ ਮਿਲ ਸਕਦੀ ਹੈ ਜਿਸ ਤੋਂ ਕਹਿ ਸਕਦੇ ਨੇ ਵੀ ਆਹ ਮੈਂ ਵਿਕਟਮ ਆ ਐਂਡ ਇਹ ਚੀਜ਼ ਇਸ਼ੂ ਸੀਗਾ ਚਾਹੇ ਉਹ ਡਾਇਰੈਕਟ ਆ ਜਾਂ ਇੰਡਾਇਰੈਕਟ ਆ ਕਾਨੂੰਨ ਇਹ ਕਹਿੰਦਾ ਤਾਂ ਤੁਹਾਨੂੰ ਜਿਹੜਾ ਕੈਨੇਡਾ ਤੋਂ ਰੰਗੂ ਨਹੀਂ ਕਰਿਆ ਜਾ ਸਕਦਾ ਔਰ ਤੁਹਾਡੇ ਖਿਲਾਫ ਜਿਹੜੀ ਕੋਈ ਇਹ ਜੀ ਰਿਪੋਰਟ ਜਿਹੜੀ ਆ ਉਹ ਨਹੀਂ ਲਿਖੀ ਜਾ ਸਕਦੀ ਅੱਛਾ ਜੀ ਇੱਕ ਹੋਰ ਦੱਸੋ ਇਹਨਾਂ ਮੁਸ਼ਕਲਾਂ ਦੇ ਵਿੱਚ ਦੇਖੋ ਜ਼ਿੰਦਗੀ ਜੀਉਣ ਲਈ ਲੋਕ ਕਰਦੇ ਐ ਧੋਖੇ ਹੋ ਜਾਂਦੇ ਐ ਫਿਰ ਸਾਹਿਬ ਇੱਥੇ ਆਉਣ ਲਈ ਇਹਨਾਂ ਦੇਸ਼ਾਂ 'ਚ ਆਉਣ ਲਈ ਹੁਣ ਵਿਆਹ ਤੇ ਕਿਸੇ ਜ਼ਿੰਦਗੀ ਨੂੰ ਖੂਚ ਸਿੱਟਣ ਦੀ ਲੋੜ ਨਹੀਂ ਬਹੁਤ ਹੀਲੇ ਆ ਤੁਹਾਡੀ ਵਿਦਵਤਾ ਤੁਹਾਡੇ ਕੋਲ 4 ਪੈਸੇ ਨੇ ਕਿਤੇ ਵੀ ਬਹੁਤ ਹੁਣ ਆਪਸ਼ਨਸ ਨੇ ਤੁਸੀਂ ਆ ਸਕਦੇ ਹੋ ਵਿਆਹ ਵਾਲੀਆਂ ਗੱਲਾਂ ਹੁਣ ਕੱਲੀਆਂ ਖਤਮ ਹੋ ਗਈਆਂ ਜਦ ਇੱਥੇ ਆ ਜਾਂਦੇ ਐ ਜੀ ਉਹਦੇ ਬਾਅਦ ਜਦ ਕਿਸੇ ਨੂੰ ਇਹ ਪਤਾ ਲੱਗਿਆ ਕਿ ਮੈਨੂੰ ਮੇਰਾ ਸਿਰਫ ਮੈਨੂੰ ਇੱਥੇ ਆਉਣ ਲਈ ਵਰਤਿਆ ਗਿਆ ਜਿਹੜਾ ਤਾਂ ਵਰਤ ਗਿਆ ਉਹ ਤਾਂ ਚਲੇ ਗਿਆ ਜਿਹੜਾ ਵਰਤਿਆ ਗਿਆ ਜਿਸ ਨੂੰ ਲੱਗਿਆ ਕਿ ਯਾਰ ਮੈਂ ਮੇਰੀ ਐਕਸਪਲੋਇਟੇਸ਼ਨ ਹੋਈ ਹੈ ਉਹਦੇ ਕੋਲ ਕੀ ਹੱਕ ਨੇ ਜੀ ਉਹ ਕੀ ਕੀ ਕਰ ਸਕਦਾ ਜਦ ਕੋਈ ਪੀਆਰ ਹੋ ਗਿਆ ਉਹਨੂੰ ਵਾਪਸ ਤਾਂ ਨਹੀਂ ਨਾਲ ਜੀ ਭੇਜ ਸਕਦਾ ਫਿਰ ਇਹ ਗੱਲ ਕਿੰਨੀ ਕੁ ਸੱਚ ਹੈ ਜੀ ਜਿਹੜਾ ਵਾਪਸ ਭੇਜਣਾ ਜਿਹਦਾ ਹੱਕ ਹੈ ਉਹ ਕਾਨੂੰਨ ਦਾ ਹੱਕ ਹੈ ਉਹ ਜੱਜ ਦਾ ਹੱਕ ਹੈ ਜਾਂ ਲਾਅਸ ਲੈਂਡ ਦਾ ਜਿਹੜਾ ਕੋਰਟ ਹੈ ਉਹਨਾਂ ਦਾ ਹੱਕ ਹੈ ਉਹ ਰਿਮੂਵਲ ਆਰਡਰ ਜਿਹੜਾ ਇਨੀਸ਼ੀਏਟ ਕਰ ਸਕਦੇ ਨੇ yes ਜੇ ਇਹ ਚੀਜ਼ ਹੋਈ ਹੈ ਜਿਸ ਤੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਯੂਜ਼ ਕੀਤਾ ਗਿਆ ਤਾਂ ਤੁਹਾਨੂੰ ਇਮੀਡੀਏਟਲੀ ਇਨਫਾਰਮ ਕਰਨਾ ਚਾਹੀਦਾ ਇਹ ਬਹੁਤ ਇੰਪੋਰਟੈਂਟ ਹੈ ਗਿਲ ਸਰ ਜਦੋਂ ਅਸੀਂ ਅਪੀਲ ਦਾ ਕੇਸ ਲੜਦੇ ਆ ਤਾਂ ਜਿਹੜਾ ਆਪੋਜ਼ਿੰਗ ਕਾਉਂਸਲ ਹੈ ਇਹ ਚੀਜ਼ ਬਹੁਤ ਹਾਈਲਾਈਟ ਕਰਦੇ ਨੇ ਜਦੋਂ ਕਿਸੇ ਦਾ ਕੋਈ ਵਿਆਹ ਫੇਲ ਹੋ ਜਾਂਦਾ ਹੈ ਖਾਸ ਕਰਕੇ ਫਸਟ ਮੈਰਿਜ ਫੇਲ ਹੋ ਜਾਂਦੀ ਹੈ ਔਰ ਉਹ ਚਾਹੇ ਵਿਕਟਮ ਵੀ ਹੈ ਜਿਹਦੀ ਮੈਰਿਜ ਫੇਲ ਹੋਈ ਹੈ ਉਹ ਸੈਕੰਡ ਮੈਰਿਜ ਕਰਕੇ ਸਪਾਂਸਰਸ਼ਿਪ ਕਰਦਾ ਰਿਫਿਊਜ਼ ਹੋ ਉਸ ਤੋਂ ਬਾਅਦ ਅਪੀਲ 'ਚ ਜਾਂਦਾ ਅਪੀਲ 'ਚ ਜਾ ਕੇ ਇਹ ਚੀਜ਼ ਖਾਸ ਕਰਕੇ ਪੁੱਛੀ ਜਾਂਦੀ ਹੈ ਆਪੋਜ਼ਿੰਗ ਵੱਲੋਂ ਕਿ ਤੁਹਾਡੀ ਜਿਹੜੀ ਫਸਟ ਸਪਾਂਸਰਸ਼ਿਪ ਫੇਲ ਹੋਈ ਸੀ ਕਿਸ ਕਾਰਨ ਕਰਕੇ ਹੋਈ ਸੀ ਉਹ ਇੰਡੀਵਿਜੂਅਲ ਆਪਣੀ ਸਟੋਰੀ ਦੱਸਦਾ ਵੀ ਇਸ ਕਾਰਨ ਕਰਕੇ ਫੇਲ ਹੋਈ ਸੀ ਦ ਨੈਕਸਟ ਕੁਐਸਚਨ ਉਹਦਾ ਹੁੰਦਾ ਵੀ ਤੁਸੀਂ ਰਿਪੋਰਟ ਕੀਤਾ ਕਿ ਨਹੀਂ ਇਹ ਚੀਜ਼ ਜੇ ਉਹਨਾਂ ਨੇ ਰਿਪੋਰਟ ਨਹੀਂ ਕੀਤਾ ਤਾਂ ਉਹ ਬਹੁਤ ਨੈਗੇਟਿਵ ਲਿਆ ਜਾਂਦਾ ਹੈ ਚੀਜ਼ ਨੂੰ ਫਿਰ ਇਹਦਾ ਮਤਲਬ ਇਹ ਹੈ ਵੀ ਤੁਸੀਂ ਜਿਹੜਾ ਬਰੀਚ ਕੀਤਾ ਕਿਸ ਕੋਨ ਸੈਕਸ਼ਨ 4 ਬੀ ਜਿਹਦੇ ਵਿੱਚ ਸਪான்ਸਰ ਦੀ ਇਹ ਆਬਲੀਗੇਸ਼ਨ ਹੈ ਉਹਨੇ ਸਾਬਤ ਕਰਨਾ ਜਦੋਂ ਇਮੀਗ੍ਰੇਸ਼ਨ ਦਵਾ ਰਹੇ ਕਿਸੇ ਨੂੰ ਵੀ ਉਹ ਪਾਰਟੀ ਨਹੀਂ ਹੈ ਇਹ ਪ੍ਰੋਸੈਸ ਦੇ ਵਿੱਚ ਉਹ ਕਿਸੇ ਨੂੰ ਮਦਦ ਨਹੀਂ ਕਰ ਰਿਹਾ ਇਸ ਪ੍ਰੋਸੈਸ ਨੂੰ ਯੂਜ਼ ਕਰਕੇ ਇਮੀਗ੍ਰੇਸ਼ਨ ਦਵਾਉਣ ਦੇ ਵਿੱਚ ਤੁ ਜੇ ਤੁਸੀਂ ਬ੍ਰੀਚ ਕਰ ਜਾਂਦੇ ਹੋ ਤਾਂ ਇੱਕ ਵੱਖਰੀ ਐਪਲੀਕੇਸ਼ਨ ਔਨ ਦਾ ਸਪੋਰਟ ਸਪੌਟ ਜਿਹੜੀ ਹੈ ਕੋਰਟ ਦੇ ਵਿੱਚ ਧਾਰਕ ਕੀਤੀ ਜਾ ਸਕਦੀ ਹੈ ਤੁਹਾਡੇ ਖਿਲਾਫ ਵੀ ਜਿਹੜੀ ਤੁਹਾਡੀ ਪਿਛਲੀ ਸਪੌਂਸਰਸ਼ਿਪ ਸੀ ਉਹਨੂੰ ਵੀ ਫਰਦਰ ਚੈੱਕ ਕੀਤਾ ਜਾਏ ਔਰ ਉਹਨੂੰ ਬੜਾ 네ਗੇਟਿਵਲੀ ਲਿਆ ਜਾਂਦਾ ਸੋ ਇੰਪੋਰਟੈਂਟ ਹੈ ਜੇ ਤੁਹਾਨੂੰ ਕੋਈ ਹਜਾ ਇਸ਼ੂ ਅਰਾਈਜ਼ ਹੋਇਆ ਤੁਹਾਨੂੰ ਰਿਪੋਰਟ ਕਰਨਾ ਨਾ ਰਿਪੋਰਟ ਕਰਨ ਲਈ ਨੰਬਰ ਜਿਹੜਾ ਸੀਏਸੀ ਦੀ ਵੈਬਸਾਈਟ ਦੇ ਉੱਤੇ ਵੀ ਦਿੱਤਾ ਹੋਇਆ ਉਹਨਾਂ ਨੇ ਉਹਦੇ ਤੇ ਤੁਸੀਂ ਜਾ ਕੇ ਆਪਣੀ ਜਿਹੜੀ ਸਿਚੁਏਸ਼ਨ ਉਹਨੂੰ ਰਿਪੋਰਟ ਕਰ ਸਕਦੇ ਹੋ ਤੇ ਉਹ ਤੋਂ ਬਾਅਦ ਜਿਹੜਾ ਆ ਪ੍ਰੋਸੈਸ ਜਿਹੜੇ ਇੰਡੀਵਿਜੂਅਲ ਦੇ ਖਿਲਾਫ ਤੁਸੀਂ ਰਿਪੋਰਟ ਲਿਖਾ ਰਹੇ ਹੋ ਉਹਨੂੰ ਫਰਦਰ ਇਨਵੈਸਟੀਗੇਟ ਕਰਾਇਆ ਜਾਂਦਾ ਉਹਨਾਂ ਦੇ ਖਿਲਾਫ ਰਿਪੋਰਟ ਲਿਖੀ ਜਾ ਸਕਦੀ ਅੰਦਰ ਸੈਕਸ਼ਨ 44 ਹੇਤੂ ਬਾਗ ਉਹਨਾਂ ਦੇ ਜੇ ਰਿਪੋਰਟ ਸਾਬਤ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਦੇ ਖਿਲਾਫ ਜਿਹੜਾ ਰਿਮੂਵਲ ਆਰਡਰ ਜਿਹੜਾ ਉਹ ਇਸ਼ੂ ਕਰ ਦਿੱਤਾ ਜਾਂਦਾ ਜਿਹੜੇ ਇੰਡੀਵਿਜੂਅਲ ਦੇ ਖਿਲਾਫ ਰਿਮੂਵਲ ਆਰਡਰ ਇਸ਼ੂ ਹੋਇਆ ਉਹਦੇ ਕੋਲ ਅਪੀਲ ਦੇ ਅਧਿਕਾਰ ਹੁੰਦੇ ਨੇ ਜਿਹੜੀ ਜੇ ਉਹ ਕੰਡੀਸ਼ਨਲ ਪਰਮਨੈਂਟ ਰੈਜ਼ਿਡੈਂਸੀ ਦੇ ਵਿੱਚ ਹੈ ਤਾਂ ਉਹ ਅਧਿਕਾਰ ਜਿਹੜੇ ਆ ਉਹ ਕਾਫੀ ਲਿਮਿਟਿਡ ਨੇ ਉਹ ਇੱਥੇ ਕੈਨੇਡਾ ਦੇ ਵਿੱਚ ਸਿਰਫ ਜੁਡੀਸ਼ੀਅਲ ਰਿਵਿਊ ਹੀ ਸੀ ਕਰ ਸਕਦਾ ਥੈਂਸ ਜਿਹੜਾ ਇੰਡੀਵਿਜੂਅਲ ਪਰਮਨੈਂਟ ਰੈਜ਼ਿਡੈਂਸੀ ਹਾਸਲ ਕਰ ਚੁੱਕਿਆ ਵਿਦਆਊਟ ਕੰਡੀਸ਼ਨ ਤਾਂ ਉਹਦੇ ਕੋਲ ਇਮੀਗ੍ਰੇਸ਼ਨ ਡਿਵੀਜ਼ਨ ਦੇ ਵਿੱਚ ਆਪਣੀ ਐਪਲੀਕੇਸ਼ਨ ਜਿਹੜਾ ਅਪੀਲ ਕਰ ਸਕਦਾ ਆਪਣੇ ਆਪ ਨੂੰ ਡਿਫੈਂਡ ਕਰ ਸਕਦਾ ਇਸ ਤੋਂ ਇਲਾਵਾ ਜੋ ਕੇਸ ਫੇਲ ਹੋ ਜਾਂਦਾ ਤਾਂ ਫਿਰ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚ ਆਪਦੇ ਨੂੰ ਜਿਹੜਾ ਬੰਦਾ ਡਿਫੈਂਡ ਕਰ ਰਿਹਾ ਉਹਨੂੰ ਕਾਉਂਸਲ ਕਰਨਾ ਪੈਂਦਾ ਉਹਨੂੰ ਪੈਸੇ ਖਰਚਣੇ ਪੈਦੇ ਆ ਆਪ ਕੈਨੇਡਾ ਦੇ ਵਿੱਚ ਸਰਵਾਈਵਲ ਰੱਖਣ ਦੇ ਲਈ ਅੱਛਾ ਜੀ ਜੇ ਕੋਈ ਇਸ ਤਰ੍ਹਾਂ ਅਦਾਲਤ ਦੇ ਵਿੱਚ ਫਿੱਟ ਹੋ ਜਾਂਦੀ ਹੈ ਕਹਾਣੀ ਮੰਨੀ ਜਾਂਦੀ ਹੈ ਕਿ ਮੇਰੇ ਨਾਲ ਇਹ ਕਿਸੇ ਨਾਲ ਕਿਸੇ ਨੇ ਇਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਆਪਾਂ ਤੁਸੀਂ ਪਹਿਲਾਂ ਕਰਕੇ ਹਟੇ ਆਪਾਂ ਦੱਸ ਵੀ ਕੁਝ ਨਹੀਂ ਹੋ ਸਕਦਾ ਜੇ ਤੁਸੀਂ ਸਪான்ਸਰ ਕਰਤਾ ਪੀਆਰ ਹੋ ਗਏ ਲੜਾਈਆਂ ਜਿਹੜੀਆਂ ਝਗੜਿਆਂ ਦੇ ਵਿੱਚੋਂ ਕੱਖ ਨਹੀਂ ਹੈ ਅਖੀਰ ਦੇ ਵਿੱਚ ਇੱਕ ਪ੍ਰੋਫੈਸ਼ਨਲ opinion ਆਪਣੇ ਕੋਲ 1.5 ਮਿੰਟ ਦਾ ਹੋਰ ਸਮਾਂ ਤੁਸੀਂ ਇਹਨਾਂ ਕੇਸਾਂ ਦੇ ਵਿੱਚੋਂ ਬਹੁਤ ਲੰਘੇ ਹੋ ਕਿਸੇ ਨੂੰ ਸਪੌਂਡਿਆ ਤੋਂ ਬਾਅਦ ਇੱਥੇ ਆਉਣ ਤੇ ਤੇ ਸਮੂਥ ਲਾਈਫ ਖਰੇ ਤਾਂ ਇਹਦੇ ਚ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਇਮੀਗ੍ਰੇਸ਼ਨ ਪੁਆਇੰਟ ਆਫ View ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਖਿਆਲ ਰੱਖਣਾ ਚਾਹੀਦਾ ਕਿਸ ਨੂੰ ਸਪான்ਸਰ ਕਰਕੇ ਇੱਥੇ ਸੱਦਣ ਤੱਕ ਜੀ ਬਿਲਕੁਲ ਗਿੱਲ ਸਾਹਿਬ ਜਿਹੜੀ ਸਭ ਤੋਂ ਪਹਿਲਾਂ ਤਾਂ ਡਿਊ ਡਿਲੀਜੈਂਸ ਹੈ ਇਮੀਗ੍ਰੇਸ਼ਨ ਵੀ ਇਹ ਚੀਜ਼ ਦੇਖਦੀ ਹੈ ਇਮੀਗ੍ਰੇਸ਼ਨ ਨੇ ਕਾਨੂੰਨ ਬਣਾਏ ਨੇ ਆਪਣੀ ਸਿਸਟਮ ਦੀ ਇੰਟੈਗ੍ਰਿਟੀ ਮੇਨਟੇਨ ਕਰਨ ਦੇ ਲਈ ਇਸ ਲਈ ਉਹ ਕਾਨੂੰਨੀ ਬਣੇ ਹੋਏ ਵੀ ਉਹ ਜੱਜ ਕਰੇ ਤੁਹਾਨੂੰ ਕਿ ਜਿਹੜਾ ਤੁਸੀਂ ਵਿਆਹ ਕੀਤਾ ਉਹ ਵਧੀਆ ਕੀਤਾ ਡਿਸੀਜਨ ਹੈ ਜਾਂ ਉਹ ਮਾੜਾ ਡਿਸੀਜਨ ਹੈ ਉਹਨਾਂ ਦਾ ਰੋਲ ਨਹੀਂ ਹੈ ਉਹ ਤੁਹਾਡਾ ਆਪਣਾ ਇੱਕ ਡਿਸੀਜਨ ਹੈ ਜਦੋਂ ਤੁਸੀਂ ਡਿਸੀਜਨ ਲੈਣਾ ਤਾਂ ਪਲੀਜ਼ ਡਿਊ ਡਿਲੀਜੈਂਸ ਕਰੋ ਵੈਰੀਫਾਈ ਕਰੋ ਤਾਂ ਕਿ ਇਹ ਸਰਕਮਸਟੈਂਸ ਜਾਂ ਇਹ ਜੀ ਸਿਚੁਏਸ਼ਨ ਜਿਹੜੀ ਹੈ ਨਾ ਹੋਵੇ ਸੈਕੰਡ ਜਿਹੜੀ ਚੀਜ਼ ਹੈ ਜਦੋਂ ਤੁਹਾਨੂੰ ਇਹ ਚੀਜ਼ ਪਤਾ ਲੱਗਦੀ ਹੈ ਤਾਂ ਤੁਹਾਨੂੰ ਰਿਪੋਰਟ ਕਰਨੀ ਤੁਹਾਡਾ ਫਰਜ਼ ਬਣਦਾ ਔਰ ਇਹ ਚੀਜ਼ ਤੁਹਾਨੂੰ ਕਰਨੀ ਵੀ ਚਾਹੀਦੀ ਹੈ ਤਾਂ ਕਿ ਫਿਊਚਰ ਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਕੱਟ ਸਕਣ ਇਸ ਤੋਂ ਇਲਾਵਾ ਯੂ ਨੋ ਕੰਡੀਸ਼ਨਲ ਪਰਮਨੈਂਟ ਰੈਜ਼ੀਡੈਂਸੀ ਜਿਵੇਂ ਆਪਾਂ ਜ਼ਿਕਰ ਕੀਤਾ ਸੀ ਤਾਂ ਐਕਸਪਲੋਇਟੇਸ਼ਨ ਵੀ ਇੱਕ ਮੁੱਦਾ ਹੈ ਆਪਾਂ ਵਨ ਸਾਈਡਡ ਉਹ ਦੇਖ ਨਹੀਂ ਸਕਦੇ ਕਿ ਜਿਹੜੇ ਸਪான்ਸਰ ਨੇ ਸਿਰਫ ਉਹੀ ਵਿਕਟਮ ਹੁੰਦੇ ਨੇ ਕਈ ਵਾਰ ਜਿਹੜੇ ਸਪான்ਸਰਡ ਇੰਡੀਵਿਜੂਅਲ ਨੇ ਉਹ ਵੀ ਵਿਕਟਮਾਈਜ਼ ਹੁੰਦੇ ਨੇ ਉਹਨਾਂ ਲਈ ਵੀ ਸਰਕਾਰ ਨੇ ਅਧਿਕਾਰ ਰੱਖੇ ਹੋਏ ਨੇ ਉਹ ਆਪਣੇ ਅਧਿਕਾਰਾਂ ਦਾ ਜਿਹੜਾ ਹੈਗਾ ਇਸਤੇਮਾਲ ਕਰਨ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਆ ਜਿਹੜਾ ਆਪਣਾ ਸਿਲੈਕਸ਼ਨ ਆ ਜਦੋਂ ਤੁਸੀਂ ਇਹ ਡਿਸੀਜਨ ਬਣਾਉਨੇ ਹੋ ਉਹ ਤੋਂ ਪਹਿਲਾਂ ਡੀਲੀਜਿਟ ਕਰਨੀ ਸਭ ਤੋਂ ਇੰਪੋਰਟੈਂਟ ਹੋ ਜਾਂਦੀ ਉਹ ਤੋਂ ਬਾਅਦ ਇਹ ਚੀਜ਼ਾਂ ਕਾਨੂੰਨੀ ਦਾਇਰੇ ਦੇ ਵਿੱਚ ਆ ਜਾਂਦੀਆਂ ਨੇ ਐਂਡ ਹਰੇਕ ਆਪਣੀ ਸਿਚੁਏਸ਼ਨ ਜਿਹੜੀ ਆ ਯੂ نو ਹਰੇਕ ਨੂੰ ਫੇਅਰ ਪ੍ਰोसीडिंग ਥਰੂ ਗੁਜ਼ਰਨਾ ਪੈਂਦਾ ਔਰ ਆਪਣੀ ਗੱਲ ਜਿਹੜਾ ਰੱਖ ਸਕਦਾ ਸੋ ਸਾਨੂੰ ਐਡਵਾਈਸ ਦੇ ਲਈ ਕਾਲ ਵੀ ਕਰਿਆ ਜਾ ਸਕਦਾ ਗਿਰਸ ਸਾਹਿਬ ਕਿਉਂਕਿ ਇਹ ਜਿਹੇ ਕੇਸ ਜਿਹੜੇ ਨੇ ਉਹ ਯੂ ਕੇਸ ਬਾਈ ਕੇਸ ਬੇਸਿਸ ਦਸਨੇ ਬਹੁਤ ਸੌਖੇ ਹੁੰਦੇ ਆ ਐਂਡ ਜਿਹੜੇ ਖਾਸ ਕਰਕੇ ਜਿਨ੍ਹਾਂ ਨੇ ਪਹਿਲਾਂ ਡਿਵੋਰਸ ਲਿਆ ਹੋਇਆ ਉਹਨਾਂ ਲਈ ਤਾਂ ਹੋਰ ਵੀ ਜ਼ਰੂਰੀ ਹੁੰਦੀ ਹੈ ਜਦੋਂ ਸਪਾਂਸਰਸ਼ਿਪ ਕਰਦੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਬਿਫੋਰ ਈਵਨ ਦੇ ਐਂਟਰ ਇੰਟੂ ਅ ਨਿਊ ਰਿਲੇਸ਼ਨਸ਼ਿਪ ਕਿ ਉਹ ਨੂੰ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਨਾ ਕਿ ਉਹ ਵਿਆਹ ਕਰਕੇ ਅਪਲੀਕੇਸ਼ਨ ਲਾ ਕੇ ਫਿਰ ਉਹ ਦੇਖਣ ਵੀ ਸਾਡੇ ਨਾਲ ਕੀ ਹੋ ਰਿਹਾ ਸਾਡੇ ਇਮੀਗ੍ਰੇਸ਼ਨ ਨੂੰ ਹੀ ਚੈਲੰਜ ਕੀਤਾ ਜਾ ਰਿਹਾ ਕਿਉਂਕਿ ਕਾਨੂੰਨ ਡੇ ਬਾਏ ਡੇ ਜਿਹੜਾ ਸਰਕਾਰ ਨੇ ਕਾਫੀ ਸਖਤ ਕੀਤਾ ਤਾਂ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਜੇ ਕਰਨਾ ਹੈ ਤਾਂ www.cic.canada.com ਤੇ ਜਾ ਕੇ ਸਾਡੇ ਜਿਹੜਾ ਸਰੀ ਦਾ ਨੰਬਰ ਹੈ ਤੇ ਐਵਰਸਫੋਰਡ ਦਾ ਨੰਬਰ ਹੈ ਉਹ ਲੈ ਜਾ ਸਕਦੇ ਜੀ। ਧੰਵਾਦ ਜੀ ਬਹੁਤ ਵਧੀਆ ਗੱਲਬਾਤ ਸਰ ਤੁਸੀਂ ਕਰਦੇ ਹੋ ਸੀਡਬੀਸੀ ਤੋਂ ਅਮਨ ਖਹਿਰਾ ਮੇ ਨਾਲੇ ਥੈਂਕ ਯੂ ਭਾਈ ਜੀ ਥੈਂਕ ਯੂ ਭਾਈ ਜੀ ਵਪਾਰਕ ਸੰਦੇਸ਼ ਤੇ ਖਬਰਾਂ 12 ਵਜੇ 5 ਮਿੰਟ ਹੋਏ ਖਬਰਾਂ ਜਿਹੜੀਆਂ ਆ ਰਹੀਆਂ सरपंच साहब ਨੇ कहता ਤਾ ऑर्डर करते के कांड बनावणीओ बनावणी है तैयारी करती एग्जीक्यूटिव ऑर्डर पे ऑर्डर चल रहया तमचण पट्टया पे जिस दिन दा बैठा गद्दी ते कदे ता सार जेडे ऑटो मेकर ने ओना नु कहदा वे इंग्लैंड जे सारी अमेरिका दे विच बणना अमेरिका च विकना ईस्टोन पाइपलाइन डकोटा पाइपलाइन हुन मेक्सिको वॉल कांड दी गल ਰੰਪ ਨੇ ਹੁਣੇ ਸਾਈਨ ਕੀਤੇ ਨੇ ਐਗਜ਼ੈਕਟਿਵ ਆਰਡਰ ਕਿ ਯੂਐਸ ਮੈਕਸੀਕੋ ਬਾਰਡਰ ਵਾਲ ਜਿਹੜੀ ਬਣੇਗੀ ਜਿਸ ਤਰ੍ਹਾਂ ਦੀ ਤੇਜ਼ੀ ਹੈ ਇਹ ਤੇਜ਼ੀ ਦੇ ਵਿੱਚੋਂ ਕਿਉਂ ਲੱਗਦਾ ਹੈ ਕਿ ਅਮਰੀਕਨਾਂ ਦਾ ਦਿਲ ਇਹ ਰਾਸ਼ਟਰਪਤੀ ਜਿੱਤੂ ਕਿਉਂਕਿ ਜਦ ਆਪਣੇ ਦੇਸ਼ ਦੇ ਲਈ ਪਰ ਇਹਦੇ ਨਾਲ ਮੁਸ਼ਕਲ ਇਹ ਹੋ ਜਾਣੀ ਹੈ ਕਿ ਕਿਤੇ ਆਈਸੋਲੇਸ਼ਨ ਨਾ ਹੋ ਜਾਏ ਕੱਲੀ ਕੱਲੇ ਅਮਰੀਕਾ ਕਿਉਂ ਨਾ ਰਹਿ ਜਾਏ ਕਿ ਵੀ ਕੱਲਈ ਕੱਲਈ ਇਸ ਦੇ ਵਿੱਚ ਰਹਿ ਜਾਏ ਇਸ ਗਲਤੇ ਜੇ ਸ਼ੁਰੂ ਹੋਈ ਸੀ ਗੱਲ ਕਿ ਕੰਦ ਮਹਿੰਗੀ ਪਊ ਇਹ 7 ਤੋਂ 8 ਜਿਹੜਾ ਅਰਬ ਡਾਲਰਾਂ ਦੀ ਗੱਲ ਸੀ ਪਰ 15 ਤੋਂ 25 ਅਰਬ ਡਾਲਰ ਇਸ ਤੇ ਖਰਚ ਹੋ ਸਕਦਾ ਹੈ ਸੈਂਸ ਜਿਹੜੀ 1.5 ਕਿਲੋਮੀਟਰ ਦੀ ਉਹ 28 ਲੱਖ ਆਰਡਰ 28 ਲੱਖ ਤੋਂ 39 ਲੱਖ ਡਾਲਰ ਜਿਹੜੇ ਕੋਸਟ ਕਰਦੀ ਸੀ ਮਕਸੀਕੋ ਤੋਂ ਕਹਿੰਦਾ ਖਰਚਾ ਮੈਂ ਲੈਣਾ ਮੈਂ ਬਣਾਦਮਾ ਤੇ ਬਣਾਉਣ ਤੋਂ ਬਾਅਦ ਮਕਸੀਕੋ ਇਸ ਦਾ ਹਿੱਸਾ ਦੇਊਗਾ। ਤਾਂ ਇਹ ਗੱਲ ਜਿਹੜੀ ਹੈ ਉਹ ਪੱਕੀ ਕਰ ਦਿੱਤੀ ਹੈ। ਪਹਿਲਾਂ ਇਹੋ ਸੀ ਕਿ ਸ਼ਾਇਦ ਹੋਵੇ, ਸ਼ਾਇਦ ਨਾ ਹੋਵੇ। ਉਦੋਂ ਬਾਅਦ ਦੇ ਵਿੱਚ ਅੰਬੈਸੀ ਜਿਹੜੀ ਮੂਵ ਕਰਨ ਦੀ ਕਹਾਣੀ ਹੈ ਉਹ ਬਹੁਤ ਗਰਮ ਚੱਲ ਰਹੀ ਹੈ ਕਿਉਂਕਿ ਈਸਟ ਜਰੂਸਲਮ ਵੈਸਟ ਬੈਂਕ ਜਾਂ ਪਲੈਸਟਾਈਨ ਦੀ ਰਾਜਧਾਨੀ ਮੰਨਿਆ ਗਿਆ ਤੇ ਉੱਥੇ ਜਦ ਅੰਬੈਸੀਆਂ ਇਜ਼ਰਾਈਲ ਦੀਆਂ ਇਜ਼ਰਾਈਲ ਦੇ ਸਫਾਰਤ ਕਰਨੇ ਬਾਹਰਲੇ ਦੇਸ਼ਾਂ ਨੇ ਮੂਵ ਹੋਣਾ ਇਹ ਆ ਕਿ ਉਹ ਵੀ ਗੱਲ ਅਰਬ ਦੇ ਹੱਥੋਂ ਜਾਂਦੀ ਰਹੀ ਸਿਰਫ ਸਿਰਫ ਗਾਜ਼ਾ ਸਟ੍ਰਿਪ ਦਾ ਜਿਹੜੀ ਪਾਣੀ ਦੇ ਕੰਢੇ ਉਹ ਜਿਹੜੀ ਹਮਾਸ ਦੇ ਕੰਟਰੋਲ ਦੇ ਵਿੱਚ ਪਰ ਉਹਦੇ ਆਲੇ-ਦੁਆਲੇ ਬੈਰੀਅਰ ਬੈਰੀਕੇਡ ਸਾਰੇ ਇਜ਼ਰਾਈਲ ਦੇ ਨੇ ਕਿਹਨੇ ਅੰਦਰ ਜਾਣਾ ਕਿਹਨੇ ਬਾਹਰ ਜਾਣਾ ਪਾਣੀ ਵਾਲੇ ਪਾਸੇੋਂ ਟੱਟ ਕੋਈ ਨਹੀਂ ਉਹਨਾਂ ਕੋਲ ਉਹਨਾਂ ਦੇ ਹਾਲਾਤ ਵੀ ਇਹੋ ਜਿਹੇ ਨੇ ਬਾਕੀ ਸੈਟਲਮੈਂਟ 2500 ਹੋਰ ਕਰਾਂ ਦੀ ਗੱਲ ਮੈਂ ਕੱਲ ਦੱਸ ਕੇ ਹਟਿਆ ਤੁਹਾਨੂੰ ਸ਼ਿਕਾਗੋ ਦੇ ਵਿੱਚ 200 ਅਠਾਈ ਹੁਣ ਤੱਕ ਦੀਆਂ ਸ਼ੂਟਿੰਗਜ਼ ਹੋਈਆਂ ਇਸ ਸਾਲ ਦੇ ਵਿੱਚ ਆ 25 ਦਿਨਾਂ ਦੇ ਵਿੱਚ ਤੇ ਡੋਨਲਡ ਟਰੰਪ ਨੇ ਮੇਅਰ ਨੂੰ ਕਿਹਾ ਵੀ ਜੇ ਨਹੀਂ ਗੱਲ ਸੂਤ ਹੁੰਦੀ ਤਾਂ ਫੈਡਰਲ ਦੀ ਮਦਦ ਮੰਗ ਸਭ ਤੋਂ ਮਦਦ ਮੰਗ ਤੇ ਫਿਰ ਅਸੀਂ ਤੈਨੂੰ ਕਰਕੇ ਦਿਖਾਉਂਦੇ ਹਾਂ ਬਹੁਤ ਪੁਲਿਸਿੰਗ ਹੈ ਅਮਰੀਕਾ ਵਾਲੇ ਪਾਸੇ ਬਹੁਤ ਪੁਲਿਸ ਹੈ ਉਹ ਨਹੀਂ ਸਾਡੇ ਵਾਂਗੂ ਹੋਣ ਦਿੰਦੇ ਵੀ 'ਚ ਚੱਲ ਗਈ ਕਿਤੇ ਐਵਰਸਪੋਰਟ ਚੱਲ ਗਈ ਯਾਦ ਆ ਤੁਹਾਨੂੰ ਸੈਟਲ ਦੇ ਵਿੱਚ ਇੱਕ ਵਾਰ ਕਬੱਡੀ ਦਾ ਟੂਰਨਾਮੈਂਟ ਤੇ ਲੜਾਈ ਹੋਈ ਸੀ ਜਤੋਂ ਬਾਅਦ ਅੱਜ ਤੱਕ ਕਬੱਡੀ ਦਾ ਟੂਰਨਾਮੈਂਟ ਨਹੀਂ ਉਹਨਾਂ ਨੇ ਹੋਣ ਦਿੱਤਾ। ਖਖੜੀਆਂ ਕਰੇਲੇ ਕਰਤੇ ਬੰਦੇ ਵੱਡ ਤੇ ਉਹਨਾਂ ਨੂੰ ਕਹਤਾ ਕਿ ਇੱਧਰ ਨਹੀਂ ਜਾ ਸਕਦੇ ਉੱਧਰ ਨਹੀਂ ਜਾ ਸਕਦੇ ਤੁਹਾਡੇ ਫੋਨ ਟੈਪ ਹੋਣਗੇ ਬਾਰਡਰ ਬਣਾ ਤੇ ਉਹਨਾਂ ਦੇ ਨਾਂ ਤੇ। ਔਰ ਬਹੁਤ ਵੱਡੀ ਇੱਕ ਜਿਹੜੀ ਲੜਾਈ ਸੀ ਉਹਨਾਂ ਨੇ ਬੰਦ ਕਰਾਈ ਨਹੀਂ ਕਰਨ ਦਿੰਦੇ ਉਹ। ਇਸ ਅਗਲੇ ਹਿੱਸੇ 'ਚ ਮੈਂ ਗੱਲ ਕਰਦਾ ਵੀ ਜਿਹੜੀ ਇਹ ਹੁਣ ਤਾਜ਼ਾ ਘਟਨਾਕਰਮ ਚੱਲ ਰਹੇ ਨੇ ਲੋਅਰ ਮੇਨਲੈਂਡ ਦੇ ਵਿੱਚ ਇਹਦੇ ਪਿੱਛੇ ਕਾਰਨ ਕੀ ਨੇ ਤੇ ਇਹ ਕਿੱਧਰ ਨੂੰ ਕਹਾਣੀ ਜਾਏਗੀ ਇਹ ਹੋ ਡੇਂਜਰਸ ਹੋਏਗੀ ਨੈਸਾ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਹਦੇ ਵਿੱਚ ਪਲੂਟੋ ਦੀ ਜਿਹੜੀ ਹੈ ਜਿਹੜਾ ਕਿ ਜਿਸ ਦੇ ਆਲੇ ਦਾਲੇ ਹਾਰਾਈਜ਼ਨ 9 ਦਾ ਇੱਕ ਉਹ ਲੈਣੋ ਲੈਣ ਵਾਲਾ ਜੰਤਰ ਕਹਿ ਲਓ ਜਾਂ ਛੋਟਾ ਉਪਗ੍ਰਹ ਕਹਿ ਦੋ ਉਹਦੀਆਂ ਫੋਟੋਆਂ ਖਿੱਚਦਾ ਫਿਰਦਾ ਬਿਲਕੁਲ ਆਈਸ ਦੇ ਨਾਲ ਇਹ ਮੀਟਰ ਦੀ ਪਰਤ ਦੇ ਥੱਲੇ ਸਾਰੇ ਇਸ ਦੀ ਪਰਤ ਜਿਹੜੀ ਉਹ ਆਈਸ ਹੈ 8 ਅਰਬ ਮੀਲ ਦੂਰ ਆਪਣੀ ਧਰਤੀ ਤੋਂ ਇਹਦੇ ਨੇੜੇ ਪਹੁੰਚ ਕੇ ਹਰਾਇਜ਼ਨ ਨੇ ਫੋਟੋਆਂ ਭੇਜੀਆਂ ਤੇ ਉਸ ਵੀਡੀਓ ਜਨਾਸਾ ਨੇ ਦਿਖਾਈ ਹੈ ਜਿਹਦੇ ਵਿੱਚ ਅਸਲ ਪਰਤ ਪਲੂਟੋ ਦੀ ਦਿਖਦੀ ਏ ਇਹ ਹਾਲੇ ਗਿਣਤੀ ਦੇ ਵਿੱਚ ਨਹੀਂ ਇਹਦਾ ਪਤਾ ਨਹੀਂ ਦੁਵਾਰਫ ਇਹਨੂੰ ਪਲੈਨਟ ਕਹਿੰਦੇ ਏ ਹੋਰ ਇਸ ਦਾ ਲੱਭ ਰਹੇ ਨੇ ਨਾਸਾ ਨੇ ਧਰਤੀ ਦੀਆਂ ਫੋਟੋਆਂ ਵੀ ਭੇਜੀਆਂ ਉਹ ਕਹਿੰਦੇ ਤੁਹਾਡੀ ਜਗ੍ਹਾ ਤੋਂ ਵਧੀਆ ਜਗ੍ਹਾ ਕੋਈ ਨਹੀਂ ਹੈ ਤੇ ਇਸ ਦੇ ਅਲੱਗ-ਅਲੱਗ ਖਿੱਤੇ ਦੀਆਂ ਤੇ ਦੱਸ ਕੇ ਵੀ ਆ ਅਫਰੀਕਾ ਹੁਣ ਆਹਾ ਕਰੀਬੀਆਨਾ ਆਹਾ ਨਾਰਥ ਅਮਰੀਕਾ ਇਸ ਤਰ੍ਹਾਂ ਦੀਆਂ ਫੋਟੋਆਂ ਦੱਸੀਆਂ ਤੇ ਦੱਸਿਆ ਕਿ ਕੀ ਕੀ ਦਿਖਦਾ ਬਹੁਤ ਜ਼ਿਆਦਾ ਵਧੀਆ ਨਾਸਰ ਦੀ ਵੈਬਸਾਈਟ ਤੇ ਜਿੱਥੇ ਉਹ ਵੇਖ ਸਕਦੇ ਹੋ ਬਹੁਤ ਵਧੀਆ ਸਾਫ਼ ਜਿਹੜੀਆਂ ਫੋਟੋਆਂ ਨਾਦਰਲੈਂਡ ਦੇ ਵਿੱਚ ਐਮੈਂਡਾ ਟਾਡ ਨਾਂ ਦੀ ਲੜਕੀ ਨੂੰ ਉਸ ਨੂੰ ਮੌਤ ਤੱਕ ਉਸ ਦੀ ਸਾਈਟ ਤੱਕ ਨੂੰ ਆਨਲਾਈਨ ਵਿਕਲਾਉਂਦਾ ਰਿਹਾ ਧਮਕਾਉਂਦਾ ਰਿਹਾ ਉਸ ਬੰਦੇ ਤੇ ਜਿਹੜਾ ਮੁਕੱਦਮਾ ਸ਼ੁਰੂ ਹੋ ਚੁੱਕਿਆ ਨਦਰਲੈਂਡ ਦੇ ਵਿੱਚ ਹੋਰ ਵੀ ਹਾਲੈਂਡ ਜਿਸ ਨੂੰ ਆਪਾਂ ਕਹਿੰਦੇ ਆ ਮਿਸਟਰਡੈਮ ਦੇ ਵਿੱਚ ਮੁਕੱਦਮਾ ਸ਼ੁਰੂ ਹੋਇਆ ਉਸਨੇ ਹੋਰ ਵੀ ਲੋਕਲ ਵੀ ਉੱਥੇ ਤੱਕਾ ਕੀਤਾ ਲੜਕੀਆਂ ਲੜਕੀਆਂ ਦੇ ਨਾਲ ਪਤਾ ਹੀ ਨਹੀਂ ਕੀ ਕੁਛ ਕੀਤਾ ਕੰਪਿਊਟਰ ਜਿਹੜੇ ਤੇ ਬੈਣ ਵਾਲੇ ਤੇ ਪੁੱਠੇ ਕੰਮ ਕਰਨ ਵਾਲੀਆਂ ਜਿਹੜੀਆਂ ਇੱਕ ਡਿਜ਼ੀਜ਼ ਹੈਕ ਕਰਨਾ ਜਾਂ ਹੈਕ ਕਰਨਾ ਜਾਂ ਪੁੱਠੀਆਂ ਗੱਲਾਂ ਕਰਨੀਆਂ ਆਨਲਾਈਨ ਜਾ ਕੇ ਇਹ ਤਾਂ ਇਹ ਤਾਂ ਨਾਰਮਲ ਹੈ ਜੇ ਅੱਜ ਦੀ ਖਬਰ ਲੋਕ ਲੋਕਲ ਦੇਖੋ ਕੈਥਲਿਨ ਵੈਨ ਜਿਹੜੀ ਪ੍ਰੀਮੀਅਰ ਅਨਟਰੀਓ ਦੀ ਉਹਦੇ ਖਿਲਾਫ ਟਵੀਟ ਤੇ ਉਹਦੇ ਫੇਸਬੁੱਕ ਤੇ ਇੰਨੀ ਮਾੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਮਰਨ ਮਾਰ ਦੀਆਂ ਗੱਲਾਂ ਐਫ ਸ਼ਬਦ ਬੀ ਸ਼ਬਦ ਪਤਾ ਹੀ ਨਹੀਂ ਕੀ ਕੁਝ ਲਿਖਿਆ ਬਈ ਤੂੰ ਬਹੁਤ ਦਿਨ ਖੁਸ਼ੀ ਦਾ ਹੋ ਜਿਸ ਦਿਨ ਤੂੰ ਮਰ ਪਤਾ ਹੀ ਨਹੀਂ لوک اینے خفا کیوں نہ اس تو وہ اج سارا نہیں کی کچھ لکھیا بھئی تو بہت دن خوشی دا او جس دن تو مر جے گی پتہ ہی نہیں لوگ اینے خفا کیوں نہ اس تو وہ اج ساری ٹویٹس ਜਿਹੜੇ ਬਹੁਤ ਪਦੇ ਜਿਹੜੇ ਉਹਨੂੰ ਲੋਕ ਮੈਸੇਜ ਕਰ ਰਹੇ ਨੇ ਕੋਈ ਆਈਡੀ ਵੀ ਕੋ ਨਹੀਂ ਰਹਿ ਇੱਥੇ ਬੋਲਣ ਦੀ ਗੱਲ ਅੱਲਾ ਤੁਸੀਂ ਬੋਸ ਸਕਦੇ ਠਾਈ ਜਣੇ ਤੇ ਜਿਹੜੇ ਉਹਨੂੰ ਲੋਕ ਮੈਸੇਜ ਕਰ ਰਹੇ ਨੇ ਕੋਈ ਆਈਡੀ ਵੀ ਲਕੋ ਨਹੀਂ ਰਿਹਾ ਇੱਥੇ ਬੋਲਣ ਦੀ ਗੱਲ ਹੈ ਤੁਸੀਂ ਬੋਲ ਸਕਦੇ 28 ਜਣੇ ਮੌਗਾ ਦੀਸ਼ੂ ਸਮਾਲਿਆ ਆਈਡੀ ਵੀ ਲਕੋ ਨਹੀਂ ਰਿਹਾ ਇੱਥੇ ਬੋਲਣ ਦੀ ਗੱਲ ਹੈ ਤੁਸੀਂ ਬੋਲ ਸਕਦੇ 28 ਜਣੇ ਵੱਡਾ ਇਨਫਰਾਸਟ੍ਰਕਚਰ ਹੈ ਬਹੁਤ ਵੱਡੀ ਇਨਵੈਸਟਮੈਂਟ ਹੈ ਕਿਉਂਕਿ ਉਸ ਤਾਂ ਨੂੰ ਛੱਡਦੇ ਆ from the sponsor sir kanu chhadde hai program de sponsor kanu chhadde hai program de sponsor Punjab bank uthal 604598 australia wale ਸਫਰ ਜੀ ਬੋਤ ਹੈ ਕਿਸ ਸੋਚ ਸਰਪੰਚ ਸਾਨੂੰ ਬੋਤ ਬੋਤ ਹੈ। 600 599 533। ਫੋਕਸ ਕਿੰਨੀ ਲੱਗਿਆ। ਸੋ ਦੇ ਵਿੱਚ ਖਾਮੀਆਂ ਘੱਟ ਪੁਆਇੰਟ ਆਊਟ ਕਰੋ ਉਹਦੇ ਪੋਜ਼ਿਟਿਵ ਨੂੰ ਜਦੋਂ ਆਪਾਂ ਪੁਆਇੰਟ ਆਊਟ ਕਰਾਂਗੇ ਉਹਦਾ ਕੌਨਫੀਡੈਂਸ ਬਧੇਗਾ। ਉਹ ਤੁਹਾਡੇ ਨਾਲ ਹੋਰ ਕੰਫਰਟੇਬਲ ਮਹਿਸੂਸ ਕਰੇਗਾ ਤੇ ਉਹਨੂੰ ਨਿੱਕੇ ਨਿੱਕੇ ਗੱਲਾਂ ਤੇ ਝੂਠ ਨਹੀਂ ਬੋਲਣਾ ਪਊਗਾ। ਬਾਹਰ ਜਾਣ ਲਈ ਕੋਈ ਬਹਾਨੇ ਨਹੀਂ ਬਣਾਉਣੇ ਪੈਣਗੇ। ਜੇ ਉਹਨੇ ਕੁਝ ਦਾਰੂ ਵੀ ਪੀਣੀ ਹੈ ਤੇ ਆਪਣੇ ਬੱਚ ਨੂੰ ਕੋ ਠੀਕ ਹੈ ਸਾਡੇ ਨਾਲ ਬੈਠ ਕੇ ਪਾ ਇੱਕ ਲਾ ਜੇ ਪੁਛਾ ਤੇ ਬਾਹਰ ਜਾ ਉਹ ਆਪਣੇ ਬੱਚਿਆਂ ਨੂੰ ਬੈਠਾ ਹੁੰਦਾ ਨਾਲ ਦੱਸਦਾ ਆਹ ਗਨ ਹੈ ਏਦਾਂ ਹੁੰਦੀ ਆ ਏਦਾਂ ਹੁੰਦਾ ਉਹ ਉਹਨਾਂ ਦੇ ਹੱਥਾਂ ਦੇ ਵਿੱਚ ਉਹ ਕਢਾਉਣਿਆਂ ਦੀ ਮਤਲਬ ਸਾਰਾ ਕੁਝ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਦੱਸਦਾ ਤਾਂ ਕਿ ਕੱਲ ਨੂੰ ਉਹ ਵੱਡੇ ਹੋਣ ਜਦੋਂ ਬਾਹਰ ਜਾ ਕੇ ਉਹਨਾਂ ਨੂੰ ਕੋਈ ਗੰਨ ਇਦਾਂ ਦੇਖਿਆ ਉਹਨੂੰ ਨਹੀਂ ਨਾ ਹੋਵੇ ਕਿ ਵਾਓ ਕਿ ਕੰਨ ਮਿਲ ਗਈ ਸਮੋ ਪਹਿਲਾਂ ਕੀ ਕਰੀ ਮਤਲਬ ਐਜੂਕੇਸ਼ਨ ਇੱਕ ਕਿਸਮ ਦੀ ਜਿਹੜੀ ਉਹ ਨਾਲੋਂ ਨਾਲ ਉਹਨਾਂ ਨੂੰ ਮਿਲ ਚੀਜ਼ਾਂ ਸਹੀ ਜਿਹੜੀਆਂ ਮੈਂ ਕਹਿਣੀ ਪਲੀਜ਼ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰੋ ਸਭ ਤੋਂ ਵੱਡੀ ਵੈਲਥ ਇਹੇ ਹੈਗੀ ਆ ਬਾਕੀ ਤਾਂ ਕੰਮ ਤਾਂ ਚੱਲੀ ਜਾਣੇ ਜੀ ਕੰਮ ਤਾਂ ਨਾ ਪੇਰ ਸੋਇਤਾ ਵੀ ਬੱਚਿਆਂ ਦਾ ਪਾਲਨ ਪੋਸ਼ਣ ਹੋ ਜਾਣਾ ਹੋਣਗੇ ਤਾਂ ਵੀ ਹੋ ਜਾਣਾ ਧੰਨਵਾਦ ਜੀ ਥੈਂਕ ਯੂ ਸੁਖਪਾਲ ਸਿੰਘ ਨੰਬਰ 5 ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਜੀ ਵੀਰ ਜੀ ਗੱਲ ਹੈ ਕਿ ਇਦਾਂ ਵੀ ਜਿਹੜਾ ਨਾ ਜਿਹੜੀਆਂ ਗੈਂਡਾ ਆ ਇਦਾਂ ਲੜਾਈ ਕਿਉਂ ਹੁੰਦੀ ਹੈਲੋ ਜੀ ਇੱਕ ਮਿੰਟ ਹਾਂ ਉਹ ਕੀ ਹੁੰਦਾ ਜੀ ਉਹ ਤਾਂ ਚਲੋ ਤੁਸੀਂ ਆਪ ਵਿਚ ਲੜਤਾ ਗਏ ਹੋ ਮਾਰਤੀ ਗੱਲ ਮੁੱਕ ਗਈ ਵੱਡੀਆਂ ਗੈਂਗਾ ਆ ਜਾਂ ਵਾਈਕਰਾਂ ਚ ਪੈ ਜਾਂਦੇ ਆ ਜਾਂ ਬੇਤਨਾਮੀ ਜਾਂ ਹੋਰ ਵੀ ਗੈਂਗਾ ਹੈਗੀਆਂ ਉਹਦੇ ਵਿੱਚ ਜਦੋਂ ਲੜਾਈ ਹੁੰਦੀ ਆ ਉਹ ਪਿੱਛਾ ਨਹੀਂ ਛੱਡਦੇ ਤੇ ਇਹ ਜਿਹੜੀ ਹੈਗੀਆਂ ਇਹ 95 ਦੇ ਜਿੱਦਾਂ ਤੁਹਾਡੇ ਕਹਿਣ ਅਨੁਸਾਰ ਸ਼ੁਰੂ ਹੋਈਆਂ ਮੈਂ ਬਿੰਦੀ ਹੋਣਾ ਨੂੰ ਦਸਾਂਝ ਹੋਣਾ ਨੂੰ ਸਾਰਿਆਂ ਨੂੰ ਜਾਣਦਾ ਜੀ ਇਹ ਸਾਰੇ ਮੁੰਡੇ ਜਿਹੜੇ ਸੀਗੇ ਇਹਨਾਂ ਮੁਖਾਵ ਕਾਰਨ ਚ ਕਈ ਆ ਦੀ ਆਪਣੇ ਗੁਰਦੁਆਰਿਆਂ ਦਾ ਗੁਰਦੁਆਰੇ ਵਾਲਿਆਂ ਨੇ ਵੀ ਹੱਥ ਹੁੰਦਾ ਕਿਉਂਕਿ ਉਹਨਾਂ ਦਿਨਾਂ 'ਚ ਲੜਾਈ ਝਗੜੇ ਹੁੰਦੇ ਰਹੇ ਕਿ ਰੁਕੇ ਨੇ ਸਪੋਰਟ ਕਿਸੇ ਦੀ ਲਈ ਕਿ ਕਿਸੇ ਦੀ ਲਈ ਰਹੀ ਤੇ ਉਹਦੇ ਵਿੱਚ ਮੈਂ ਤਾਂ ਇਹ ਕਹਿਣਾ ਵੀ ਜਿਹੜੇ ਜਿੱਥੇ ਲੜਾਈ ਝਗੜੇ ਗੁਰਦੁਆਰੇ ਜਨਾ ਉਹਨਾਂ ਦੀ ਪਤਨੀ ਵਾਸਤੇ ਦੀ ਤੇ ਉਹਨਾਂ ਰੋਟੀ ਕਿੱਰੇ ਹੁੰਦੀ ਇਹਨਾਂ ਨੂੰ ਕਿੱਦਾਂ ਮਿਲ ਚੱਕਦੇ ਹੈਗੇ ਆ ਸਕੂਲਾਂ 'ਚੋਂ ਕਲਪਾਂ 'ਚੋਂ ਜਿਮਾਂ 'ਚੋਂ ਹਨ ਤੇ ਬਾਕੀ ਜਿਹੜੇ ਦੂਜੇ ਵੀ ਕਰਦੇ ਹੈਗੇ ਆ ਕਿਉਂਕਿ ਦੂਜੇ ਜਦੋਂ ਹਾਈ ਲੈਵਲ ਤੇ ਕਰਦੇ ਸਾਡੇ ਬੰਦਿਆਂ ਨੂੰ ਜਦੋਂ ਥੋੜੇ ਜਿਹੇ ਪੈਸੇ ਆ ਜਾਂਦੇ ਆ ਉਹ ਆਪ ਜੀ ਲੜ ਪੈਂਦੇ ਆ ਸਿਰਫ ਜਿਆਦਾ ਚੀਨੇ ਆ ਤਾਂ ਹੋਰ ਆ ਹੋਰ ਕਹਿਗਾ ਵੀ ਹੈਗੀਆਂ ਉਹ ਕਰਦੇ ਨੂੰ ਐਜ ਬਿਜ਼ਨਸ ਬਹੁਤ ਵੱਡਾ ਮਲਟੀ ਮਿਲੀਅਨ ਬਿਜ਼ਨਸ ਹੈ ਜੀ ਇਹ ਹੈ ਤੇ ਇਹ ਜਿਹੜੇ ਆਪਣੇ ਆ ਜਦੋਂ ਮਾੜ ਆ ਜਾਂਦਾ ਕੋਈ ਥੋੜਾ ਜਿਹਾ ਇੱਕ ਤੋਦਾ ਜਾਂਦਾ ਤੇ ਥੋੜੇ ਜਿਹੇ ਪੈਸੇ ਆ ਜਾਂਦੇ ਆ ਇਹ ਵੀਰ ਸਭ ਬੜੀ ਕਰਦੇ ਆ ਤੁਹਾ ਮੇਰਾ ਮੈਂ ਐਕਸਪੀਰੀਅੰਸ ਮੇਰਾ ਮੈਂ ਇਹਨਾਂ ਚੀਜ਼ਾਂ 'ਚ ਲੰਘ ਗਿਆ ਦੇਖਿਆ ਸਾਰਾ ਕੁਝ ਬਹੁਤ ਕੁਝ ਦੇਖਿਆ ਮੈਂ ਤੇ ਨਿਕਲਿਆ ਨਿਕਲਿਆ ਵੀ ਇਹ ਨਿਕਲਣਾ ਪੋਸਿਬਲ ਕਿਵੇਂ ਤੁਹਾਨੂੰ ਰੋਕਿਆ ਨਹੀਂ ਗਿਆ ਤੁਸੀਂ ਨਿਕਲਣ ਦੀ ਕੋਸ਼ਿਸ਼ ਕੀਤੀ ਉਹ ਮੇਰੇ ਤੇ ਇੱਕ ਇਦਾਂ ਦਾ ਇੱਕ ਚੱਕਰ ਚੱਲ ਗਿਆ ਬਹੁਤ ਹਾਈ ਲੈਵਲ ਦਾ ਕੋਈ ਤੇ ਮੈਂ ਉਹਨਾਂ ਨੂੰ ਦੱਸਤਾ ਵੀ ਆਪਣਾ ਕੰਮ ਖਰਾਬ ਹੋ ਜਾਣਾ ਤੁਹਾਡਾ ਵੀ ਤੇ ਸਾਰਾ ਕੁਝ ਫੜਿਆ ਹੋ ਜਾਣਾ ਇੱਕ ਉਹਨਾਂ ਨੂੰ ਵਾਕਈ ਪਤਾ ਲੱਗ ਗਿਆ ਇਹ ਪ੍ਰੋਪਰ ਪ੍ਰੋਜੈਕਟ ਵੀ ਲੱਗਿਆ ਹੈਗਾ ਸਾਰਾ ਕੁਝ ਤੇ ਕੋਈ ਮਰਡਰ ਹੋ ਗਿਆ ਸੀ ਤੇ ਬੈਨਕੂਵਰ ਤੁਹਾਡੇ ਹੂੰ ਉਹ ਫਿਰ ਜਦੋਂ ਮੇਰੇ ਕੋਲ ਪੈਂਦਾ ਹੈਗਾ ਤੇ ਉਹ ਫਿਰ ਮੈਨੂੰ ਦੱਸਦਾ ਹੋਵੇਗਾ ਇੱਥੇ ਕਰਕੇ ਹੈਗਾ ਕਿ ਇਹ ਨਾ ਉਹ ਤੁਹਾਡਾ ਕੰਮ ਸਾਰੇ ਕਰਾਉ ਹੋ ਜਵੇ ਠੀਕ ਨਹੀਂ ਤੇ ਉਹ ਫਿਰ ਉਹਨਾਂ ਨੂੰ ਮੇਰੀ ਕਾ ਵੀ ਹੈਲਪੀ ਵੀ ਜੀ ਤੁਹਾਡੀ ਉਹ ਜੀ ਅੱਛਾ ਤੁਸੀਂ ਮੈਨੂੰ ਇਹੋ ਦੱਸਿਓ ਇਹ ਵੀ ਗੱਲ ਇੱਕ ਬਹੁਤ ਵੱਡੀ ਆ ਜੇਲ੍ਹ 'ਚ ਬੈਠਿਆਂ ਨੂੰ ਸਹੂਲਤਾਂ ਜੇਲ੍ਹ ਤੋਂ ਬਾਹਰ ਨਿਕਲਦਿਆਂ ਨੂੰ ਵਕੀਲ ਸਿਰੇ ਦੇ ਇਹ ਚੀਜ਼ਾਂ ਹੈ ਅੱਛਾ ਹੋਵੇ ਹੁਣ ਤੁਸੀਂ ਇਸ ਚੀਜ਼ ਦੇ ਵਿੱਚੋਂ ਲੰਘੇ ਆ ਤੇ ਮੈਂ ਤੁਹਾਨੂੰ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹਨਾ ਆਊਟ ਆਫ ਏਰੀਆ ਜੇ ਬੱਚੇ ਨੂੰ ਆਪਾਂ ਲੈ ਜਾਂਦੇ ਆ ਮੰਨ ਲਓ ਸਰੀਚ ਐਵਸਪੋਰਟ 'ਚ ਹੁੰਦਾ ਵੀ ਕਿਵੇਂ ਨਾ ਕਿਵੇਂ ਆਪਾਂ ਬੱਚਾ ਮਨਾ ਕੇ ਉਹਨੂੰ ਟੋਰਾਂਟੋ ਲੈ ਜੇ ਜਾਂ ਪੰਜਾਬ ਲੈ ਗਏ ਸਾਲਖੰਡ ਪਰਾਂ ਲਿ ਜਾ ਕੇ ਕੁਝ ਬਦਲ ਹੋ ਸਕਦਾ ਬਦਲ ਹੋ ਸਕਦਾ ਜੇ ਉਹਦੀ ਸੋਸਾਇਟੀ ਬਦਲ ਹੋਊਗੀ ਫੇਰ ਹੀ ਉਹਨਾਂ ਉਹਨਾਂ ਜਾਊਗਾ ਉੱਥੇ ਜਾਊ ਸਾਰਾ ਕੁਝ ਫੇਰ ਮਰਜ਼ੀ ਲੈ ਜਾ ਦੁਨੀਆ 'ਚ ਕਿਉਂਕਿ ਇਹਨਾਂ ਹੱਥ ਬਹੁਤ ਲੰਮੇ ਜੀ ਬਹੁਤ ਦੂਰ ਦੂਰ ਤੱਕ ਬਹੁਤ ਕੁਝ ਦੇਖਿਆ ਹੋਇਆ ਜਿੱਦਾਂ ਲੱਗੇ ਪੈਸੇ ਤਾਂ ਕੋਈ ਚੀਜ਼ ਹੀ ਨਹੀਂ ਹੈਗੀ ਐਦਾਂ ਪੈ ਜਾਂਦੇ ਜਿੱਦਾਂ ਵੀ ਜਿੱਦਾਂ ਕਹਿੰਦੇ ਪੇਪਰ ਪੈ ਜਾਂਦੇ ਬਹੁਤ ਹਾਈ ਲੈਵਲ ਮੈਂ ਤਾਂ ਕਿਸੇ ਹੋਰ ਗੱਲ ਕਰਕੇ ਗਿਆ ਹੈਗਾ ਜੀ ਇਹਨਾਂ ਨਾਲ ਆਪਣੇ ਪਰਸਨਲ ਹੈਗਾ ਮੈਂ ਤਾਂ ਕੋਈ ਹੋਰ ਕੋਈ ਕਿਸੇ ਕੌਮੀ ਕੌਮੀ ਕੰਮ ਕਰਕੇ ਗਿਆ ਸੀ ਵੀ ਚਲੋ ਇਹਨਾਂ ਤੋਂ ਕੋਈ ਕੰਮ ਕੋਈ ਇਧਰ ਉਧਰ ਕਰਾਂਗੇ ਕਰਾਵਾਂਗੇ ਠੀਕ ਹੈ ਠੀਕ ਹੈ ਤੇ ਮੇਰਾ ਮੇਰਾ ਮਿਸ਼ਨ ਕੋਈ ਹੋਰ ਸਿਗਾ ਜਾਣ ਦਾ ਪੈਸਾ ਕਮਾਉਣ ਦਾ ਨਹੀਂ ਸੀਗਾ ਪੈਸਾ ਤੁਸੀਂ ਮਿਸ਼ਨ ਫਿਰ ਆਪਣੇ ਚ ਕਾਬਜਾਬ ਨਹੀਂ ਹੋ ਸਕੇ ਕਿਉਂਕਿ ਇਹ ਬੰਦੇ ਫਿਰ ਸਿਰਫ ਕੰਮ ਤਾਂ ਇਹ ਆਪਣੇ ਲਈ ਉਹ ਕਰਦੇ ਆਏ ਉਹ ਨਹੀਂ ਕਰਦੇ ਵੀ ਤੁਹਾਡੇ ਕਿਸੇ ਮਿਸ਼ਨ ਨਹੀਂ ਕਰਦਾ ਨਹੀਂ ਕਰ ਸਕਦੇ ਪਰ ਉਹ ਕੰਮ ਪਹਿਲਾਂ ਹੀ ਖਰਾਬ ਹੋ ਗਿਆ ਸੀਗਾ ਇੱਥੇ ਪਹਿਲਾਂ ਹੀ ਚੱਲ ਗਿਆ ਸੀਗਾ ਤੇ ਉਹ ਮੇਰੇ ਤੇ ਫਿਰ ਉਹ ਗਏ ਤਾਂ ਉਹ ਉਹ ਤਾਂ ਉਹਨਾਂ ਲੋਕ ਕੋਈ ਕੰਮ ਕਾਟ ਨਹੀਂ ਸੀ ਜੀ ਕਿਸੇ ਦੀ ਵੀ ਠੀਕ ਹੈ ਨਾ ਤੇ ਫਿਰ ਮੈਂ ਸੋਚਿਆ ਵੀ ਮੈਂ ਤਾਂ ਹੁਣ ਮੇਰੇ ਪਿੱਛੇ ਲੱਗਾ ਰਹਿੰਦਾ ਸੀ ਬਹੁਤ 24 ਘੰਟੇ 24 ਆਵਰ ਤੇ ਫਿਰ ਮੈਂ ਕਿਹਾ ਵੀ ਮੇਰੀ ਕਰਕੇ ਇਹਨਾਂ ਦਾ ਕੰਮ ਨਾ ਕਰਾ ਹੋ ਜਾਏ ਇਹ ਬੰਦੇ ਨੂੰ ਨਹੀਂ ਛੱਡਦੇ ਫਿਰ ਜਿਹੜਾ ਬੰਦਾ ਨਾ ਇਹਨਾਂ ਨਾਲ ਧੋਖਾ ਕਰਦਾ ਮਲਗਿਆ ਉਹਦੇ ਪਿੱਛੇ ਲੈਣ ਦੇ ਉਹਨੂੰ ਨਹੀਂ ਬਖਸ਼ਾਂਗੇ ਅੱਛਾ ਸਖਪਾਲ ਇੱਥੇ ਇਹ ਆ ਵੀ ਜਿੰਨੇ ਮੁੰਡੇ ਆਪਾਂ ਬਿੰਦੀ ਜੋਲ ਹੋਣੀ 110 20 ਮਰਦੇ ਦੇਖੇ ਇਹਨਾਂ ਦੇ ਵਿੱਚ ਕੋਈ ਵੀ ਚਾਰਜ ਨਹੀਂ ਹੋਇਆ ਬੰਦਾ ਕਿਉਂ ਨਹੀਂ ਫੜਿਆ ਜਾਂਦਾ ਇਹ ਕੀ ਕਾਰਨ ਬੰਦਾ ਬੰਦਾ ਕਿੱਦਾਂ ਦੇਖੋ ਜੀ ਇਹ ਕੰਮ ਜਿਹੜਾ ਹੈ ਖਰਕੂਆਂ ਵਾਲਾ ਕੰਮ ਹੈ ਇਹ ਜਾਂਦੇ ਸਾਰੇ ਜਿੰਨੇ ਵੀ ਹੁੰਦੇ ਆ ਠੀਕ ਹੈ ਨਹੀਂ ਬਹੁਤ ਮੂਤ ਇਹਨਾਂ ਦੇ ਬਸ ਇਹਨਾਂ ਤੇ ਕੱਖ ਨਹੀਂ ਹੁੰਦੀ ਜਦਾਂ ਜਿਹੜਾ ਇੱਕ ਵਾਰ ਇਸ ਪਾਸੇ ਤੁਰ ਪਿਆ ਉਹਨੂੰ ਪਤਾ ਵੀ ਪਹਿਲਾਂ ਮੌਤ ਹੀ ਆ ਠੀਕ ਹੈ ਮੇਰੇ ਬੰਦੇ ਆਪਣਾ ਰਾਂਝਸ ਕੱਢਣ ਲਈ ਜਾਂਦੇ ਆ ਕੋਈ ਕੁੱਛ ਕੰਮ ਲਈ ਜਾਂਦੇ ਆ ਕੋਈ ਕੁੱਛ ਕਿਸੇ ਨੂੰ ਮਜਬੂਰੀ ਹੁੰਦੀ ਆ ਠੀਕ ਨਹੀਂ ਹੈਗਾ ਬਿਜ਼ਨਸ ਬਹੁਤ ਹਾਈ ਲੈਵਲ ਬਿਜ਼ਨਸ ਆ ਜੀ ਤੇ ਇਹ ਬੰਦੇ ਨੂੰ ਪੂਰਾ ਐਨ ਰੱਖਦੇ ਆ ਸਾਹਮ ਕੇ ਕੀ ਰੇ ਨੂੰ ਪਰ ਜਦੋਂ ਬੰਦਾ ਇਹਨਾਂ ਧੋਖਾ ਕਰਦਾ ਇਹ ਬੰਦੇ ਨੂੰ ਨਹੀਂ ਛੱਡਦੇ ਚਾਹੇ ਜੋ ਮਰਜੀ ਹੋ ਜਾ ਕਿੱਥੇ ਮਰਜੀ ਜਾਵੇ ਹਾਂ ਜੇ ਕੰਟਰੀ ਦੇ ਛੱਡ ਕੇ ਕਈ ਬੰਦੇ ਬਾਜੀ ਵੀ ਜਾਂਦੇ ਆ ਜੇ ਉਹ ਸੋਸਾਇਟੀ ਬਦਲ ਲੈਣ ਆਪ ਵੀ ਢੰਗ ਬਦਲ ਲੈਣ ਪੀਸ ਬਸ ਟਾਕ ਬਦਲ ਨੂੰ ਬੰਦੇ ਹੈਗੇ ਇੱਥੇ ਕੋਈ ਰਹਿੰਦੇ ਆ ਉਹ ਆਪਣੇ ਉਸ ਏਰੀਆ 'ਚ ਨਰੈਣ ਜਿੱਥੇ ਆਪਣਾ ਬੰਦੇ ਰਹਿੰਦੇ ਆ ਹੋਰ ਕਿਤੇ ਰਹਿਣ ਮਤਲਬ ਚੁੱਪ ਕਵਾਈਟ ਸੋ ਕਰਨ ਫਿਰ ਬੰਦਾ ਵੱਸ ਸਕਦਾ ਤੇ ਜੇਕਰ ਮੈਂ ਉਹੀ ਕੁਝ ਸਾਰਾ ਕੁਝ ਕਰਨਾ ਫੇ ਕੋਈ ਨਹੀਂ ਵਿਚਾਰ ਸਕਦਾ ਫਿਰ ਰੱਬ ਹੀ ਵਿਚਾਰ ਆ ਕਰੀ ਚੰਪਾਲ ਤੁਸੀਂ ਆਪਣੀ ਜ਼ਿੰਦਗੀ ਦੱਸੀ ਸੁਖ ਲਾਈਨ ਨੰਬਰ 2 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੋਹ ਸੋਣਾ ਟਾਪਿਕ ਲਈ ਬੜਾ ਚਿੰਤਾ ਦਾ ਵਿਸ਼ਾ ਹੋਇਆ ਪਿਆ ਇਹ ਜਿਵੇਂ ਜਿਹੜਾ ਬੱਚੇ ਵਾਲੇ ਛੋਟੇ ਛੋਟੇ ਜਾਂ ਸਾਲ ਦਾ ਗੁੰਡਾ ਤੇ ਬੜਾ ਕਈ ਨਹੀਂ ਸੋਚੀਦਾ ਵੀ ਕੀ ਹੱਲ ਨਿਕਲ ਸਕਦਾ ਕੌਣ ਮੂਹਰੇ ਲੱਗੇ ਤੇ ਕਿੱਦਾਂ ਇਹਨੂੰ ਸੁਲਝਾਇਆ ਹੋ ਸਕਦਾ ਮੇਰੇ ਜਿੱਥੇ ਮੇਰਾ ਬ੍ਰਦਰ ਵੀ ਸਾਰਾ ਧਾਰਮਿਕ ਕੋ ਮਕਮਲ ਇਸ ਆਪਣੇ ਲਾਤੇ ਤੇ ਕਾਨੂੰਨ ਤੇ ਆ ਜਾਂਦਾ ਕਿ ਜਦੋਂ ਦੇ ਇਹਨਾਂ ਦੇ ਲਾ ਕਾਨੂੰਨ ਇਹ ਬਣਾਏ ਹੋਏ ਆ ਵੀ ਮੇਰੇ ਹਿਸਾਬੀ ਇਹ ਜ਼ਹੀਰ ਬੈਕ ਕਦੋਂ ਦੇ ਬਣੇ ਹੋਏ ਆ ਜਦੋਂ ਕਿ ਘਰਾਂ ਦੀਆਂ ਡੋਰਾਂ ਤੇ ਗੱਡੀਆਂ ਦੀਆਂ ਡੋਰਾਂ ਖੁੱਲੀਆਂ ਰਹਿੰਦੀਆਂ ਸੀ ਜੀ ਐਕਚੁਅਲੀ ਗਵਰਨਮੈਂਟ ਨੂੰ ਵੀ ਹੁਣ ਕੋਈ ਸਖਤ ਥੋੜਾ ਜਿਹਾ ਕਦਮ ਚੁੱਕਣਾ ਚਾਹੀਦਾ ਵੀ ਉਹਨਾਂ ਨੂੰ ਥੋੜੇ ਜਿਹ ਕਾਨੂੰਨ ਹੁਣ ਫੇਰ ਬਦਲਾਅ ਕਰਕੇ ਉਹਨਾਂ ਨੂੰ ਅੱਜਕੱਲ ਦੇ ਅਕੋਰਡਿੰਗ ਦੇ ਥੋੜੇ ਜਿਹ ਕਾਨੂੰਨ ਬਣਾਉਣੇ ਚਾਹੀਦੇ ਆ ਵੀ ਜਿਹਦੇ ਨਾਲ ਬੱਚਿਆਂ ਨੂੰ ਵੀ ਡਰ ਹੋਵੇ ਕੋਈ ਜਿਹੜੇ ਕੋਲ ਕੋਈ ਗਨ ਫੜੀ ਜਾਂਦੀ ਹੈ ਕੋਈ ਇੱਥੇ ਕੋਈ ਬੱਚਿਆਂ ਨੂੰ ਕੋਈ ਡਾਰੀ ਹੈ ਨਹੀਂ ਕਿਸੇ ਗੱਲ ਦਾ ਉਹਨਾਂ ਨੂੰ ਲਾ ਪਤਾ ਸੌਫਟ ਆ ਸਰਦਾਰੀ ਆ ਬਾਕੀ ਕੁਛ ਆਪਣੇ ਕਮਿਊਨਿਟੀ ਦਾ ਵੀ ਥੋੜਾ ਜਿਹਾ ਹੈਗਾ ਵਾ ਵੀ ਆਪਣੇ ਖੂਨ ਚ ਹੀ ਥੋੜਾ ਜਿਹਾ ਬਦਲੇ ਦੀ ਭਾਵਨਾ ਰਹਿੰਦੀ ਆ ਵਿੜਜਨ ਵਿੱਚ ਹੋ ਜੇ ਰਾਈਟ ਵਿਚਾਰੇ ਕੁਛ ਮਜਬੂਰ ਵੀ ਆ ਤੇ ਆਪਾਂ ਸਾਰਾ ਕਸ਼ੂਰੀ ਪੇਰੈਂਟਸ ਦਾ ਕੱਢੀ ਜਾਂਦੇ ਕਈ ਵੀ ਕਿਸੇ ਦੀ ਮਜਬੂਰੀ ਏਦਾਂ ਦੀ ਹੈ ਵਿਚਾਰੇ ਉਹਨਾਂ ਨੇ ਕੰਮ ਕਰਨਾ ਹੀ ਕਰਨਾ ਉਹਨਾਂ ਕਦੀਹਾੜੀ ਦਾ ਪਤਾ ਕਰਨਾ ਹੀ ਕਰਨਾ ਵਾ ਆਪਣੇ ਤਾਂ ਦੀ ਗੱਲ ਬੱਚਿਆਂ ਦੀ এডੂਕੇਸ਼ਨ ਦੀ ਤੇ ਮੇਰੇ ਹਿਸਾਬ ਨਾਲ ਤਾਂ ਮੋਸਟ ਪਾਵਰਫੁਲ ਜਿਹੜਾ ਇਹਦੇ ਵਿੱਚ ਹੈਗਾ ਜੀ ਕਾਨੂੰਨ ਦਾ ਇਰਾਦ ਰੋਮਦਾਰ ਜ਼ਿਆਦਾ ਵਾ ਏਦਾਂ ਕਿ ਕਈ ਵਾਰੀ ਅਮਰੀਕਾ ਵਾਲੇ ਵੀ ਕਹਿੰਦੇ ਆ ਵੀ ਅਸੀਂ ਤੁਹਾਡੇ ਕੈਂਡਾਲ ਕਾਨੂੰਨ ਇੰਨੇ ਸੌਫਟ ਆ ਸੀ ਬੰਦਾ ਪੜ ਕੇ ਲਈਦਾ ਇਹ ਤੁਹਾਡੇ ਇੱਧਰ ਕੋਈ ਉਹਨਾਂ ਨੂੰ ਹੈ ਨਹੀਂ ਬੈਨਿਸ਼ਮੈਂਟ ਵੀ ਪੁਲਿਸ ਵਾਲੇ ਵੀ ਕਹਿ ਦਿੰਦੇ ਆ ਕਿ ਕਾਨੂੰਨ ਇੰਨੇ ਸੌਫਟ ਆ ਵੀ ਇਸ ਕਰਕੇ ਸਾਡੇ ਥੋੜਾ ਜਿਆਦਾ ਚੱਲਦਾ ਰਹਿੰਦਾ ਆਪਣੇ ਠੀਕ ਆ ਬਾਈ ਜੀ ਥੈਂਕ ਯੂ ਹੋਰ ਸੰਦੇਸ਼ 1:00 ਕੇ 11 ਮਿੰਟ ਹੋਇਆ ਜੀ ਸੋ ਅਖੀਰ ਦੇ ਵਿੱਚ ਪਲੀਜ਼ ਹੋਰ ਕਾਲ ਨਾ ਕਰਿਓ ਆਪਣੇ ਕੋਲ ਸਮਾਂ ਘਟ ਹੈ ਬੇਨਤੀ ਇਹੀ ਹੈ ਮਾਪਿਆਂ ਨੂੰ ਇਹ ਮਾੜਾ ਸਮਾਂ ਕਿਸੇ ਤੇ ਵੀ ਆ ਸਕਦਾ ਹੈ ਕਿਸੇ ਦੀਆਂ ਗੱਲਾਂ ਕਰਨੀਆਂ ਸੁਭਾਵਿਕ ਨਹੀਂ ਵਕਤ ਦਾ ਪਤਾ ਨਹੀਂ ਹਰ ਰੋਜ਼ ਇਹ ਸਾਡਾ ਆਟਾ ਬਾਹਰ ਪਿਆ ਇਹਨੂੰ ਠੂੰਗਾ ਵੱਜ ਸਕਦੀਆਂ ਅੰਦਰ ਰੱਖਦੇ ਆਂ ਤਾਂ ਅੰਦਰੋਂ ਚੂਹੇ ਲੈ ਕੇ ਜਾ ਸਕਦੇ ਆ ਕਿਸੇ ਨਾਲ ਵੀ ਹੋ ਸਕਦਾ ਇਹ ਅਥਰੀ ਜਵਾਨੀ ਹੈ ਜਿਹੜੀ 30 ਤੋਂ 25 ਤੋਂ ਥੱਲੇ ਤੁਰ ਫਿਰਦੀ ਪਤਾ ਨਹੀਂ ਕਿੱਧਰ ਜਾ ਸਕਦੀ ਦਾਤੇ ਦੀ ਮਿਹਰ ਰਹੇ ਤੇ ਘਰ ਠੁਗ ਬਸਦੇ ਰਹਿਣ ਇਹੋ ਜਿਹਾ ਦੁੱਖ ਕਿਸੇ ਵੀ ਮਾਪੇ ਤੇ ਮੁੜ ਕੇ ਨਾ ਆਵੇ ਇਹ ਹੀ ਅਰਦਾਸ ਹੈ ਇਹ ਸਾਡੇ ਲਖਤੇ ਜ਼ਿਗਰ ਜਿਹੜੇ ਇਹ ਚੰਗਿਆਂ ਕੰਮਾਂ 'ਚ ਬੈ ਕੇ ਕੌਮ ਦਾ ਤੇ ਧਰਮ ਦਾ ਸਾਡਾ ਸਾਡੇ ਭਾਈਚਾਰੇ ਦਾ ਨਾਂ ਰੋਸ਼ਨ ਕਰਨ ਇਹ ਦੇ ਵਿੱਚੋਂ ਨਵੇਂ ਵਪਾਰਕ ادارے ਨਿਕਲਣ ਨਵੇਂ ਇਹ ਉਤਸ਼ਾਹੀ ਨੌਜਵਾਨ ਪੋਲੀਟੀਕਲ ਰਾਜਸੀ ਜੀਵਨ ਬਲਜਾਨ ਸਮਾਜ ਲਈ ਵਧੀਆ ਕੰਮ ਕਰਨ ਵਧੀਆ ਨੌਕਰੀਆਂ ਕਰਨ ਤੇ ਵਧੀਆ ਕੰਮ ਕਰ ਆ ਜਿਹੜਾ ਇਹ ਚਾਹੇ ਸੇਕ ਕਿਸੇ ਨੂੰ ਸਿੱਧੇ ਤੌਰ ਤੇ ਨਹੀਂ ਜੇ ਤੁਸੀਂ ਪਰਿਵਾਰ ਦੇ ਕਿਸੇ ਦੇ ਮੈਂਬਰ ਨਹੀਂ ਪਰ ਅਸਿੱਧੇ ਤੌਰ ਤੇ ਤਾਂ ਹੈ ਨਾ ਭਾਈਚਾਰਾ ਤਾਂ ਤੁਹਾਡਾ ਹੀ ਹੈ ਤੁਸੀਂ ਇਉਂ ਨਹੀਂ ਕਹਿ ਸਕਦੇ ਸਾਡੇ ਚੋਂ ਨਹੀਂ ਹੈ ਜਦ ਫੋਟੋਆਂ ਛਪਣ ਗਈਆਂ ਲਿਖੇ ਜਾਂਦੇ ਆ ਇਉਂ ਨਹੀਂ ਕਹਿ ਸਕਦੇ ਕਿ ਸਾਡੇ ਚੋਂ ਨਹੀਂ ਹੈ ਔਰ ਦੁੱਖ ਦੀ ਗੱਲ ਇਹ ਜਿਵੇਂ ਸੁਖਪਾਲ ਹੁਣੀ ਬਹੁਤ ਓਪਨਲੀ ਦੱਸ ਕੇ ਗਏ ਆ ਇਹ ਕੀ ਕਹਾਣੀ ਹੈ ਤੇ ਕਿਵੇਂ ਇਹਦੇ ਵਿੱਚੋਂ ਬੰਦਾ ਰਹਿੰਦਾ ਤੇ ਇਹਦੇ ਵਿੱਚੋਂ ਕਿਵੇਂ ਨਿਕਲਦਾ ਹੈ ਤੇ ਕਿਸ ਤਰ੍ਹਾਂ ਕਿਹੜੇ ਮੁੱਦਿਆਂ ਦੇ ਵਿੱਚ ਬੰਦਾ ਇਹਨਾਂ ਚ ਤੁਰ ਕੇ ਤੇ ਕਿੱਥੋਂ ਇਹਦੇ ਵਿੱਚੋਂ ਬਾਹਰ ਨਿਕਲ ਸਕਦਾ ਹੈ ਤੇ ਕਿਸ ਤਰ੍ਹਾਂ ਉਹਦੀ ਜਿਹੜੀ ਹੈ ਸੋਸਾਇਟੀ ਵੇਖਣ ਦੀ ਗੱਲ ਹੈ ਜਿੰਮਾਂ ਦੇ ਵਿੱਚ ਬੱਚਿਆਂ ਨੂੰ ਛੱਡ ਜਾਣਾ ਸੌਕਰਾਂ ਦੇ ਸੌਕਰ ਫੀਲਡ ਦੇ ਵਿੱਚ ਛੱਡ ਜਾਣਾ ਜਿਹਦੇ ਤੁਹਾਡਾ ਧੀ ਪੁੱਤ ਉੱਥੇ ਖੇਲਦਾ ਹੈ ਘੰਟਾ ਤੇ ਐਕਸਰਸਾਈਜ਼ ਕਰਦਾ ਹੈ ਤੇ ਘੰਟਾ ਤੁਸੀਂ ਕੋਲ ਕਿਉਂ ਨਹੀਂ ਬਹਿ ਸਕਦੇ ਕੋਈ ਪਰਨੋ ਨਹੀਂ ਆਉਣੀ ਜਦੋਂ ਤੁਸੀਂ ਅੱਖਾਂ ਮੀਚਣੀਆਂ ਜਵਾਕ ਫੇਰ ਵੀ ਇੱਥੇ ਰਹਿਣੇ ਇਹ ਵੱਡਿਆਂ ਮਹਿਲਾਂ ਮਾੜੀਆਂ ਨੇ ਵੱਡਿਆਂ ਘਰਾਂ ਨੇ ਵੱਡੀਆਂ ਕਾਰਾਂ ਨੇ ਕੱਖ ਨਹੀਂ ਸਾਨੂੰ ਦੇਣਾ ਕਰੋ ਇਹ ਵੀ ਜਿਹਦੇ ਕੋਲ ਹੈ ਉਹ ਕਰੇ ਮੈਂ ਨਹੀਂ ਇਹਨੂੰ ਕਹਿੰਦਾ ਕਿ ਵੀ ਕਿਸੇ ਕੋਲ ਪੈਸੇ ਪਏ ਆ ਉਹ ਜ਼ਿੰਦਗੀ ਜਿਉਣੀ ਚਾਹੁੰਦਾ ਉਹ ਲੈ ਲਵੇ ਵੱਡੀ ਕੁਛੋਟੀ ਕਾਰ ਪਰ ਜਿਨ੍ਹਾਂ ਕੋਲ ਹੈ ਨਹੀਂ ਉਹ ਬਿਤੋਂ ਵੱਧ ਜਦ ਕਰਦੇ ਤੇ ਇੱਕ ਬੱਚਿਆ ਨੂੰ ਇਹਨਾਂ ਨੂੰ ਜਿਹੜੀ ਸਖਤ ਜ਼ਿੰਦਗੀ ਆ ਉਹ ਨਹੀਂ ਦਰਸਾਉਂਦੇ ਆਪਾਂ ਇਹ ਬਹੁਤ ਦੁੱਖ ਦੀ ਕਹਾਣੀ ਇਹਨਾਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਟਿਪਸ ਤੇ ਨੇ ਮੂੰਹੋਂ ਕਿਹਾ ਅਜਿਹੀ ਚੀਜ਼ ਮਿਲੀ ਦੇ ਦਿਓ ਚੀਜ਼ ਹੋਰ ਮੈਂ ਨਹੀਂ ਕਹਿੰਦਾ ਮਾਪੇ ਦੇਣਗੇ ਸਾਨੂੰ ਵੀ ਸਾਡੇ ਦਿੰਦੇ ਰਹੇ ਪਰ ਉਹਨੂੰ ਪਤਾ ਤਾਂ ਹੋਵੇ ਸਾਨੂੰ ਪਤਾ ਸੀ ਕਿ ਸਾਡਾ ਪਿਓ ਖੱਤਿਆਂ ਦੇ ਵਿੱਚ ਜਾਂ ਸਾਡਾ ਸਾਡੀ ਮਾਤਾ ਰੋਟੀਆਂ ਢੂੰਦੀ ਫਿਰਦੀ ਆ ਜਾਂ ਸਾਡਾ ਪਿਤਾ ਨੌਕਰੀਆਂ ਕਰਦਾ 20 20 30 30 ਮੀਰ ਸਾਈਕਲਾਂ ਤੇ ਤੁਰਿਆ ਫਿਰਦਾ ਤੇ ਤਾਂ 50 100 ਰੁਪਏ ਮਿਲਦਾ ਸੀ ਉਹਦੇ ਵਿੱਚੋਂ ਸਾਰਾ ਪਰਿਵਾਰ ਪਰਦਾ ਸੀ ਇੰਨਾ ਕੁ ਤਾਂ ਪਤਾ ਸੀ ਨਾ ਇਉਂ ਹੀ ਨੂੰ ਪਤਾ ਹੋਵੇ ਵੀ ਐਨੇ ਮਿਲਦੇ ਆ ਟੋਟਲ ਪੁੱਤ ਇਹਦੇ ਵਿੱਚੋਂ ਇੰਨੀ ਮੌਰਗੇਜ ਆ ਤੇਰਾ ਖਰਚਾ ਇੰਨਾ ਪਰਿਵਾਰ ਦਾ ਖਰਚਾ ਇੰਨੀ ਗ੍ਰੋਸਰੀ ਆ ਗੱਡੀਆਂ 'ਚ ਤੇਲ ਪੈਂਦਾ ਦੇਖ ਲਾ ਆਹ ਕੁਝ ਬਚਦਾ ਇਸ ਸਿਰ ਦੀ ਛੱਤ ਤੇ ਤੈਨੂੰ ਤੋਰਨ ਫੇਨ ਲਈ ਕਾਰ ਤੇ ਤੇਰੀ ਯੂਨੀਵਰਸਿਟੀ ਕਾਲਜ ਦਾ ਖਰਚਾ ਇੰਨਾ ਪੁੱਤ ਜੱਤੀਏ ਆ ਖਰਚ ਹੈ ਸ਼ੁਕਰ ਹੈ ਇਹਦੇ ਵਿੱਚ ਕੁਝ ਪਰਸੈਂਟ 2 3% 4% ਕੁੜੀਆਂ ਇਹ ਗੈਂਗਸ ਦੇ ਤੁਰੀਆਂ ਫਿਰਦੀਆਂ ਪਰ 95% ਧੀਆ ਚੰਗੀ ਫਿਰ ਤਾਂ ਉਹੀ ਉੱਪਰ ਲੋ ਆ ਜੇ ਇਹ ਗੱਲ ਹੋ ਪਰ ਕੋਸ਼ਿਸ਼ ਕਰੀਏ ਮੈਂ ਫੇਰ ਵੀ ਕਹਣਾ ਵੀ ਪੱਕਾ ਇਹਦਾ ਕੋਈ ਵੀ ਧਾਗਾ ਤਵੀਤ ਨਹੀਂ ਕੋਈ ਹਸੌਲਾ ਨਹੀਂ ਇਹਦਾ ਸਿਰਫ ਇੱਕੋ ਹੀ ਆ ਆਪਣੇ ਮਦੋਂ ਵੱਧ ਤੋਂ ਵੱਧ ਕਰਦੇ ਹੋ ਦੋਨਾਂ ਜੀਆਂ ਚੋਂ ਇੱਕ ਜੀ ਕੰਮ ਕਰ ਲੋ 4000 ਚੋਂ 2000 ਸਕਰ ਫੁੱਟ ਚ ਰਹਿ ਲੋ 5000 ਦੀ ਕਾਰ ਨਾਲੋਂ 500 ਦੀ ਕਾਰ ਚ ਫਿਰ ਲੋ ਕਿਸੇ ਨੇ ਨਹੀਂ ਕਹਿਣਾ ਤੁਹਾਨੂੰ ਕੌਣ ਕਿੱਥੇ ਰਹਿੰਦਾ ਇੱਥੇ ਕੋਈ ਨਹੀਂ ਪੁੱਛਦਾ ਕੌਣ ਕੀ ਚਲਾਉਂਦਾ 1 ਮਿੰਟ ਲੱਗਦਾ 2 ਲੱਖ ਦੀ ਕਾਰ ਦੇਖ ਕੇ ਪਰ ਕਿਹੜਾ ਪੁੱਛਦਾ ਤੁਹਾਡੇ ਕੋਲ ਵੀ ਉਹ ਜਿਹੀ ਕਾਰ ਹੈ ਉਹ 2 ਲੱਖ ਵਾਲੇ ਨੇ ਪਤਾ ਨਹੀਂ ਉਹ ਤੇ ਲੋਨ ਕਿੰਨਾ ਹੋਊ ਪਤਾ ਨਹੀਂ ਕਿਹਦਾ ਖੂਨ ਚੂਸ ਕੇ ਲਈ ਫਿਰਦਾ ਹੋਊ ਜੇ ਕੋਈ ਛਗੀ ਮਾਰ ਕੇ ਲਈ ਫਿਰਦਾ ਹੈ ਮਿਹਨਤ ਵਾਲੇ ਵੀ ਨਹੀਂ ਪਰ ਠੱਗ ਵੀ ਫਿਰਦੇ ਸਰੀਚ ਵੱਡੀਆਂ ਗੱਡੀਆਂ ਲਈ ਫਿਰ ਉਹਨਾਂ ਨੂੰ ਸਿਰ ਲਕੋਣੇ ਪੈਂਦੇ ਆ ਪਾਰਕਿੰਗਾਂ 'ਚ 10-10 ਮਿੰਟ ਬਹਿਣਾ ਪੈਂਦਾ ਉੱਤਰਨ ਤੋਂ ਪਹਿਲਾਂ ਆਲੇ-ਦਾਲੇ ਦੇਖਣਾ ਪੈਂਦਾ ਇਹ ਉੱਤਰ ਮੈਂ ਇਹੋ ਜੀ ਜ਼ਿੰਦਗੀ ਨਾਲੋਂ ਤੁਰਿਆ ਹੋਇਆ ਬੰਦਾ ਚੰਗਾ ਪੈਰੀਂ ਤੁਰ ਕੇ ਨੰਗੇ ਪੈਰੀਂ ਤੁਰਜੋ ਇਹੋ ਜੀ 2 ਲੱਖ ਦੀ ਗੱਡੀ ਨਾਲ ਕੱਪੜਿਆਂ ਦੇ ਰੰਗ ਪੱਗਾਂ ਦੇ ਰੰਗ ਫਿਰ ਬਦਲਨੇ ਪੈਂਦੇ ਆ ਜਾਂ ਤੁਸੀਂ ਲੋਕਾਂ ਨਾਲ ਧੱਕਾ ਕਰਨਾ ਲੋਕਾਂ ਦਾ ਖੂਨ ਚੂਸਣਾ ਇਹ ਭੁੱਲ ਜੋ ਤੁਸੀਂ ਵੀ ਇਹ ਕਰਕੇ ਜੀ ਅਸੀਂ ਨਿਕਲ ਜਾਾਂਗੇ ਕਾਨੂੰਨ ਨਿਕਲ ਨੰਦਾ ਉੱਪਰ ਵਾਲਾ ਪਾਂਛਕੂ ਨਹੀਂ ਹੈ ਉਹਦੀ ਕਿਸ਼ਤ ਬਿਲਕੁਲ ਤਕੜੀ ਚ ਉਹ ਪੂਰਾ ਤੋਲਦਾ ਔਰ ਇੱਥੇ ਹੀ ਤਲ ਜਾਣਾ 5 ਸਾਲ 7 ਸਾਲ 10 ਸਾਲ ਇਹੀ ਸਮਾਂ ਵੱਡੇ ਵੱਡੇ ਹੋ ਕੇ ਤੁਰ ਗਏ ਖਾਲੀ ਹੱਥਾਂ ਚ ਨਾ ਭੱਜੀਏ ਪੈਸੇ ਪਿੱਛੇ ਜਵਾਕ ਸੰਭ ਲਈਏ ਆਪਣੇ ਜ਼ਿੰਦਗੀ ਬਚਾ ਲਾਂਗੇ ਇੱਕ ਗੀਤ ਵਪਾਰਕ ਸੰਦੇਸ਼ ਉਸ ਤੋਂ ਬਾਅਦ ਥ੍ਰੀਕਿਆਂ ਵਾਲੇ ਦੀ ਕਹਾਣੀ 1:22 ਮਿੰਟ ਹੋਏ ਆ ਜੀ ਪ੍ਰੋਗਰਾਮ ਪ੍ਰਮੇਂਦਰ ਥਿੰਦ ਹੋਣੀ ਤੁਹਾਡੇ ਸਾਹਮਣੇ ਕਰਦੇ ਆ 600 828 7213 thinkinsurance.ca ਇੱਥੇ ਤੇ ਅਲਬਰਟਾ ਦੇ ਵਿੱਚ ਲਿਬਰਟਾ ਦੇ ਵਿੱਚ ਡਮੰਟਨ ਤੇ ਕੈਲਗਰੀ ਸੇਵਾ ਕਰਦੇ ਆ ਰਮਨਦੀਪ ਸਿੰਘ ਸੋਹੋਤਾ ਤੇ ਇੱਥੇ ਪ੍ਰਮੇਂਦਰ ਥਿੰਦ thinkinsurance.ca ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨਸ ਮੋਰਗਰ ਸੁਪਰਵਾਈਜ਼ਰ ਦਾ ਡਿਸੇਬਿਲਟੀ ਇੰਸ਼ੋਰੈਂਸ ਤੇ ਬੜਾ ਕੰਮ ਕੀਤਾ ਬਰਸਤੋ ਜਿਹੜੇ ਟਿਕਲ ਤਿਲਕੇ ਨਾ ਕਿਸੇ ਨੇ ਗੋਡੇ ਦੀ ਅੱਖ ਪਣਾ ਲਈ ਜਿੱਦਾਂ ਚੂਕਣਾ ਹਿੱਲ ਗਿਆ ਉਸਨੇ ਕਿਸੇ ਨੇ ਕੂਣੀ ਪਣਾ ਲਈ ਕਿਸੇ ਨੇ ਰਗੜਾਂ ਖਾ ਲਈਆਂ ਉਹਨਾਂ ਨੇ ਚਾਰ ਪੈਸੇ ਲੈ ਲੈ ਨਾਲੇ ਆਰਾਮ ਕਰ ਲਿਆ 604 828 7213 ਗ੍ਰੈਂਡ ਪਾਰਸਦੀ ਦਾ ਤਾਰਿਕਲਤਾ ਸਿੰਘ ਜਿਆਰਾ ਹਰਪਾਲ ਸਿੰਘ ਸੂਝ ਤੇ ਸੁੱਚਾ ਸਿੰਘ ਪੱਡਾ 604 617 8484 ਬੈਂਕਟ ਹਾਲ ਕਾਦਾ ਸੇਵਾ ਦਾ ਕੇਂਦਰ ਹੈ ਦੂਸਰਾ ਪੁਰਾਣੇ ਬੈਂਕੁਟ ਹਾਲ ਪਹਿਲਿਆਂ ਬੈਂਕੁਟ ਹਾਲਾਂ ਦੇ ਵਿੱਚੋਂ ਤਾਂ ਹੀ ਪਾਰਟੀ ਅਗਲਾ ਕਹਿੰਦਾ ਪਾਰਟੀ ਕਿੱਥੇ ਆ ਗ੍ਰੈਂਡ ਤਾਜ ਇਹ ਗੱਲਾਂ ਹੁੰਦੀਆਂ ਸਿੱਦੇ ਦੀ ਪਾਰਟੀ ਸੇਵਾ ਪੂਰੀ ਬਜਟ ਠੀਕ ਉੱਪਰ ਦੇ ਬੈਣ ਨੂੰ ਆਖਰ ਕਮਰਾ 604 617 84 84 604 500 92 43 42 ਦੇਵਸ੍ਰੀਕੇ ਵਾਲੇ ਦੀ ਦੋ ਕਹਾਣੀਆਂ ਭੂਰੋ ਤੇ ਲਾਲ ਨਗ ਵਾਲੀ ਮੁੰਦਰੀ ਦੀਆਂ ਵੋਟਾਂ ਪੁਆਈਆਂ ਫੇਸਬੁੱਕ ਤੇ ਲਾਲ ਨਗ ਵਾਲੀ ਮੁੰਦਰੀ ਦੀਆਂ ਵੋਟਾਂ ਵੱਧ ਐ ਸੁਣਾਈ ਪਹਿਲਾਂ ਭੂਰੋ ਵੀ ਹੋਈ ਆ ਤੁਹਾਨੂੰ ਤੇ ਉਹਨੂੰ ਫੇਰ ਤੁਸੀਂ ਪਸੰਦ ਕਰਦੇ ਹੋ ਗੱਡੀਆਂ ਵਾਲੀ ਇੱਕ ਲੜਕੀ ਐ ਹੁੱਕਾ ਪਾਣੀ ਜਿਹੜੀ ਇਹ ਕਿਤਾਬ ਲਾਲ ਡਗ ਵਾਲੀ ਮੁੰਦਰੀ ਦੇਵ ਤਰੀਕਿਆਂ ਵਾਲਾ ਰੱਖਵੇ ਪਿੰਡ ਦੇ ਸਕੂਲ ਚ ਆਇਆ ਹਲਵਾਰੇ ਵਾਲੇ ਮਾਸਟਰ ਉਤਾਰ ਨੂੰ 2 ਮਹੀਨੇ ਹੋ ਗਏ ਜਿੰਦਰ ਮਾਸਟਰ ਨਾਲ ਯਾਰੀ ਪਈ ਹਮਰ ਉਹ ਹੋਣ ਕਰਕੇ 2 ਕੁ ਮਹੀਨੇ ਦੋਨਾਂ ਦੀ ਬੁੱਕਲ ਖੁੱਲ ਗਈ जिंदर ਦਾ ਪਿੰਡ ਬੋਪਾਰਾ ਸੀ ਰਖਵੇ ਤੋਂ ਡੇਢ ਮੀਲ ਸਕੂਲ ਉਸ ਦਾ ਪਿੰਡ ਹੈ ਸਕੂਲਾਂ ਉਹਦਾ ਪਿੰਡ ਕੁਰਸੀਆਂ ਤੇ ਬੈਠਿਆਂ ਨੂੰ ਦੇਖਦਾ ਸੀ ਜਿੰਦਰ ਨੇ ਅਵਤਾਰ ਨੂੰ ਆਪਣਾ ਘਰ ਦਿਖਾਉਣ ਲਈ ਕਈ ਵਾਰ ਆਖਿਆ ਯਾਰ ਸਾਡਾ ਕਦੇ ਘਰ ਤਾਂ ਲਿਖ ਜਾ ਬੰਦੇ ਨੂੰ ਬੇੜੇ ਕਵੇਲੇ 100 ਵਾਰ ਆਉਣਾ ਪੈਂਦਾ ਹਲਵਾਲੇ ਨੂੰ ਉਧਰ ਲਾ ਰਾਹ ਨਾ ਇਧਰ ਲਾ ਰਾਹ ਆ ਗਿਆ ਗੱਲਾਂ-ਬਾਤਾਂ ਕਰਦੇ ਹਰੀਆਂ ਖਜੂਜ ਕਣਕਾਂ ਨੂੰ ਦੇਖਦੇ ਜੋਗਨ ਮੱਤियां ਸਰਬੰਦ ਦੇ ਫੁੱਲ ਪੀਲੇ ਫੁੱਲ ਦੀ ਮਹਿਕ ਮੰਦੇ ਰਾਹੇ ਤੁਰ ਜਾਂਦੇ ਪਿੰਡ ਤੋਂ ਬਾਹਰ ਕੋਠੇ ਕੋਲ ਦੀ ਧੁੱਪ ਨਿਗ ਦੀ ਧੁੱਪ ਦੀ ਕੰਧ ਨਾਲ ਢੂ ਲਾਈ ਮੰਜੇ ਤੇ ਇੱਕ ਬਜ਼ੁਰਗ ਬੈਠਾ ਚਿੱਟਾ ਕੁਰਤਾ ਚਿੱਕੀ ਪੱਗ ਚਿੱਟੀ ਚਾਦਰ ਚਿੱਟੀ ਦਾੜੀ ਅੱਖਾਂ ਤੇ ਐਨਕ ਮੰਜੇ ਦੀ ਬਾਹਰ ਨਾਲ ਛੇੜੀ ਜੀ ਇੱਕ ਸੋਟੀ ਖੜੀ ਬਜ਼ੁਰਗ ਵੱਲ ਵੇਖ ਕੇ ਢਲਦੀ ਜਵਾਨੀ ਦੇ ਵਿੱਚੋਂ ਜਵਾਨੀ ਜਿਹੜੀਆਂ ਉਹ ਤਾੜੀਆਂ ਮਾਰ ਕੇ ਬਾਹਰ ਦਿਖਦੀ ਸਿੰਘ ਤਬੀਤ ਕੰਨਾਂ ਦੇ ਵਿੱਚ ਨੱਤੀਆਂ ਤੇ ਚੰਦ ਜਿਹੜਾ ਸੀ ਤੇ ਥਣ ਤੋਂ ਹੁਣ ਅੱਖ ਦੇ ਵਿੱਚ ਬੜਨ ਨੂੰ ਮੇਰਾ ਜੀ ਕਰੇ ਬਾਬੇ ਦੀਆਂ ਮੋਰਨੀਆਂ ਵੀ ਵੇਖਾਂ ਜਿਹੜੀਆਂ ਪੱਟ ਤੋਂ ਉੱਡ ਕੇ ਹੁਣ ਗੋਡਿਆਂ ਤੇ ਬਹਿਣ ਨੂੰ ਫਿਰਦੀਆਂ ਫਿਰ ਸੋਚਿਆ ਅਹਜੇ ਦਿਨ ਆਪਣੇ ਤੇ ਵੀ ਆਉਣੇ ਚਲ ਦੇਖਦੇ ਆ ਬਜ਼ੁਰਗਾਂ ਕੋਲ ਬਹਿਣ ਦਾ ਬੜਾ ਪਿਆਰ ਸੀ ਬਜ਼ੁਰਗਾਂ ਨਾਲ ਗੱਲ ਕਰਨ ਦਾ ਬਹੁਤ ਪਿਓ ਸੀ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖੀ ਦਾ ਸੀ ਪਰ ਬਜ਼ੁਰਗਾਂ ਦੇ ਅੰਦਰਲੇ ਘੇਰੇ ਚ ਬੰਨ ਨੂੰ ਸਮਾਂ ਲੱਗਦਾ ਸੀ ਜੰਦਰਾ ਪੈਰਾਂ ਦੀ ਵਿੜਕ ਸੁਣ ਕੇ ਬਾਬੇ ਨੇ ਮੱਥੇ ਤੇ ਹੱਥ ਰੱਖਿਆ ਆਹੋ ਬਾਬਾ ਜੀ ਛੁੱਟੀ ਕਰ ਸਾਉ ਆ ਚਾਰਕ ਦਾ ਟਾਈਮ ਹੋਣਾ ਮੈਂ ਕਹਿੰਦਾ ਹਾਂਜੀ ਬਾਬਾ ਜੀ ਆ ਨਾਲ ਕੌਣ ਐ ਤੇਰੇ ਇਸ ਵਾਰ ਆ ਮੁੰਡਾ ਕੋਈ ਬਾਹਰ ਦਾ ਲੱਗਦਾ ਲਾਹਮਦਾ ਹੈ ਐ ਮੇਰੇ ਨਾਲ ਪੜਾਉਂਦਾ ਰੱਖਵੇ ਬਾਬੇ ਦੀ ਆਵਾਜ਼ ਹਲੇ ਵੀ ਸਰੰਗੀ ਅਰਜੀ ਸੀ ਹੂੰ ਤੇ ਫਣਾ ਤੇ ਹੱਥ ਰੱਖਦਾ ਪਰ ਗੱਲ ਤਿੱਖੀ ਸੀ ਇਥੋਂਾਂ ਤੇ ਹੱਥ ਰੱਖ ਕੇ ਮੱਥੇ ਤੇ ਹੱਥ ਰੱਖ ਕੇ ਦੂਰੋਂ ਵੇਖਣ ਦੀ ਇੱਕ ਕਲਾ ਹੁੰਦੀ ਆ ਬਜ਼ੁਰਗਾਂ ਨੂੰ ਤਿੱਖਦਾ ਸਾਰਾ ਕੁਝ ਹੁੰਦਾ ਕਈ ਵਾਰ ਉਹ ਛਾਂ ਦੇ ਵਿੱਚ ਟਿੱਪਲੀਆਂ ਉੱਡਦੀਆਂ ਵੀ ਵੇਖਦੇ ਆ ਜਿੰਦਰ ਦੇ ਮੂੰਹੋਂ ਹਲਵਾ ਦੇ ਦਾ ਨੋਂ ਸੜ ਕੇ ਬਾਬੇ ਨੇ ਅਵਤਾਰ ਨੂੰ ਗੋਹ ਨਾਲ ਵੇਖਿਆ ਆ ਬਈ ਸਾਊਆ ਬਹਿ ਜਾ ਇਹ ਬਾਦਾਂ ਚਾਹ ਪਾਣ ਦੀ ਤੂੰ ਤਾਂ ਮੇਰੇ ਨਾਨਕਿਆਂ ਤੋਂ ਐ ਇੱਕੋ ਸਾਹਿਬ ਬੋਲ ਗਿਆ ਬਾਲਾ ਹਲਵਾਰੇ ਨੇ ਹਾਂ ਮੈਂ ਘਰ ਉਹਨਾਂ ਦਾ ਕਰਤਾਰੇ ਕਹਿੰਦੇ ਨਾਲ ਆ ਕੱਠਾ ਵਾਲਾ ਕਹਿੰਦੇ ਆ ਉਹਨੂੰ ਤੂੰ ਜਾਣਦਾ ਹੋਵੇਂਗਾ ਬਚਨੇ ਖੋਚਰੀ ਨੂੰ ਮੇਰੇ ਮਾਮੇ ਦਾ ਮੁੰਡਾ ਉਹ ਨਹੀਂ ਜਾਣੀਏ ਤਕੜਾਈ ਹੋਵੇ ਹਾਂਜੀ ਹਾਂ ਹਾਂ ਜਾਣਦਾ ਜੀ ਜਾਣਦਾ ਵਾਸਤਵ ਤਾਰ ਨੇ ਹੰਗਾਰਾ ਪਾਇਆ ਸਾਊ ਆ ਤੁਹਾਡੇ ਪਿੰਡ ਵਾਲੇ ਕਪਾਰੇ ਨਾਲ ਮੇਰੀ ਬਾੜੀ ਆੜੀ ਹੁੰਦੀ ਸੀ ਟਖਲਾ ਬਹਿੰਦਾ ਉਹੋ ਬਾਪੂ ਨੇ ਚਿੱਟੀ ਦਾੜੀ ਤੇ ਹੱਥ ਫੇਰਿਆ ਨਾਲ ਖੰਗਿਆ ਹਾਂਜੀ ਬਾਪੂ ਜੀ ਜਦ ਮੈਂ ਬਾਪੂ ਜੀ ਕਿਹਾ ਬਸ ਹੋਰ ਖੁਸ਼ ਹੋ ਗਿਆ ਮੇਰੀ ਇੱਜ਼ਤ ਮਿਲ ਰਹੀ ਹੁਣ ਤਾਂ ਬੁढ़ा ਹੋ ਗਿਆ ਹੋਣਾ ਸਾਰਾ ਜਾ ਕੇ ਮੇਰੀ ਫਤਿਹ ਭਲਾਈ ਵੀ ਫਤਿਹ ਭੇਜੀ ਆ ਕਰਤਾ ਰਹੇ ਨੇ ਜਦ ਉਹ ਖਬਰ ਆਏ ਕਿਹਾ ਮੈਂ ਫਤਿਹ ਕਿਹੜੀ ਚੰਗਾ ਜੀ ਆਖ ਅਵਤਾਰ ਜਿੰਦਰ ਦੇ ਨਾਲ ਤੁਰ ਪਿਆ ਜਿੰਦਰ ਦੀ ਹਵੇਲੀ ਪਹੁੰਚ ਕੇ ਚਾਹ ਪੀ ਘੰਟਾ ਬੈਠ ਕੇ ਗੱਲਾਂ ਬਾਤਾਂ ਕਰਕੇ ਅਵਤਾਰ ਮੈਨੂੰ ਤੁਰ ਗਿਆ ਸਤਕ ਦਿਨ ਮਗਰੋਂ ਜਿੰਦਰ ਨੇ ਫੇਰ ਆਖਿਆ ਮੈਂ ਸੁਧਾਰ ਨੂੰ ਜਾਣਾ ਹੈ ਖਾਲ ਬੜੇ ਮੇ ਲੈਣ ਆਜਾ ਬੋਰੀ ਲੈ ਚੱਲੀਏ ਘਰੋਂ ਨਾਲੇ ਚਾਹ ਦੀ ਘੁੱਟ ਪੀ ਲੈ ਤੇਰੇ ਨਾਲੇ ਲੱਤ ਦੇਣੀ ਮੈਂ ਸਾਈਕਲ ਤੇ ਹੰਤਾਰ ਨੂੰ ਪਿੰਡ ਬੋਪਾਂ ਦਾ ਗੱਲਾਂ-ਵੱਤਾਂ ਕਰਦੇ ਸਰੋਂ ਦੇ ਸਾਗ ਤੋੜਦਿਆਂ ਮਟਿਆਰਾਂ ਦੇ ਪੱਛੋਂ ਦੇ ਬੁੱਲਿਆਂ ਨਾਲ ਉੜਦੇ ਦੁਪੱਟਿਆਂ ਦੀਆਂ ਕਿਨਾਰੀਆਂ ਦੇਖਦੇ ਜਦੋਂ ਕੋਠੇ ਕੋਲ ਪਹੁੰਚੇ ਬਾਪੂ ਫੇਰ ਬੈਠਾ ਹਲਵਾਰੇ ਵਾਲਾ ਮਾਸਟਰ ਚਾਹ ਪਾਣੀ ਦੀ ਸੇਵਾ ਦੱਸ ਮੱਲਾ ਜਿੰਦਰਤਾ ਭਰਾ ਸਾਡੇ ਘਰ ਆਈ ਮੁੰਡਾ ਤੂੰ ਜੱਖ ਜੱਖੀ ਨਾ ਕਰ ਬਹਿ ਜਾ ਬਸ ਬਸ ਕਿਰਪਾ ਬਾਪੂ ਜੀ ਜੀਉਦੇ ਰਹੋ ਨਾਲੇ ਮੱਥਾ ਟੇਕਦਾ ਅਵਤਾਰ ਨੇ ਨਿਮਕੇ ਗੋਡੇ ਨੂੰ ਖਸਲਾ ਸਹੂਆ ਮਲਾਂ ਗੱਲ ਸੁਣ ਉਹ ਰੇ ਨੂੰ ਹੋ ਕੇ ਕਰਤਾਰੇ ਘਰੋਂ ਰਲੀ ਸੀ ਰਲੀ ਉਹ ਤਕੜੀ ਐ ਹੌਲੀ ਦੇ ਕੇ ਬਾਬੇ ਨੇ ਪੁੱਛਿਆ ਤਕੜੀ ਆ ਬਾਪੂ ਜੀ ਤਕੜੀ ਐ ਬੁੜੀ ਹੋ ਗਈ ਹੋਣੀ ਆ ਹੁਣ ਤਾਂ ਨਿਗਾ ਨੂੰ ਵਾ ਕਾਇਮ ਐ ਗੱਲਾਂ ਕਰਦੇ ਬਾਪੂ ਦਾ ਗਲ ਗਿਆ ਪਰ ਬਾਹਲੀ ਚੰਗੀ ਐ ਬਈ ਪਰ ਚੰਗੀ ਸੀ ਵਿਚਾਰੀ ਜਿਗਰੇ ਵਾਲੀ ਦੀ ਸੀ ਪਰ ਉਨੂੰ ਆਖੀ ਜੇ ਮਿਹੜੀ ਕਿਤੇ ਦਸਾਉਂਦਾ ਸਿਉ ਬੋਪਾ ਰਾਮੇ ਆਲਾ ਫਤਿਹ ਬੁਲਾਉਂਦਾ ਓ ਨਾ ਜਾਈ ਮੇਰਾ ਸਾਹੂ ਹੌਕਾ ਜੇ ਲੈ ਕੇ ਦਸਾਉਂਦੇ ਵੇ ਬੁੜੇ ਨੇ ਅਵਤਾਰ ਦੇ ਮੁੱਢ ਤੇ ਹੱਥ ਰੱਖ ਕੇ ਚੁੱਕ ਲਿਆ ਕੱਲਾ ਕਾਨੂੰ ਉਹਦਾ ਜੀ ਹੋਰ ਕਰਦਾ ਜਿੰਦਰ ਹਵਤਾਰ ਨੂੰ ਖੜ ਨਹੀਂ ਸੀ ਦਿੰਦਾ ਗੱਲ ਨੰਗ ਕੇ ਪਿੱਛੋਂ ਬਾਪੂ ਨੇ ਫੇਰ ਮਾਰੀ ਸਾਹੂਆ ਰਲੀ ਨੂੰ ਫਤਿਹ ਬੁਲਾਦੀ ਮੱਲਾ ਮੇਰੀ ਹਵੇਲੀ ਅਪੜ ਗੇ ਸਾਈਕਲ ਪਿੱਛੇ ਬੋਰੀ ਰੱਖ ਸੁਧਾਰ ਦੇ ਪੁਲ ਤੁਰੇ ਅਵਤਾਰ ਦੇ ਆਪਣੇ ਪਿੰਨੂ ਜਾਣ ਦੀ ਤੇ ਜਿੰਦਰ ਨੇ ਸੁਧਾਰ ਦੇ ਪੁੱਤੋਂ ਖਲਬੜੇਵੇਂ ਰਾਹ ਦੇ ਦੋਨੇ ਪਾਸੇ ਹਰੇ ਬਈ ਹਰੇ ਬਈ ਮਿੱਠੀ ਮਿੱਠੀ ਪਿੰਨੀ ਪਿੰਨੀ ਮੈਂ ਕੌਂਦੀ ਧਰਤੀ ਚੋਂ ਕਿਸੇ ਮਟਿਆਰ ਦੇ ਪਿੰਡੇ ਆਰ ਜਾਂ ਕਦੇ ਕਦੇ ਲੱਗਦੀ ਬਈ ਇਹੇ ਸਫੈਦੇ ਦੀ ਖੁਸ਼ੂਆ ਡੋਡੀਆਂ ਦੀ ਜਾਂ ਕਵੇ ਕਵੇ ਇਉਂ ਲੱਗਦੀ ਕਿ ਸਰੋਂ ਹੈ ਜਾਂ ਕਰ ਕਰ ਕੇ ਲੱਗਦੀ ਕਿਤੇ ਦੂਰੋਂ ਕਿਤੋਂ ਮਖਯਾਲ ਦੀ ਸ਼ਹਿਦ ਦੀ ਇਹ ਮਹਿਕ ਜਾਂ ਕਰ ਕਰ ਲੱਗਦੀ ਵੀ ਧਰਤੀ ਦੇ ਵਿੱਚੋਂ ਹੀ ਇਹ ਜਿਹੜੀ ਮੁਸਕਣੀ ਆ ਰਹੀ ਹੈ ਇੰਨ ਲੱਗਦਾ ਜਿਵੇਂ ਧਰਤੀ ਤੇ ਮੁਸਕਣੀ ਬੂਟੀ ਕਿਸ ਨੇ ਸਿਰਤੀ ਹੋਵੇ ਤੇਲੀਏ ਮਹਿਕ ਦੀ ਤੇਲੀਆ ਮਹਿਕ ਜਿਹੜਾ ਨਹੀਂ ਹੁੰਦਾ ਨੱਕ ਨੂੰ ਲੜਦਾ ਉਹ ਤੇਲੀਏ ਮਹਿਕ ਦੀ ਸੰਗਨ ਆਉਂਦੀ ਮੈਂ ਆਪਣੇ ਆਪ ਮਨ ਚ ਗੱਲ ਕਰ ਰਿਹਾ ਇਹ ਮਹਿਕ ਕਿਤੇ ਸੁੰਘੀ ਲੱਗਦੀ ਹੈ ਪਰ ਮੈਂ ਗੱਲ ਨਾ ਪਰੇ ਜਾਂਦੇ ਅਵਤਾਰ ਨੇ ਜਿੰਦਰ ਨਾਲ ਗੱਲ ਕੀਤੀ ਯਾਰ ਕੋਠੇ ਵਾਲਾ ਬਾਪੂ ਜੀ ਦੇ ਕੋਲ ਗਿਆ ਸੀ ਰਲੀ ਨੂੰ ਮੇਰੀ ਸੱਸਰੀ ਕਾਲ ਆਖੀ ਰਲੀ ਮੇਰੇ ਪਿੰਡ ਦੀ ਬੇਬੇ ਜਿਹਨੇ ਪਹਿਲੇ ਦਿਨ ਜਿਹਦੀ ਗੱਲ ਕਰਦਾ ਹੌਜਾ ਹੌਕਾ ਜਿਹਾ ਲਾ ਕੇ ਕਹਿੰਦਾ ਰਲੀ ਯਰ ਕੌਣ ਹੋ ਸਕਦੀ ਐ ਤੇ ਫਿਰ ਆਪਾਂ ਤੁਰਦਿਆਂ ਨੂੰ ਹਾਕ ਮਾਰੀ ਮੇਰੀ ਫਤੇ ਬੁਲਾਦੀ ਵੇਖਣ ਨੂੰ ਹੌਬੂ ਲੱਗਦਾ ਪਰ ਜਿੰਦ ਨੇ ਅਵਤਾਰ ਦੀ ਗੱਲ ਵਿੱਚੇ ਕਰਤੀ ਸਾਊ ਕਾਨੂੰ ਐ ਬਹੁਤ ਵਿਗੜਿਆ ਆ ਠੇਠਾ ਠੇਠਾ ਦੇਖਣ ਨੂੰ ਹੀ ਲੱਗਦਾ 6 ਮਹੀਨੇ ਦੀ ਗੱਲ ਐ ਜਵਾਕਾਂ ਨੂੰ ਕੋਈ ਪੁੱਛਾ ਪੁੱਠਾ ਬਹਿ ਬੈੜੇ ਘਰੇ ਬੈਠਿਆ ਖਾਣੀ ਨੂੰ ਕੁਛ ਕਹਿ ਲਿਆ ਉਹਨਾਂ ਨੇ ਚੱਕ ਕੇ ਮੰਜਾ ਟਿਊਬਲ ਤੇ ਰੱਖਤਾ ਹਲੇ ਤੱਕ ਵੀ ਪੁੱਠੀਆਂ ਗੱਲਾਂ ਕਰਦਾ ਰੋਟੀ ਦੇਣ ਵਾਲੇ ਪੋਤਿਆਂ ਨੂੰ ਕਹੂ ਗੋਬੀ ਨੂੰ ਆਪਣੀ ਨੂੰ ਕਿਹੋ ਬਾਬਾ ਸੱਦਦਾ ਸਿਰ ਤੇ ਤੇਲ ਕੇ ਜਾਵੇ ਮਾਸਟਰ ਅਰਬਾਤ ਬੜੇ ਗੌਨਸ ਨਹੀਂ ਜਾਂਦਾ ਤੇ ਹੂੰ ਹਾਂ ਕਰਦਾ ਪਰ ਮਾਸਟਰ ਅਵਤਾਰ ਨੂੰ ਜਿੰਦਰ ਦੀ ਗੱਲ ਨਹੀਂ ਸੀ ਵਧੀਆ ਲੱਗਦੀ ਬਾਬੇ ਵਾਲੀ ਗੱਲ ਨੂੰ ਠੀਕ ਲੱਗਦੀ ਸੀ ਫੇਰ ਵੀ ਉਮਰ ਹੋ ਗਈ ਜ਼ਿੰਦਗੀ ਤਾਂ ਜ਼ਿੰਦਗੀ ਹੈ ਇੱਕ ਦਿਨ ਮੈਨੂੰ ਕਹਿੰਦਾ ਤੁਰੇ ਜਨ ਲਸੋਨ ਅਵਤਾਰ ਹਾਂਜੀ ਜਿੰਦਰਾ ਭਾਬੀਆਂ ਭੂਬੀਆਂ ਨਾਲ ਹੱਥ ਖੇਡ ਲਿਆ ਹੱਥ ਖੇਡ ਲਿਆ ਕਰ ਆਹੀ 4 ਦਿਨ ਨੇ ਮਗਰ ਤਾਂ ਲੇਖਾ ਹੀ ਭਰਨਾ ਦੇਖ ਲੈ ਜਾਦੀ ਤੇਰੀ ਬੋਬੀ ਡਿੱਗੜ ਹੋਈ ਐ ਜਮਈ ਮੌਲੇ ਬੜ ਵੜ ਗਈ ਕਹਿੰਦਾ ਮੈਨੂੰ ਲੱਗੇ ਬਾਪੂ ਇਹ ਕਹੀ ਜਾਂਦਾ ਗੱਲੀਆਂ ਬਾਤੀ ਸੁਧਾਰ ਪਹੁੰਚ ਗਏ ਜਿੰਦਰ ਖਲਬੜੇਵੇਂ ਲੈਣ ਜਸਵਾਲੀ ਪੰਡਤਾ ਦੀ ਹੱਟੀ ਜਾ ਬੜਿਆ ਅਵਤਾਰ ਹਲਵਾੜੇ ਨੂੰ ਤੁਰ ਗਿਆ ਸਾਰੇ ਰਾਹ ਦਸੋਂਦੇ ਬਾਪੂ ਦੀਆਂ ਗੱਲਾਂ ਚਿੱਟੀ ਦਾੜੀ ਚਿੱਟੀ ਪੱਗ ਚਿੱਟੇ ਕੱਪੜੇ ਪਰ ਫੇਰ ਕਦੇ-ਕਦੇ ਕਹਿਣਾ ਫਿਰ ਹੁਣ ਉਹ ਮਰਜੈ ਇਹਨੇ ਜੀਉਣਾ ਨਹੀਂ ਹੈ ਗੱਲ ਤਾਂ ਹੁਣ ਉਹਨੇ ਕਿੱਥੇ ਨਾਲ ਕਰਨੀ ਹੋਈ ਹੈ ਰਾਤ ਨੂੰ ਦੈਨੂ ਜਦੋਂ ਕਦੇ ਗੱਲ ਚਿੱਤੇ ਉਹਦੀ ਚਿੱਤੀ ਦਾੜੀ ਚਿੱਤੀ ਪੱਗ ਚਿੱਤੇ ਕੱਪੜੇ ਗੰਭੀਰ ਚਿਹਰਾ ਉਤਾਰ ਦੀਆਂ ਹਫ਼ਤੇ ਇੱਕ ਬਾਅਦ ਬਿਮਾਰ ਹੋ ਗਿਆ ਸਕੂਲੋਂ ਛੁੱਪੀ ਹੁੰਦੇ ਉਹਦੀ ਖ਼ਬਰ ਲੈਣ ਲਈ ਅਵਤਾਰ ਸਾਈਕਲ ਫੜ ਕੇ ਬੋਪਾ ਨੂੰ ਤੁਰ ਗਿਆ ਕੋਠੇ ਕੋਲ ਜਾਂ ਬੋਪਾ RAM ਬੜਿਆ ਤਾਂ ਬਾਬੇ ਨੇ ਦੂਰੋਂ ਦੇਖ ਲਿਆ ਹਰ ਬਾਰੇ ਮਾਸਟਰ ਹਾਂਜੀ ਬਾਪੂ ਜੀ ਮੱਥਾ ਠੀਕਦਾ ਬੜੇ ਚਿਰਾਂ ਬਾਅਦ ਬੱਲਾ ਮਿਲਿਆ ਮੇਰਾ ਕਈ ਵਾਰ ਜਿੱਤ ਕੀਤਾ ਬਈ ਚੱਲ ਕੇ ਤੈਨੂੰ ਸਕੂਲੇ ਮਿਲਿਆ ਵਾ ਹੋਰ ਦੱਸ ਰਲੀ ਤਕੜੀ ਸੀ ਕੀ ਕਹਿੰਦੀ ਸੀ ਉਹ ਬਾਪੂ ਜੀ ਕਹਿੰਦੀ ਸੀ ਗੋਬੀ ਕਰੇ ਆ ਕੇ ਮਿਲ ਜੇ ਨਾਲੇ ਮੇਰੀ ਫਤਿਹ ਬੁਲਾ ਦੇਉ ਅਵਤਾਰ ਨੇ ਝੂਠ ਮੂਠੇ ਕਹਤਾ ਦੋਨੇ ਹੱਥ ਜੋੜ ਤੇ ਹੁਣ ਕਿੱਥੇ ਹੁਣ ਕਿੱਥੇ ਜਾਇਆ ਜਾਂਦਾ ਗੱਲਾਂ ਕਰਦੇ ਤੇ ਸੁੰਦੇ ਬੇ ਬਾਪੂ ਨੇ ਹੌਕਾ ਲਿਆ ਅਵਤਾਰ ਨੂੰ ਚਟਿੰਦਰ ਦੀਆਂ ਗੱਲਾਂ ਯਾਦ ਆਈਆਂ ਆ ਬੈਠ ਮੱਜੇ ਤੇ ਨਹੀਂ ਬਾਪੂ ਜੀ ਮੈਂ ਤਾਂ ਖਬਰ ਲੈਣ ਜਾਣੀ ਓ ਤਕੜਾ ਉਹ ਫਿਕਰ ਨਾ ਕਰ ਸਵੇਰੇ ਜੰਗਲ ਪਾਣੀ ਇਥੋਂ ਨਿੰਗਦਾ ਮੈਂ ਦੇਖਿਆ ਚਲਿਆ ਜਾਈ ਤੇ ਨਾਲ ਗੱਲ ਕਰਦੀਆਂ ਕਈ ਦਿਨਾਂ ਦੀ ਸੋਚ ਦਾ ਮੱਲਾ ਬੈਠਦਾ ਸਹੀ ਤੂੰ ਬਾਬੇ ਦੀ ਗਵਾਚ ਅੱਜ ਕਰਕਾ ਸੀ ਖੜ ਜਾ ਪਾਣੀ ਦੀ ਪੀਲ ਮਾ ਥੱਲੇ ਉਹਨੇ ਪਾਣੀ ਦੀ ਗੜਬੀ ਚੋਂ ਪਾਣੀ ਕੱਢ ਕੇ ਮੂੰਹ ਚ ਕੋ ਮੈਨੂੰ ਨਹੀਂ ਪਤਾ ਕੀ ਪਾਇਆ ਪਰ ਪਾਇਆ ਕੁਛ ਬਹੁਤਾ ਮੈਂ ਮੱਲਾ ਤੇਰੇ ਪਿੰਡੇ ਰਿਆਂ ਹਲਦਾਲੇ ਨਿਗਾ ਮਾਰ ਕੇ ਜਦੋਂ ਰਲੀ ਮਕਲਾਵੇ ਆਈ ਸੌਂ ਤਰਾਲਾ ਲੋਹੜਿਆਂ ਦੀ ਸਮੱਕੀ ਸੀ ਜੱਤੀ ਚ ਨਖਰਾ ਮਣ ਮਾ ਟੋਕਾ ਲੈ ਕੇ ਬੀਹ ਚ ਤੁਰਨਾ ਲੱਕ ਨੇ ਤੂਤ ਦੀ ਛੜੀ ਅੰਗੋਲਾਰੇ ਖਾਣੇ ਪੁੱਛਣਾ ਤੋਰ ਉਹਦੀ ਲੰਗੇ ਆਲੇ ਆਲੇ ਮੁੰਦਰੀ ਸੀ ਦੀ ਜੁੱਤੀ ਜੱਤੀ ਦੇ ਪੈਰ ਦੇ ਵਿੱਚ ਬਰੋਲੇ ਬਾਨੇ ਚੋ ਚੋ ਚੋ ਕਰਮੀ ਕਿਉਂ ਬਈ ਤੱਲੀ ਅਰ ਕੱਦ ਪੱਖ-ਪੱਖ ਉੱਠਣਾ ਸਰੀਰ ਕਮੰਡਲੀ ਅੱਖਾਂ ਸੰਤਰੇ ਦੀਆਂ ਫਾੜੀਆਂ ਕਬੂਤਰ ਦੀ ਚੁੰਝ ਅਰ ਨੱਕ ਰਾਨ ਦੇ ਕਿਤੇ ਮੱਥੇ ਲੱਗ ਹੁੰਦਾ ਸੀ ਹੁਣ ਤਾਂ ਪਤਾ ਖੈਰ ਬੁੜੀ ਹੋ ਗਈ ਹੋਣੀ ਆ ਆਪਣੀ ਉਮਰ ਨਹੀਂ ਸੀ ਸੋਚ ਰਿਹਾ ਰਲੀ ਨੂੰ ਬੁੜੀ ਬਹੁਤ ਕਰ ਰਹੀ ਕਰਤਾਰਾ ਉਹਦੇ ਘਰ ਵਾਲੇ ਦਾ ਮੂੰਹ ਨਾਲ ਮੱਥਾ ਕਾਲਾ ਢੂੜ ਥੋਬਿਆਂ ਅਰਗੇ ਨੈਣ ਨਸ ਪੁੱਲੰਬੁੱਲ ਜਿਹਾ ਬੋਤੇ ਜਿੱਡੇ ਪੈਰ ਫੜ ਦੇ ਦੇਖ ਕੇ ਮੈਨੂੰ ਗੁੱਸਾ ਆਇਆ ਕਰ ਨਾ ਖਾਣ ਦਾ ਸੂਰ ਨਾ ਪਹਿਨਣ ਦਾ ਬਗਰੋਲ ਜਿਹਾ ਇਵੇਂ ਪਤਾ ਨਹੀਂ ਇਹ ਜੀ ਕਿਵੇਂ ਉਹਨਾਂ ਦਿਨਾਂ 'ਚ ਜਵਾਨ ਸੀ ਨਾਨਕੇ ਰਹਿਣਾ ਤੋਂ ਖਾਣ ਪੀਣ ਦੀ ਮੌਜ ਥੱਬੇ ਥੱਬੇ ਦੇ ਪੱਟ ਛਪਾਰ ਦੇ ਮੇਲੇ ਤੋਂ ਮੈਂ ਤਿੰਨ ਮੋਰਨੀਆਂ ਦਿਖਾਵਾਂ ਚਾਦਰਾ ਚਾਕੇ ਬਾਪਾ ਵਾਕਈ ਪਰ ਮੋਰਨੀਆਂ ਹੁਣ ਗੋਡੇ ਤੇ ਬੈਠੀਆਂ ਸੀ ਆਕ ਵਾਕਈ ਪਰ ਸਰੀਰ ਹਲੇ ਵੀ ਬਾਪੂ ਚੋ ਮੈਂ ਕੌਂਦੀ ਸੀ ਮੁਸ਼ਕ ਨਹੀਂ ਸੀ ਬਜ਼ੁਰਗੀ ਦਾ ਆਉਂਦਾ ਜੇ ਕਿਤੇ ਮੈਂ ਲੀੜੇ ਪਾ ਕੇ ਰੈਕੋਟ ਦੇ ਮੇਲੇ ਪਿੰਡ ਚ ਹੀ ਲੰਘ ਜਾਣਾ ਰੈਕੋਟ ਸ਼ਹਿਰ ਚੀ ਰਾਇਕੋਟਣਾ ਨੇ ਕਹਿਣਾ ਥੜੀ ਨਹੀਂ ਮਾਂ ਰੋਟੀ ਦਾ ਟੋਕ ਦੇਖਾਂ ਚੀ ਦਾ ਲੰਘਿਆ ਪਰੋਣਾ ਇਹ ਜੀਆਂ ਗੱਲਾਂ ਸੀ ਮੱਲਾ ਸੌਨੇ ਬੁੜੇ ਥੋੜੀ ਜੀ ਗੱਲ ਸੁਣਨ ਕਿ ਅਵਤਾਰ ਨੂੰ ਜਿੰਦਰ ਦੀ ਗੱਲ ਸੱਚੀ ਰਲੀ ਨੂੰ ਮਕਲਾਵੇ ਆਇ ਨੂੰ 2 ਕੁ ਮਹੀਨੇ ਹੋਏ ਸੀ ਕਰਤਾਰਾ ਇੱਕ ਦਿਨ ਮੈਨੂੰ ਮੱਲੋ ਮੱਲੀ ਘਰੇ ਖਿੱਚ ਕੇ ਲੈ ਗਿਆ ਕਹਿੰਦਾ ਤੈਨੂੰ ਵਿਆਹ ਦੀ ਪਾਰਟੀ ਕਰਨੀ ਐ ਰਲੀ ਨੇ ਦਰਵਰਦਿਆਂ ਨੂੰ ਦੇਖ ਕੇ ਉੱਠ ਕੇ ਅੰਦਰੋਂ ਮੰਜਾ ਨਵਾਂ ਬਿਸਤਰਾ ਬਿਚਾਤਾ ਕਰਤਾਰਾ ਬੇੜੇ ਚ ਖੂਂਜੇ ਚ ਬਹਿ ਗਿਆ ਜਾ ਕੇ ਮੈਂ ਕੱਲਾ ਖਰਾਣਾ ਰੱਖਣ ਵਾਲੀ ਰਲੀ ਨੇ ਨੀਮੀ ਜੀ ਪਾ ਕੇ ਮੈਨੂੰ ਕਿਹਾ ਸਸਰੀ ਕਾਲ ਜੀ ਬਸ ਸਹੂਆ ਆਹ ਸਸਰੀ ਕਾਲ ਨੀ ਮੱਲਾ ਭੁੱਲੀ ਅੱਜ ਤੱਕ ਖੱਟਣ ਨੂੰ ਕੁਛ ਨਹੀਂ ਮੱਲਾ ਦਏ ਇਸ ਦੁਨੀਆ ਚਾਰ ਸ਼ਬਦ ਹੀ ਨੇ ਜਿਹੜੇ ਚੰਗੇ ਕਹੇ ਯਾਦ ਰਹਿ ਜਾਣੇ ਰੂੜੀ ਮਾਰ ਕਾ ਪੀਂਦਿਆ ਹੋ ਗਿਆ ਰਲੀ ਨੇ ਦੀਵਾ ਲਾਤਾ ਦੀਵੇ ਦੇ ਚਾਨਣ ਮੂਰੇ ਚੁੱਲੇ ਮੂਰੇ ਰੋਟੀਆਂ ਪਕਾਉਂਦੀ ਰਲੀ ਅੱਖ ਬਚਾ ਕੇ ਮੈਨੂੰ ਦੇਖ ਲਿਆ ਕਰ ਪੀਤੀ ਚ ਰਲੀ ਦੇ ਹੱਥਾਂ ਤੇ ਪਾਏ ਬਿਸਤਰੇ ਦੀ ਚਾਦਰ ਦੇ ਮੋਰ ਘੁਗੀਆਂ ਮੈਨੂੰ ਉੱਡਦੇ ਉੱਡਦੇ ਲੱਗਣ ਜਿਵੇਂ ਮੋਰ ਮੇਰੇ ਮੋਰਾਂ ਤੇ ਬੈਠਾ ਭੱਲਾ ਜਾੜੀ ਹੈ ਹੈ ਦੀ ਗੱਲ ਸੁਣਾਉਂਦਾ ਤੈਨੂੰ ਮੋਰ ਕੇ ਹੱਥ ਅੰਨਕ ਤੇ ਲਾ ਕੇ ਉਹ ਫੇਰ ਠੀਕ ਕਰ ਇੱਕ ਦਿਨ ਮੈਂ ਬੀਹੀ ਜੀ ਜਾਵਾਂ ਰਲੀ ਭੇੜੇ ਦਾ ਇੱਕ ਤਖਤਾ ਬੰਦ ਕਰੀ ਇੱਕ ਅੱਧਾ ਖੋਲੀ ਬੈਲਣ ਚੀਂ ਦੇਖੇ ਮੈਂ ਲੰਘਣ ਲੱਗੀ ਕਹਿੰਦੀ अगला मर मर ਜਾਂਦਾ ਹੈ ਅਬਸਰਾਂ ਦੀ ਆਕੜ ਚ ਨੋਂ ਨਹੀਂ ਖੁੱਬਦਾ ਬਸ ਜਦ ਮੇਰੇ ਫਿਰ ਉਹ ਗੱਲ ਉਹਨੇ ਕਹੀ ਮੱਲਾ ਉਹ ਦਿਨ ਤੇ ਅੱਜ ਦਾ ਦਿਨ मामी लाम चले गए, नानी ਦੀਨਾ ਨਹੀਂ ਸੀ रोटी ਟੁਕ ਦਾ मैं रली ਰਾਲੀ ਨੂੰ ਸਨੇਹਾ ਦੇ ਆਇਆ ਤੇ ਰੋਟੀ ਲਾ ਕੇ मामी ਗਏ ਨੇ ਉੱਕਣੇ ਵਲੀ ਆ ਕੇ ਫੇਰ ਚੌਂਕੇ ਚ ਜਿਵੇਂ ਮੈਂ ਪਹਿਲੀ ਵਾਰ ਦੇਖੀ ਰੋਟੀਆਂ ਲਾਹੇ ਨਾਨੀ ਨੇ ਅੰਦਰੋਂ ਹਾਕ ਮਾਰੀ ਮੈਨੂੰ ਕਹਿੰਦੀ ਦਸਾਉਂਦ ਕੌਣ ਆਇਆ ਮੱਲਾ ਕਹਿੰਦਾ ਮੈਂ ਕਿਹਾ ਦੂਜੇ ਦੂਜੇ ਅਗਵਾਰ ਚੋਂ ਆਈ ਦੀ ਏ ਉਹ ਤੋਂ ਰੋਟੀਆਂ ਲਾਉਣਾ ਤੇਰੇ ਖਾਤਰ ਬਹਿ ਜਾ ਅੰਦਰ ਹੀ ਚੂਰੀ ਲਿਉਣਾ ਕੁੱਟ ਕੇ ਰਲੀ ਰੋਟੀਆਂ ਲਾਵੇ ਤਖੜ ਦਪਹਿਰ ਜੇਠ ਹਾਰ ਦੇ ਮਹੀਨੇ ਚ ਚੋਚੋ ਰੰਗ ਜਤੀ ਦਾ ਨਾ ਐਉਂ ਲੱਗੇ ਜਿਵੇਂ ਚੁੱਲ੍ਹੇ ਜੇ ਪਈ ਜਾਂਦਾ ਸੋਨੇ ਰੰਗੀ ਭਾ ਮਾਰੇ ਰੋਟੀਆਂ ਵੀ ਮੈਨੂੰ ਤਾਂ ਸੋਨੇ ਰੰਗੀਆਂ ਲੱਗਾਂ ਸੌਂਤਰਾ ਲ ਕਦੇ ਮੈਂ ਦਹੀਂ ਦਾ ਕੁਜਾ ਰੱਖਣ ਚਲੇ ਜਾ ਕਦੇ ਮੈਂ ਐ ਬਈ ਦੇਸੀ ਘਿਓ ਰੱਖਣ ਚਲੇ ਜਾ ਕਦੇ ਮੈਂ ਚੂਰੀ ਕਟਾਲਾਂ ਢੇੜਾ ਦੇ ਕੇ ਰਲੀ ਕੋਲ ਢੇੜਾ ਦੇ ਕੇ ਰਲੀ ਕੋਲ ਇੱਕ ਦਿਨ ਮੈਂ ਬੀਹੀ ਜੀ ਮੈਂ ਤੁਰਿਆ ਜਾਵਾ ਇਹੋ ਜਿਹੀਆਂ ਗੱਲਾਂ ਸੀ ਮੱਲਾ ਆ ਹੁਣ ਤੁਹਾਡੇ ਜਿਹੜੇ ਆਹਾ ਮਗਲਾਇਲ ਮਗਲੂਲ ਇਹ ਕਿੱਥੇ ਸੀ ਜਾਦਾ ਮੈਂ ਇੱਕ ਦਿਨ ਤੁਰੀ ਜਾਵਾ ਮੈਨੂੰ ਹਾਕ ਮਾਰ ਕੇ ਕਹਿੰਦੀ ਮੈਂ ਕਿਹਾ ਟੋਕਰਾ ਦਾ ਚਕਾਜਾ ਜਦ ਮੈਂ ਇੱਕ ਬੰਨੇ ਟੋਕਰੇ ਨੂੰ ਹੱਥ ਪਾਇਆ ਭਾਰੀ ਟੋਕਰਾ ਸੀ ਮੇਰਾ ਹੱਥ ਗਿਆ ਮੈਨੂੰ ਕਹਿੰਦੀ ਟੋਕਰਾ ਚੱਕ ਨਹੀਂ ਹੁੰਦਾ ਹੋਰ ਲਾ ਦੇਗਾ ਲਲਰ ਤੂੰ ਮੈਨੂੰ ਐਉਂ ਲੱਗਿਆ ਜਿਵੇਂ ਮੈਨੂੰ ਮਿਹਣਾ ਮਾਰ ਮੈਂ ਟੋਕਰੇ ਨੂੰ ਹੱਥ ਪਾ ਕੇ ਨਾ ਮੈਂ ਕਿਹਾ ਛੱਡ ਦੇ ਹੁਣ ਉਰਾ ਟੋਕਰਾ ਮੈਂ ਦੋਨਾਂ ਹੱਥਾਂ ਦੇ ਨਾਲ ਨਾ ਆਪਣੀ ਧੁੰਨ ਦੇ ਕੋਲੋਂ ਧੂਕੇ ਸਿੱਧਾ ਉਹਦੇ ਸਿਰ ਤੇ ਰੱਖਦਾ ਜਦੋਂ ਇਉਂ ਗੱਲਾਂ ਕਰ ਰਿਹਾ ਸੀ ਤਾਂ ਸੁੰਦਾ ਬੁੜਾ ਇਉਂ ਲੱਗੇ ਜਿਵੇਂ ਹੁਣ ਪੈੜ ਦੇ ਵਿੱਚ ਖੜਾ ਹੈ ਤੇ ਥਾਪੀ ਮਾਰ ਕੇ ਹੁਣ ਜਾਹਾਂਗੇ ਆ ਪਾ ਕੇ ਇਹਨੇ ਸ਼ਾਲ ਮਾਰ ਕੇ ਘੋਲਣਾ ਕਿਸੇ ਨੂੰ ਮੈਂ ਕਿਹਾ ਆ ਚੱਕ ਜਿਹੜੇ ਟੋਕਰੇ ਦੀ ਤੂੰ ਗੱਲ ਕਰਦੀ ਆ ਮੈਂ ਤਾਂ ਤੇਰਾ ਵੀ ਬਾਲਾ ਕੱਢਦਾ ਹਾਂ ਕਹਿੰਦਾ ਮੈਨੂੰ ਕਹਿੰਦੀ ਕੱਢ ਦੇਂਗਾ ਬਾਲਾ ਤੂੰ ਗੱਲਾਂ ਵਾਲਾ ਐ ਕੱਖ ਨਹੀਂ ਕਰਨਾ ਸੁੰਦੇ ਬਬੇ ਦੇ ਚੇਤੇ ਜਵਾਨੀ ਦੇ ਦਿਨ ਸਾਫ ਉੱਗਦੇ ਉਹ ਦਿਨ ਹੱਦ ਮੱਲਾ ਆ ਥੋੜੇ ਆਲੇ ਬਣਜ ਨਹੀਂ ਸੀ ਹੁੰਦੇ ਜਿਹੜੇ ਆਲੇ ਹੁਣ ਬਣ ਚ ਦੁਨੀਆ ਪੂਰਾ ਸਾਲ ਮੈਂ ਰਿਹਾ ਉਹਦੇ ਬਾਅਦ ਬਾਖੀ ਬੋਲ ਨਾਲ ਦੁੱਧ ਦੀ ਗੜਬੀ ਤੇ ਚਾਰ ਪਿੰਨੀਆਂ ਟੂੜੀ ਆਲੇ ਮੈਨੂੰ ਫੜਾ ਕੇ ਜਾਣੀ ਉਹਨੇ ਕਹਿਣੀ ਕਹਿਣਾ ਕੋਈ ਨਾ ਐ ਮੁਰ ਜਾਣਾ ਪਿੰਡ ਨੂੰ ਬਹੁਤ ਮਾਨ ਚੱਕ ਨੋਟ ਪੀ ਨਾਲੇ ਖਾ ਪਿੰਨੀ ਆ ਇੱਕ ਦਿਨਾ ਕਰਾਰ ਦੀ ਬਹੁਤ ਪੱਕੀ ਸੀ ਗੋਲੀ ਅੰਗੂ ਆਉਂਦੀ ਜੇ ਮੈਂ ਸੂਰ ਦੇ ਗੋਲੀ ਮਾਰੋ ਨਾ ਸੂਰ ਗੋਲੀ ਮਾਰਨ ਵਾਲੀ ਜਗਾ ਆ ਕੇ ਦਮ ਤੋੜਦਾ ਜਦ ਤੱਕ ਦੁੱਧ ਨਾ ਫੜਾ ਜਾਂਦੀ ਆਉਂਦੀ ਚਾਹੇ 5 ਮਿੰਟੇ ਬੈਹੰਦੀ ਕਰਤਾਰਾ ਇੱਕ ਦਿਨ ਲਾਮ ਗਿਆ ਮੀਂਹ ਪਵੇ ਪਾਠੀ ਬੋਲ ਗਿਆ ਆ ਕੇ ਦੁੱਧ ਫੜਾਉਣ ਆ ਗਿਆ ਦੁੱਧ ਫੜਾਉਂਦੀ ਕਿਤੇ ਡੰਗਰੋਂ ਡੰਗਰਾਂ ਨੂੰ ਦੇਖਣ ਲਈ ਮਾਮੀ ਆ ਗਈ ਗੜੀ ਮੇਰੇ ਪੈਨ ਬੈਠੀ ਸੀ ਮੈਂ ਦੁੱਧ ਪੀਂਦਾ ਸੀ ਬਸ ਮਾਮੀ ਨੇ ਆਦਮਬੋ ਆਦਮਬੋ ਕਰਦੀ ਮਾਮੀ ਨੇ ਆਦਮਬੋ ਆਦਮਬੋ ਕਰਦੀ ਮਾਮੀ ਉਹ ਵੀ ਨਹੀਂ ਸੀ ਚੱਲਦੀ ਮੈਨੂੰ ਮੱਲਾ ਜਦ ਤੱਕ ਦੂਜੀਆਂ ਆਉਂਦੀਆਂ ਜਦ ਤੱਕ ਇਹ मामੇ ਆ ਮਾਮੀਆਂ ਜਿਹੜੀਆਂ ਕੁਛ ਉਹ ਵੀ ਕਰਦੀਆਂ ਕੁਝ ਮਾਮੀਆਂ ਫਿਰ ਅੱਖ ਤੈਨ ਸਮਝਣ ਲੱਗ ਜਾਂਦੀ ਮੇਰੇ ਭਤੀਜੇ ਭਾਈ ਆਉਣਗੇ ਇਹ ਇੱਥੇ ਅੱਗ ਲੱਗੜਾ ਕਿਉਂ ਰਹਿੰਦਾ ਬਸ ਰੌਲਾ ਪਾਤਾ ਉਹਦੇ ਬਾਅਦ ਮਲਾ ਪਰ ਇੱਕ ਗੱਲ ਐ ਬਹੁਤ ਜਿਗਰੇ ਵਾਲੀ ਤੀਮੀ ਸੀ ਜਾਂ ਤਾਂ ਮੈਂ ਬਹੁਤ ਵਾਰ ਕਿਹਾ ਤੈਨੂੰ ਤੁੰਗਲ ਬਣਾ ਦਿਆਂ ਤੈਨੂੰ ਘੜੀ ਚੂੜੀ ਸੱਗੀ ਫੁੱਲ ਬਣਾ ਦਿਆਂ ਦਸ ਮੋਹਾਂ ਤਾਂ ਬੋਲ ਜਾਂ ਤਾਂ ਇੱਕ ਡੱਕਾ ਵੀ ਲਿਆ ਹੋਵੇ ਸਾਰਾ ਕੁਝ ਮੈਨੂੰ ਹੀ ਅਰਪਣ ਕੀਤਾ ਦੁੱਧ ਬਾਦ ਪਿੰਨੀਆਂ ਸੇਬਾ ਸਰੋਂ ਤੇਲ ਚੱਸ ਜਾਣਾ ਮੇਰੇ ਸਿਰ ਤੇ ਆਹੀ ਸਿਰ ਤੇ ਜਿਹੜਾ ਹਿਲਦਾ ਹੋਣਾ ਡੋਲੂ ਵੰਗੂ ਹਿਲਦਾ ਦੇ ਹਿਲਦਾ ਡੋਲੂ ਵੰਗੂ ਜਿਵੇਂ ਸਾਈਕਲ ਤੇ ਚਾਹ ਲਈ ਜਾਂਦੇ ਹਿਲਦਾ ਹੁੰਦਾ ਜਵਾਨੀ ਦੀਆਂ ਗੱਲਾਂ ਮੱਲਾ 50 ਸਾਲ ਪਹਿਲੀ ਗੱਲ ਦੱਸਦਾ 17 ਦਾ ਹੁਣ ਜਦ ਬਾਈਆਂ ਅੱਛਾ ਗੱਲ ਸੁਣਗਾ ਹਾਂ ਇੱਕ ਵੇ ਵਾ ਜਦ ਫਿਰ ਮਾਮੀ ਨੇ ਰੋਲਾ ਪਾਤਾ ਦਾ ਮਾਮਾ ਮੈਨੂੰ ਕਹਿੰਦਾ ਅੱਛਿਆ ਮੇਰੀ ਦਾੜੀ ਚਾਹੋ ਇਥੇ ਪਹੇਚ ਮਨਾਵੇਂਗਾ ਚੱਕ ਸੁਬਾਨ ਤੋਰ ਇਥੋਂ बस मैं न पानी खादे बिना मंडा बोपरामी आ गया 50 हो गए सात मुड़ के अलवारई नहीं गया ओए ना रली मिली याद बहुत आंदी है पता नहीं उन्हें याद करता करदी है कि नहीं करे मैं भावुक हो गया यूं लगे जिमे मैं दुल्ला बण्या बैठा बापू जी चलो उठ मेरे नाल मैं मैं लेके चलदा मैं अपने घरे बोबी नु सद्द के तेरे नाल ओदी मुलाकात कराऊनेया खानी साल है खानी 2 साल मैं पिंड च जिमे मर्जी चलदा मैं चलू ਤੋਰ ਮੇਡਣਾ ਹਵੇ ਹੋਰ ਕੀ ਜਾਣਾ ਮੱਲਾ ਹੱਡਾਂ ਚ ਸੱਤਿਆ ਨਹੀਂ ਰਹੀ ਹੁਣ ਨਹੀਂ ਜਾਣਾ ਹੁਣ ਮਾਰੇ ਮੂੰਹ ਨਹੀਂ ਮਿਲਣਾ ਗੱਲਾਂ ਕਰਦੇ ਸੋਂਦੇ ਬਾਦੂ ਨੇ ਪੱਗ ਦੇ ਲੜ ਫਰੋਲ ਤੇ ਫਿਰ ਅਵਤਾਰ ਦੇ ਹੱਥ ਤੇ ਸੂਰਜਰ ਦੀ ਸੁਨਹਿਰੀ ਬਾਹ ਮਾਰਦੀ ਲਾਲ ਨਗ ਵਾਲੀ ਮਸੂਨੇ ਦੀ ਮੁੱਦੀ ਕੱਢ ਕੇ ਰੱਖਦੀ ਆਹਾਹਾ ਦੇਖ ਆ ਰਲੀ ਦੀ ਨਿਸ਼ਾਨੀ ਐ ਇਸ ਦਾ ਮੇਰਾ ਇਸ ਸਰਤੇ ਹੀ ਰੱਖਿਆ ਉਂਗਲ ਚ ਨਹੀਂ ਪਾਇ ਜਿੱਦਾਂ ਦੀ ਜੱਟੀ ਨੇ ਦਿੱਤੀ ਐ ਪੱਗ ਦੇ ਲੜ ਬੰਨ ਕੇ ਅੰਦਰਲੇ ਲੜ ਚ ਪਾ ਕੇ ਰੱਖਦਾ ਸੌਂਦੇ ਬਾਪੂ ਨੇ ਚੱਕ ਕੇ ਤਾਲਜੇ ਨੂੰ ਲਾ ਕੇ ਹੁਣ ਤਾਂ ਅਗਲੇ ਜਨਮ ਚ ਮਰਾਂਗੇ ਅਗਲੇ ਜਨਮ ਚ ਮੈਂ ਤੇ ਮੇਰੀ ਰਲੀ ਚੱਤ ਪਿੱਛੋਂ ਆਣ ਕਾਂ ਥੱਲੇੋਂ ਉਥੋਂ ਦੀਆਂ ਧਰਾਣਾ ਬਾਬੇ ਦੇ ਬਲ ਰਹੀਆਂ ਸੀ ਮੈਂ ਖੜਾ ਹੋ ਕੇ ਦੇਖ ਰਿਹਾ ਸੀ ਇਹ ਜਿੰਦਰ ਦੀ ਗੱਲ ਕਿ ਠਰਕੀ ਬਾਪੂ ਆ ਠਰਕੀ ਨਹੀਂ ਸੀ ਲੱਗਦਾ ਇਸ਼ਕ ਦਾ ਸੱਚਾ ਇਸ਼ਕ ਦੇ ਪਿੰਡ ਦਾ ਸੱਚਾ ਰਾਹੀ ਸੀ ਆਸ਼ਕ ਸੀ ਦਸੂਂਦਾ ਸਿੰਘ ਪੋੜਾ ਹੁਣ ਵੀ ਮੈਨੂੰ ਲਾਲ ਨਕਾਲੀ ਮੁੰਦਰੀ ਜਿਹਾ ਅੱਖਾਂ ਮੀਚਦਾ ਉਹ ਦਿਖਦੀ ਹੈ ਹੁਣ ਚਿੱਟੇ ਕੱਪੜੇ ਨੇ ਦਿਖਦੇ ਵਪਾਰਕ ਸੰਦੇਸ਼ ਅਮਰੀਕਾ ਵਿੱਚ ਵਸਦੇ ਇੱਕ ਜੋੜੇ ਦਾ ਰਾਦਮਪੁਰ ਦੁਆਬੇ ਦੇ ਬੱਸ ਸਟੈਂਡ ਤੇ ਗਰੀਨ ਕਾਰਡ ਕਿਸ ਨੂੰ ਮਿਲਿਆ ਸਰਾਰ ਅਮਰੀਕ ਸਿੰਘ ਤੇ ਇੰਦਰਜੀਤ ਕੌਰ ਦਾ ਕਿਸੇ ਨੇ ਸਾਂਭਿਆ ਹੋਇਆ ਇਹ ਪੰਜਾਬ ਦੇ ਵਿੱਚ 9915183819 9915183819 ਗਾਂਹ ਦੱਸ ਦਿਓ ਕਿਸੇ ਦਾ ਜੇ ਬਚ ਜੇ ਨਹੀਂ ਤਾਂ ਉਧਰੋਂ ਚੜਨਾ ਰਾਤ ਸੌਣਾ ਔਖਾ ਹੋ ਜਾਣਾ ਜਿੰਦਗੀ ਦੀ ਦਾਸਤਾਂ ਜੀ ਬਜ਼ੁਰਗਾਂ ਨੇ ਆਪਣੀ ਦਾਸਤਾਂ ਦੱਸੀ ਅੱਗ ਤੇ ਲਟਣ ਵਾਲਿਆਂ ਦੀ ਕਹਾਣੀ ਨਹੀਂ ਸੀ ਉਹ ਇਹੋ ਜਿਹੀਆਂ ਕਹਾਣੀਆਂ ਹੁੰਦੀਆਂ ਸੀ ਬਸ ਜੈਰੀ ਬਰਾਡ 600 400 288 99 ਬੈਸਟੀਲ ਅਨਬਸਟੇਟਸ ਪਰ ਜਿੰਨੀ ਤਰੀਕਿਆਂ ਵਾਲੇ ਨੇ ਵਧੀਆ ਲਿਖੀ ਹੈ ਉਸ ਨੂੰ ਮੈਂ ਕੋਸ਼ਿਸ਼ ਕੀਤੀ ਕਿ ਸਨਾਮਾ ਕਿ ਬੋਲੀ ਇੱਕ ਦਾ ਲੁਧਿਆਣਾ ਜ਼ਿਲ੍ਹੇ ਦੀ ਜਿਸ ਤਰ੍ਹਾਂ ਉਹਨੇ ਲਿਖੀ ਜਿੱਥੇ ਕੁਝ ਕੁ ਚੀਜ਼ਾਂ ਐਡ-ਆਨ ਕੀਤੀਆਂ ਉਹ ਵੀ ਵਧੀਆ ਲੱਗੀਆਂ ਪੂਰੋ ਵੀ ਇਹਨਾਂ ਦੀ ਬਹੁਤ ਵਧੀਆ ਕਹਾਣੀ ਹੈ ਗੱਡੀਆਂ ਵਾਲੀ ਦੀ ਜਿਹੜਾ ਹੁੱਕਾ ਪਾਣੀ ਬੰਦ ਕਰਦਾ ਉਹ ਵੀ ਸੁਣਾਓ ਤੇ ਜਾਗੋ ਬਹੁਤ ਸੁਣਾਈ ਆ ਤੁਹਾਨੂੰ ਜੈਲਦਾਰ ਨੇ ਸੁਣਾਤੀ ਤੇ ਤਿੰਨ ਚਾਰ ਹੋਰ ਕਹਾਣੀਆਂ ਨੇ ਸ਼ਹਿਰ ਵਾਲੀ ਮਾਸਟਰ ਨੇ ਇੱਕ ਬਹੁਤ ਵਧੀਆ ਕਹਾਣੀ ਹੈ ਤੇ ਉਸ ਤੋਂ ਬਾਅਦ ਚਵਾਰੇ ਵਾਲੀ ਬਹੁਤ ਵਧੀਆ ਕਹਾਣੀ ਹੈ ਤੁਹਾਡੇ ਆਉਣ ਦਾ ਦਿਨਾਂ ਚ ਤੁਹਾਡੇ ਸੰਮੁਖ ਕਰਾਂਗਾ ਹੁਣ ਹਲਵਾਰੇ ਦੇ ਰਖਵੇ ਵਾਲਿਆਂ ਨੂੰ ਪਿੰਡ ਦਿਖਦਾ ਅਜਗੋਪਾਰਾ ਮਾਲਿਆ ਰਾਨੀ ਦੀਆਂ ਗੱਲਾਂ ਪੰਜਾਬ ਦੀ ਕੈਂਪੇਨ ਚ ਸੁਣਨ ਨੂੰ ਮਿਲਦੀਆਂ ਛੋਟੇ ਬਾਦਲ ਸਾਹਿਬ ਕਹਿੰਦੇ 1 ਲੱਖ ਕਿਲਾ ਬਾਹਰ ਲੈ ਦਾਂਗੇ ਵੀ ਪੰਜਾਬ ਚੋਂ ਜਾਓ ਤੁਸੀਂ ਪੰਜਾਬ ਕਰੋ ਖਾਲੀ ਸਰਕਾਰ ਬਣਾਓ ਸਾਡੀ ਪਲੇਸਮੈਂਟ ਰਿਪਲੇਸਮੈਂਟ ਇਹ ਸ਼ਬਦ ਨੇ ਅਸਲ ਸਰਕਾਰਾਂ ਜਿਹੜੀਆਂ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਉਹ ਹੋ ਵੀ ਇਹੀ ਰਿਹਾ ਤੇ ਕਸਿਆਰੇ ਬਣ ਜੋ ਜ਼ਮੀਨਾਂ ਦੇ ਦਿਓ ਤੇ ਫਿਰ ਇੱਥੋਂ ਤੁਰੋ ਸਾਡੇ ਵੱਲ ਝਾਕੋ ਅਸੀਂ ਤੁਹਾਨੂੰ ਫਿਰ ਖਾਣ ਨੂੰ ਚੌਲ ਦਾਲਾਂ ਤੇ ਰੋਟੀ ਚੀਨੀ ਨੀਲੇ ਪੀਲੇ ਕਾਰਡ ਇਹ ਦਵਾਂਗੇ ਛਗਨ ਸਕੀਮਾਂ ਦਵਾਂਗੇ ਪੈਨਸ਼ਨਾਂ ਦਵਾਂਗੇ ਪਤਾ ਨਹੀਂ ਹੁਣ ਇਹਦੇ ਚ ਕੌਣ ਸೇನೆ ਵੀ ਇਕੱਲਾ ਹੁਣ ਦੀ ਗੱਲ ਨਹੀਂ ਸਾਰੀਆਂ ਸਰਕਾਰਾਂ ਆਹੀ ਕੁਛ ਕਰਦੀਆਂ ਆਈਆਂ ਨੇ ਹੁਣ ਇਹ ਗੱਲਾਂ ਕਿੱਡੀਆਂ ਲੱਗਦੀਆਂ 1 ਲੱਖ ਕਿੱਲਾ ਉਧਰ ਜ਼ਗੀਰੋ ਦੀਆਂ ਸੁਣ ਲਓ ਉਹ ਕਹਿੰਦੀ ਤੁਹਾਡਾ ਬਜ਼ੁਰਗ ਮਰ ਗਿਆ 4 ਪੈਸੇ ਮਿਲ ਗਏ ਉਹ ਹੈਂਕੜ ਐਨੀ ਆ ਕੁੜੀ ਮਾਰ ਇਸ ਇਸਤਰੀ ਦੇ ਵਿੱਚ ਉਹਨੂੰ ਪਤਾ ਨਹੀਂ ਮੈਂ ਕੀ ਕਹਿਨੀ ਕਿਸੇ ਦੇ 70 ਤੇ ਬੈਠ ਕੇ ਉਹ ਗੱਲਾਂ ਬਾਹਰ ਲੋਕ ਲਾਈਨਾਂ ਲਈ ਖੜੇ ਨੇ ਕਹਿੰਦੀ ਆ ਦੇਖ ਲੋ ਸਵੇਰ ਦੇ ਖੜੇ ਨੇ ਰੋਟੀ ਖਾਣੀ ਵੀ ਨਸੀਬ ਨਹੀਂ ਹੁੰਦੀ ਤੇ ਘਰੇ ਬਹਿ ਕੇ ਹੱਥ ਕਰ ਕਾਦਰ ਲਈ ਸੂਟ ਪਾ ਕੇ ਲੀਡਰ ਨਹੀਂ ਬਣੀ ਫਿਰਦੀਆਂ ਜੇ ਕੋਈ ਥੋੜੀ ਬਹੁਤੀ ਅਣਖ ਹੁੰਦੀ ਐਦਾ ਜ਼ੁਲਮ ਕੀਤਾ ਧੀਏ ਮਾਰਿਆ 5 ਸਾਲ ਦੀ ਸਜ਼ਾ ਹੁੰਦੀ ਬੈਠੀਆ ਹਲੇ ਵੀ ਲਾਮ ਲਸ਼ਕਰ ਲਈ ਫਿਰਦੀਆਂ ਸੰਗ ਥੋੜੀ ਬਹੁਤੀ ਹੈ ਨਹੀਂ ਤੇ ਇਹ ਉਹ ਨੇ ਜਿਹੜੇ ਇਹਨੂੰ ਜ਼ਥੇਦਾਰ ਨਹੀਂ ਬਣਾਈ ਫਿਰਦੇ ਨੇ ਤੋ ਇਹ ਲੋਕਾਂ ਨਾਲ مخੌਲ ਹੈ ਕਿਸੇ ਮਰੇ ਹੋਏ ਨੂੰ ਕਹਿਣਾ ਵਧੀਆ ਮਰ ਗਿਆ ਚਾਰ ਪੈਸੇ ਮਿਲ ਜਾਣਗੇ ਤੁਹਾਨੂੰ ਗਲਤ ਹੈ ਇਹ ਨਾ ਕੋਈ ਪੜ੍ਹਾਈ ਹੈ ਨਾ ਕੋਈ ਲਿਖਾਈ ਹੈ ਨਾ ਕੋਈ ਆਪਣੀ ਤਾਂ ਡਾਂਗ ਤੇ ਰੱਖੀ ਹੋਈ ਹੈ ਦੂਜੇ ਦੀ ਲਾਉਣ ਨੂੰ ਬਿੰਦ ਲਾਉਣਾ ਇਹ ਜਿਹੜਾ ਲਾਣਾ ਤੁਰਿਆ ਫਿਰਦਾ ਨਾ ਹੁਣ ਹਾਲ ਦੇਖੋ ਕੀ ਆ ਤਾਂ ਹੀ ਤਾਂ ਪਿੰਡਾਂ ਦੇ ਵਿੱਚ ਹੁਣ ਘੇਰ ਘਰਾਈ ਹੋ ਰਹੀ ਆ ਪਹਿਲੀ ਵਾਰ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਇਹ ਹੋ ਰਿਹਾ ਕਿ ਮੌਜੂਦਾ ਜਿਹੜੀ ਤੇਰਾ ਉਹਨਾਂ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈਂਦਾ ਇੱਕੋ ਇੱਕ ਗੱਲ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਤੁਸੀਂ ਕੱਖ ਨਹੀਂ ਕੀਤਾ ਬੰਦੇ ਨਹੀਂ ਫੜੇ ਮਜਾਰਾ ਕਰਦੇ ਸ਼ਾਂਤਮਈ ਜਗ੍ਹਾ ਤੇ ਬੈਠੇ ਦੋ ਬੰਦੇ ਮਾਰੇ ਤੇ ਉਹ ਐਸਐਸਬੀ ਬਹਾਲ ਹੈ ਪਰ ਕਾਤਲ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਉਹਨਾਂ ਦੇ ਪੰਨਿਆਂ ਨੂੰ ਫਾੜਨ ਵਾਲੇ ਉਹ ਨਹੀਂ ਫੜੇ ਜਾ ਰਹੇ ਅੰਤਕ ਸਰਕਾਰ ਕਹੌਂਦੀ ਠੀਕ ਹੈ ਡਿਵੈਲਪਮੈਂਟ ਕੀਤੀ ਕਿਹੜੇ ਡਿਵੈਲਪਮੈਂਟ ਨੂੰ ਮੈਂ ਖੂਚ ਪਾਦਾ ਹਾਂ ਸੜਕਾਂ ਮੈਨੂੰ ਕੀ ਦੇਣੀਆਂ ਜਿੱਥੇ ਮੇਰੇ ਇਸਟ ਨੂੰ ਰੋੜਿਆ ਗਿਆ ਔਰ ਇਹ ਐਡਾ ਵੱਡਾ ਵਜ਼ਨ ਹੈ ਜਿੰਨੇ ਵੀ ਇਹ ਚ ਹੋਣਗੇ ਜਿੰਨੇ ਵੀ ਲੀਡਰ ਉਹਨਾਂ ਨੂੰ ਇਹ ਵਜ਼ਨ ਉਹਨਾਂ ਦੀ ਛਾਤੀ ਦੇ ਚੱਲਣਾ ਹੀ ਤੁਹਾਡੇ ਸਾਹਮਣੇ ਦੇਖੀ ਦਫਨ ਹੁੰਦੀਆਂਗਾ ਉਹ ਜਗਤ ਗੁਰੂ ਹੈ ਦੁਨੀਆ ਧਾ ਕੇ ਉਹਦੇ ਦਰਸ਼ਨਾਂ ਨੂੰ ਆਉਂਦੀ ਹੈ ਔਰ ਉਸ ਦੇ ਤੇ ਉਸਦੇ ਦੇ ਸਤਕਾਰ ਦੇ ਲਈ ਲੱਖਾਂ ਨਹੀਂ ਇੱਕ ਲੱਖਾਂ ਨਹੀਂ ਪਤਾ ਹੀ ਨਹੀਂ ਕਿੰਨੇ ਲੱਖ ਛੇਦ ਦੀਆਂ ਹੋਈਆਂ ਨੇ 70 ਵੇਲੇ ਵੀ ਇਹ ਜੇ ਕੁਝ ਹੋਇਆ ਸੀ ਕਿਤੇ ਰੂੜੀ ਤੇ ਰੱਖਤੀ ਕਿਤੇ ਕਿਤੇ ਹੋ ਗਿਆ ਸਾਡੇ ਵੀ ਚ ਖੱਟੜੇ ਪਿੰਡ ਰੂੜੀ ਤੇ ਕਿਸੇ ਚੁੱਕ ਕੇ ਸੁਰਤਾ ਸੀ ਪਰ ਉਸ ਸਮੇਂ ਦਮਦਮੀ ਟਕਸਾਲ ਦਾ ਜਥੇਦਾਰ ਜੀ ਨੇ ਕਿਹਾ ਹੁਣ ਲਾ ਕੇ ਦਿਖਾਓ ਇਹ ਹੱਥ ਜੇ ਪਿੰਡ ਨਾਲ ਖਿਲਾੜੀ ਥੇ ਕੱਢਦੇ ਸਾਰਾ ਹੋਈ ਫੇਰ ਕਟਣਾ ਇੱਕ ਅੱਧੀ ਪਰ ਬੰਦ ਕਰਦੇ ਹਰਕਾ ਹੁੰਦੇ ਦੇ ਤਾਂ 4 ਸਟਾਰ ਆ 4 ਸਟਾਰ ਰੈਸਟ ਆਪਣੇ ਬਣਾਉਣ ਲੱਗੇ ਨੇ ਹੋਟਲ ਮੁਖਸਰ ਦੀ ਧਰਤੀ ਤੇ ਇਹਨਾਂ ਨੇ ਕੀ ਕਰਨਾ ਪੱਕਦੇ ਲੜ ਗਏ ਲੋ ਬਾਈ ਇੱਕ ਬੰਦੇ ਨੇ 22 ਇੱਕ ਬੰਦੇ ਨੇ ਪ੍ਰਸ਼ਾਦਾ ਕੁੰਕਾ ਛਕਿਆ ਜਗਾ ਬੈਠਣ ਨੂੰ ਮਿਲ ਗਈ ਲਗਜ਼ਰੀ ਤੇ ਇੱਕ ਮੂਹਰੇ ਗੱਡੀ ਇੱਕ ਪਿੱਛੇ ਗੱਡੀ ਇਹਨਾਂ ਤੋਂ ਕਰਾਉਣਾ ਕੀ ਹੈ ਸਾਰਿਆਂ ਤੋਂ ਆਤਰ ਹੋਏ ਹੋਏ ਨੇ ਲੋਕ ਸਾਰਿਆਂ ਤੋਂ ਹੀ ਕਿ ਇੱਕੋ ਹੀ ਗੱਲ ਹੈ ਸਾਰੀਆਂ ਚੀਜ਼ਾਂ ਮੰਨੀਆਂ ਜਾਂਦੀਆਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲੋਕ ਅਕਸੈਪਟ ਨਹੀਂ ਕਰ ਰਹੇ ਹਰ ਇੱਕ ਨੂੰ ਇਹ ਤਪਸ਼ ਦੇ ਵਿੱਚੋਂ ਨਿਕਲਣਾ ਪੈਂਦਾ ਜਿਹੜਾ ਵੀ ਲੀਡਰ ਜਾਂ ਪਰ ਮੂਰੋਂ ਇੱਕ ਬੋਲ ਨਹੀਂ ਬੋਲ ਹੁੰਦਾ ਬੋਲ ਇੱਕ ਵੀ ਬੋਲ ਨਹੀਂ ਬੋਲ ਹੁੰਦਾ ਅਖੀਰ ਦੇ ਵਿੱਚ ਮਹੰਮਦ ਫਰੀਦ ਦਾ ਇੱਕ ਗੀਤ ਤੇ ਕੱਲ ਨੂੰ 11 ਵਜੇ ਫੇਰ ਮੁਰਦਾਂ ਲਾਓ ਨਜ਼ਾਰੇ